ਕੇਆਰਟੀਏ 1550 ਏਐਮ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ 11 ਵਜੇ ਦੇ 10 ਮਿੰਟ ਹੋਏ ਨੇ 11 ਜਨਵਰੀ ਦਾ ਦਿਨ ਹੈ ਬਰਾ 2016 ਦਾ ਬੁੱਧਵਾਰ ਹੈ 2940 ਅੰਕਸ਼ਈ 548 ਨਿੱਗਾ ਹਾਰ ਦੇਕ ਸਵਾਗਤ ਹੈ ਜੀ ਬਾਗੀਤ ਦੀ ਜਿਹੜੀ ਤਰਜ ਸੀ ਉਹ ਆਪਣੀ ਆਈਡੀ ਹੁੰਦੀ ਸੀ ਪੁਰਾਣੀ ਆਈਡੀ ਅੱਜ ਡਬਲੀ ਬੈਰਣ ਜੀ ਇਸੋ ਨੇ ਕਿਹਾ ਮਖਲਾ ਹੁਣੇ ਲੱਭਦੇ ਆ ਕੱਲ ਦੇ ਲੱਗੇ ਹੋਇਆ ਹੁਣ ਗੀਤ ਦੇ ਨਾਲ ਸਨੇਹਾ ਦੇਣ ਲਈ ਸ਼ੁਕਲਾ ਜੀ ਨੇ ਆਉਣਾ ਤੇ ਉਹੂਜਾ ਜੀ ਨੇ ਵੀ ਆਉਣਾ ਦੋਨਾਂ ਨੇ ਆਉਣਾ ਤੇ ਗੱਲਬਾਤ ਦੱਸ ਕੇ ਜਾਣਗੇ ਇੱਕ ਤਾਂ ਲੋੜੀ ਬੰਪਰ ਦੀ ਤੇ ਦੂਜੇ ਬੰਨੇਓ ਆਸਟ੍ਰੇਲੀਆ ਦਾ ਢੇਡਾ ਮਾਰ ਕੇ ਆਨੇ ਆਸਟ੍ਰੇਲੀਆ ਦੇ ਆਪਣੇ ਸੁਣਨ ਵਾਲਿਆਂ ਦੀ ਉਹ ਫਤ ਤੇ ਬੁਲਾਉਣੀ ਚਾਹੁੰਦੇ ਆ ਕਿਹੋ ਜਿਹਾ ਉੱਥੇ ਮਾਹੌਲ ਜਾਇਦਾਦ ਦੇ ਮੁਲਾਂਕਣ ਬਾਰੇ ਗੱਲ ਜਿਹੜੀ ਸਿਟੀ ਅਫਸਰੀ ਤੋਂ ਮੈਨੂੰ ਪਤਾ ਲੱਗਿਆ ਉਸ ਗੱਲਬਾਤ ਕਰਾਂਗਾ ਕੋਸ਼ਿਸ਼ ਕਰਾਂਗਾ ਕਿ ਟੌਮ ਗਿਲ ਹੋਵੇ ਉਹਨਾਂ ਨੇ ਕਿਹਾ ਕਿ ਕਾਉਂਸਲਰ ਟੌਮ ਗਿਲ ਨਾਲ ਆਉਣਗੇ ਮੇਰੇ ਦੱਸਣਗੇ ਕਿ ਵਧੀਆਂ ਹੋਈਆਂ ਅਸੈਸਮੈਂਟ ਦਾ ਕਿੰਨਾ ਕ ਅਫੈਕਟ ਪੈਣਾ ਤੁਹਾਡੇ ਪ੍ਰਾਪਰਟੀ ਟੈਕਸ ਤੇ ਗੱਲ ਮੈਨੂੰ ਲੱਗਦਾ ਠਹਿ ਪੈ ਜਾਣੀ ਹੈ ਔਰਗ ਤੇ ਪਟੀਸ਼ਨ ਇੱਕ ਚੱਲ ਰਹੀ ਹੈ ਉਹਦਾ ਬੇਸ ਨਹੀਂ ਮੈਨੂੰ ਲੱਭਿਆ ਹਾਲੇ ਪਰ ਉਹ ਪਟੀਸ਼ਨ ਸਾਈਨ ਹੋ ਵੀ ਕਰਨ ਤੋਂ ਪਹਿਲਾਂ ਵੇਖਿਆ ਕਰੀਏ ਕਿ ਉਹ ਕੀ ਹੈ ਰਿਜ਼ਨ ਕੀ ਹੈ ਕਿਉਂਕਿ ਉੱਥੇ ਤੁਹਾਡਾ ਐਡਰੈਸ ਵਗੈਰਾ ਜਾਣਾ ਥੋੜਾ ਜਿਹਾ ਖਿਆਲ ਨਾਲ ਆਪਾਂ ਚੱਲੀਏ ਬੜੀ ਸੰਸਨੀਖੇਜ ਖਬਰ ਹੈ ਚੀਨ ਦੇ ਜਿੰਨੇ ਵੀ ਲੋਕ ਨੇ ਉਹ ਸਾਰਿਆਂ ਦਾ ਹੀ ਹੱਥ ਬਨਾਸ ਬੋ ਰੱਖੀ ਬੈਠਿਆ ਕੋਲ ਕਿਹੜੇ ਰੈਸਟੋਰੈਂਟ ਜਾਂਦਾ ਕਿੱਥੇ ਜਾਂਦਾ ਕਿੰਨੇ ਵਜੇ ਬਾਰਡਰ ਟੱਪਿਆ ਕਿਉਂਕਿ ਉੱਥੇ ਬਾਰਡਰ ਬਣਾਏ ਹੋਏ ਨੇ ਸਟੇਟ ਟੂ ਸਟੇਟ ਜਾਂਦਾ ਸਾਊਥ ਨਹੀਂ ਜਾਂਦੇ ਸਾਊਥ ਨਹੀਂ ਜਾ ਸਕਦੇ ਲੋਕਾਂ ਤੇ ਕਬਜ਼ਾ ਕਰਨ ਲਈ ਲੋਕਾਂ ਦੇ ਰਾਜ਼ ਕਰਨ ਲਈ ਇਹ じゃ ਕੁਛ ਹੈ ਤੇ ਉਸ ਸਿਰਫ 100 ਡਾਲਰ ਦੇ ਵਿੱਚ ਤੁਸੀਂ ਕਿਸੇ ਦਾ ਵੀ ਪੱਤਰੀ ਕਢਾ ਸਕਦੇ ਹੋ ਸਾਰਾ ਕੁਝ ਪਤਾ ਲੱਗ ਜਾਂਦਾ ਕਿੱਥੇ ਰੋਟੀ ਖਾਧੀ ਕਿੱਥੇ ਗਿਆ ਕਿਹੜੇ ਜਹਾਜ਼ ਚੜ੍ਹਿਆ ਇਹ ਤਾਂ ਬਹੁਤ ਔਖਾ ਹੋਊ ਕੰਮ ਇਹ ਸਰੀਰ ਹਸਾਬ ਦਾ ਉਗੜ ਲਿਆ ਕਿਸੇ ਨੇ ਸੋ ਇਸ ਦੀ ਗੱਲ ਬਾਤ ਤੇ ਫਿਰ ਮੇਰਾ ਪਿੰਡ ਸੌਰੀ ਕਹਾਣੀ ਤੁਹਾਡੇ ਸਾਲਮੁਖ 12 ਤੋਂ 1 1 ਤੋਂ ਢਿੱਲੀ ਹੈ ਮਾਲਕ ਅਰਦਾਸ ਹੈ ਕਿ ਉਹ ਤਕੜੇ ਹੋਣ ਉਹਨਾਂ ਦੇ ਨਾਵਲਾਂ ਤੇ ਕੁਝ ਫਿਲਮਾਂ ਜਿਹੜੀਆਂ ਨੇ ਉਹ ਬਣਨ ਦੀ ਤਿਆਰੀ ਦੇ ਵਿੱਚ ਨੇ ਰਵਿੰਦਰ ਰਵੀ ਆਉਣੀ ਕੁੱਤਿਆਂ ਵਾਲੇ ਸਰਦਾਰ ਨਾਵਲ ਤੇ ਫਿਲਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਬ੍ਰਦਰ ਦਵਿੰਦਰ ਦੀ ਕਾਲੇ ਉਹਨਾਂ ਨੇ ਦੱਸਿਆ ਇਹ ਲੈ ਆ ਬਹੁਤ ਵਧੀਆ ਫਿਲਮ ਬਣੇਗੀ ਕੁੱਤਿਆਂ ਵਾਲੇ ਸਰਦਾਰ ਜੇ ਫਿਲਮ ਬਣੇਗੀ ਉਹਦੇ ਵਿੱਚ ਪਾਤਰ ਲੱਭੇ ਜਾਣਗੇ ਪੁਰਾਣਾ ਪਿੰਡ ਲੱਭਿਆ ਜਾਊਗਾ ਹੁਣ ਇਹ ਕਹਾਣੀ ਹੈ ਕਿ ਫਿਲਮਾਂ ਤਾਂ ਵਧੀਆ ਬਣ ਜਾਣਗੀਆਂ ਪਰ ਫਿਲਮਾਂ ਵਾਲਾ ਪਿੰਡ ਜਿਹੜਾ ਸ਼ਿਪਨ ਹੋ ਗਿਆ ਹਲੇ ਵੀ ਰਾਜਸਥਾਨ ਦੇ ਵਿੱਚ ਪਤਲਾਂ ਤੇ ਲੋਕ ਰੋਟੀ ਖਾਂਦੇ ਆ ਆਪਾਂ ਅੰਗਰੇਜ਼ ਦੇ ਵਿੱਚ ਵੇਖਿਆ ਸੀ ਅਰਦਾਸ ਦੇ ਵਿੱਚ ਵੀ ਇੱਕ ਪਿੰਡ ਦੇ ਆਲੇ-ਦਾਲੇ ਫਿਲਮ ਬਣ ਗਈ ਕਹਿਣ ਨੂੰ ਪ੍ਰੋਡਿਊਸਰ 4 ਕਰੋੜ 5 ਕਰੋੜ ਕਹੀ ਜਾਵੇ 1.5 ਕਰੋੜ ਚ ਸਰ ਜਾਂਦਾ ਉਈਓ ਹੀ ਚੱਕ ਦਿੰਦੇ ਆ ਆਲੇ-ਦਾਲੇ ਉਹਨਾਂ ਦੇ ਖਾਤੇ ਪਾ ਦਿੰਦੇ ਆ ਇਹ ਜਿਹੜੇ ਪ੍ਰੋਡਿਊਸਰ ਤੁਰੇ ਫਿਰਦੇ ਆ ਨਾ ਪੰਜਾਬੀ ਫਿਲਮਾਂ ਦੇ ਇਹਨਾਂ ਨੂੰ ਘੱਟਾ ਨਹੀਂ ਪੈਂਦਾ ਘੱਟ ਤਾਂ ਬਥੋਂ ਬਥੋਂ ਪੈਂਦਾ ਜਿਹੜਾ ਰੋਲ ਦੇਣ ਦੀ ਖਾਤਰ 50 ਲੱਖ ਜੇਰ ਚੋ ਦੇ ਦਿੰਦਾ ਐਨੇ ਲਿਆਉਣ ਦੀ ਲੋੜ ਨਹੀਂ 10-20 ਹਜ਼ਾਰ ਚ YouTube ਤੇ ਬਣਾ ਕੇ ਇੱਕ ਪਾ ਦਿਓ ਉਹ ਵੀ ਉਹ ਜੀ ਉਹ ਫਿਲਮ ਐ YouTube ਤੇ ਪੈਸੇ ਵੀ ਬਣ ਜਾਂਦੇ ਆ ਅੱਜਕੱਲ। 1844247 1550 ਨੇ ਨੰਬਰ ਹੈ 1844247 1550। ਵਾਹਿਤਮਾਨ ਯਾਰਬਾਰ ਬਤਵੀਨ ਅਰਬ ਸਬਾ ਵਾਹਿਦ ਖਮ ਸਖਮ ਸਿੱਖ ਹਦਕ ਅਰਬੀ. ERPradio.com ਤੇ ਸਿੱਧਾ ਪਰਸਾਨ ਸੁਣਦੇ ਹੋ ਨਾਲ ਐਪ ਡਾਊਨਲੋਡ ਕਰ ਸਕਦੇ ਹੋ ਹਰਜੀਤ ਸਿੰਘ ਗਿੱਲ ਦੀ Facebook ਪੇਜ ਦੋਨਾ ਤੇ ਤੁਹਾਡਾ ਸੁੱਖ ਸੁਨੇਹਾ ਆਉਂਦਾ harjeet.gkrpradio.com ਨਿਮੀਡੌੜਾ ਜੀ ਮੈਨੇਜਰ ਸਾਹਿਬਾ ਦਾ ਤੇ ਪ੍ਰੋਗਰਾਮ ਯੋਧਿਆਂ ਦੀ ਗੱਲ ਜਿਹਦੇ ਵਿੱਚ ਹੋਈ ਸੀ ਉਹ ਦੁਬਾਰਾ ਆਪਾਂ ਖਲਵਾ ਲਿਆ YouTube ਤੇ ਪਿਆ ਹੁਣ ਉਹ ਸੁਣ ਸਕਦੇ ਹੋ ਤੁਸੀਂ ਦੁਬਾਰਾ ਜਿੱਚ ਬਾਪੂ ਤ੍ਰਲੋਕ ਸਿੰਘ ਸ਼ਹੀਦ ਸਦਵੰਤ ਸਿੰਘ ਦੇ ਸਤਕਾਰਯੋਗ ਪਿਤਾ ਜੀ ਬੋਲਦੇ ਆ ਮਝਾਲ ਲਹਿਜੇ ਚ ਕੁਰਸੀ ਡਾਈਆ ਬਾਪੂ ਦੇ ਹੱਥ ਚ ਖੁੰਡਾ ਫੜਿਆ ਤੇ ਉਹ ਗੱਲਾਂ ਦੱਸਦਾ ਹੈ ਸ਼ਹੀਦ ਸਦਵੰਤ ਸਿੰਘ ਦੇ ਵਿਆਹ ਦੀਆਂ ਜਦੋਂ ਪਹਿਲਾਂ ਸਰਦਾਰ ਜੀ ਨੂੰ ਵੇਖਣ ਗਿਆ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਕੱਠੇ ਹੋਏ ਤੇ ਫਿਰ ਜਦੋਂ ਕਹਿੰਦੇ ਕਹਿੰਦੇ ਮੈਂ ਕਿਹਾ ਵੀ ਤੂੰ ਨਾ ਪੰਗਾ ਪਾ ਲਈ ਕੋਈ ਇਹ ਔਖਾ ਕੰਮ ਐ ਇਹ ਕਈ ਵਾਰ ਚੱਲਦੀ ਹੈ ਨਹੀਂ ਉਹ ਕਹਿੰਦਾ ਨਾ ਬਾਪੂ ਜੇ ਨਾਂ ਚੱਲੀ ਹੱਥ ਵੇਖ ਲੈ ਫੁੱਟ ਫੁੱਟਦੇ ਆ ਇਹਰਾ ਗੋਰੀਆਂ ਸਿੰਘ ਦੇ ਲੱਗੀਆਂ ਸੀ ਇੱਕ ਗੋਲੀ ਜਿਹੜੀ ਰੀੜ ਦੀ ਹੱਡੀ ਦੀ ਸੀ ਉਹ ਕੱਢੀ ਨਹੀਂ ਸੀ ਜ਼ਾਲਮਾਂ ਨੇ ਫਿਰ ਖੁਰਚ ਖੁਰਚ ਕੇ ਆਪਣੇ ਹੱਥੀਂ ਕੱਢੀ ਸਤਵੰਤ ਸਿੰਘ ਨੇ ਤਾਂ ਦੀ ਉਹ ਸੀ ਯੋਧਿਆਂ ਦੀ ਮੈਨੂੰ ਯਾਦ ਆ ਜਾਂਦੀ ਅਮਤੋਜ ਮਾਨ ਦੀ ਗੱਲ ਹਰ ਰੋਜ਼ ਯਾਦ ਆਉਂਦੀ 1984 ਤੇ ਜਦ ਫਿਲਮ ਹਵਾਇਮ ਬਣਾਈ ਉਸ ਵੇ ਕ੍ਰਿਟਿਕ ਜਿਹੜੇ ਸੀ ਜਿਹੜੇ ਕਾਤਲ ਸੀ ਸਾਡੇ ਉਹ ਅਮਤੋਜ ਮਾਨ ਨੂੰ ਘੇਰ ਕੇ ਕਿਤੇ ਕਹਿੰਦੇ ਇਹੋ ਜੀਆਂ ਫਿਲਮਾਂ ਬਣਾਉਂਦੇ ਸੰਗ ਨਹੀਂ ਆਉਂਦੀ ਉਹ ਕਹਿੰਦਾ ਤੁਹਾਨੂੰ ਕਰਦਿਆਂ ਨੂੰ ਸੰਗ ਨਹੀਂ ਆਈ ਹੁਣ ਸੁਣਦਿਆਂ ਨੂੰ ਸੰਗ ਆਉਂਦੀ ਹੈ ਇਹੋ ਹੀ ਗੱਲ ਦੀ ਗੱਲ ਜਿਹੜੀ ਹੈ ਉਹ ਕਿਸੇ ਨੇ ਕਿਸੇ ਨੇ ਕਰਨੀ ਹੁੰਦੀ ਹੈ ਕਿਸੇ ਦੇ ਹੱਥ ਆਉਂਦੀ ਹੈ ਕਹਾਣੀ ਜਿਹੜੇ ਸਾਡੇ ਸ਼ਹੀਦ ਨੇ ਚਾਹੇ ਉਹ ਜਿਹੜੀ ਵੀ ਸਦੀ ਦੇ ਮਰਜੀ ਨੇ ਉਹਨਾਂ ਦੀ ਗੱਲ ਹੋਣੀ ਹੈ ਔਰ ਕਰਾਂਗੇ 1844 247 1550 ਉਹਦਾ ਨੰਬਰ ਹੈ YouTube ਤੇ L O P S A D W T H ਲੋਕ ਸੱਚ ਤੇ ਸਾਰੇ ਸ਼ੋਪੈ ਨੇ ਜਵੰਦੇ ਦਾ ਧੰਨਵਾਦ ਹੈ ਲਗਰੇ ਕੱਚੀਏ ਲਾਲ ਕਰੂੰਬਲ ਗੰਦਲੇ ਤੇ ਸਰਦਾਰੀ ਤੇਰੀ ਚੁੰਨੀ ਤੇੋਂ ਲਾਲ ਲਕੀਰਾਂ ਵੱਜੀਆਂ ਨੇ ਬਈ ਜੀਕਣ ਮੂਗ ਫਲੀ ਦੇ ਫੁੱਲਾਂ ਉੱਤੇ ਧਾਰੀ ਤੇਰੀ ਸੇਲੀ ਤਾਂ ਜੋ ਡਾਰ ਹੋਵੇ ਕੋਈ ਚਿੜੀਆਂ ਦੀ ਜਿਹੜੀ ਪਛੋਂ ਦੇ ਵੱਲ ਉੱਡ ਜਾਏ ਮਾਰ ਉਡਾਰੀ ਹਵਾ ਦੇ ਬੁਲੇ ਨਾਗ ਵਲੇ ਮਾਂ ਪਾਲੰਦੇ ਚੰਨ ਤੱਕਾ ਚਾਨਣ ਹਿੱਕ ਤੇ ਕਰੇ ਸਵਾਰੀ ਟੋਪੇ ਢਾਗੇ ਫੁੱਲ ਸਰਾਣੇ ਚੁੱਲ੍ਹੇ ਚਰਖਿਆਂ ਤੇ ਤੇਰੇ ਹਸਨ ਹੰਸਣੀਆਂ ਜਏ ਦੇ ਵਿੱਚ ਰੋਹੀ ਕਿੱਦਾ ਪੌਂਦੀ ਏ ਨਹੀਂ ਕੋਈ 나ਗ ਲਾ ਗਿਆ ਅੜੀਏ ਕੁੰਝ ਕੁਆਰੀ ਤੇਰੀ ਧੂਣੀ ਜੇੜ ਫਕੀਰੀ ਮੌਤੋਂ ਪਿਆਰੀਏ ਨਹੀਂ ਪਾਕੇ ਦਰਸ਼ਨ ਹੋਗੀ ਧੁੱਪ ਭੀ ਤੜਕਣਹਾਰੀ ਇਹਾਂ ਸੌਂਡ ਰੜਾ ਕੇ ਰੁੱਤਾਂ ਖਾਣ ਪੰਜੀਰੀਆਂ ਓਏ ਮੌਸਮ ਕੰਨ ਪੜਵਾਉਣ ਦੀ ਕਰਦੇ ਫਿਰਨ ਤਿਆਰੀ ਰੇਤਾ ਟਿੱਬਿਆਂ ਦਾ ਦੇ ਵਿੱਚ ਗੁੰਨਦੀ ਏ ਜਦ ਵੀ ਜੰਗਲੇ ਓਲੇ ਬੈਠੇ ਕੱਲੀ ਕਾਰੀ ਜਿਹਦੀ ਯਾਦ ਦਾ ਪਾਣੀ ਬੰਨ ਤੋੜ ਕੇ ਚੜ ਗਿਆ ਨਹੀਂ ਮੁੰਡਾ ਕੱਚਿਆਂ ਸੇ ਬਾੜ ਦਾ ਪਹਿਲਾਂ ਪਤਨਾ ਉੱਤੇ ਸ਼ਮਕਾਂ ਦੇ ਨਾਲ ਕੁੱਟਿਆ ਤੂੰ ਮਗਰੋਂ ਸਾਦ ਬਣੇ ਨੂੰ ਡੌਂਦੀ ਫਿਰੇ ਪੰਗਨਵਾਰੀ ਕੁੱਝ ਜਿਵੇਂ ਵੰਗਾਂ ਲਾ ਕੇ ਅੜੀਏ ਨਰਮ ਕਲਾਈਆਂ ਚੋਂ ਨਹੀਂ ਤੂੰ ਚੁੱਕ ਲੈਂਦੀ ਐ ਕੀ ਕੁੜੇ ਕਟਾਰੀ ਨਹੀਂ ਤੂੰ ਚੁੱਕ ਲੈਂਦੀ ਐ ਕੀ ਕੁੜੇ ਕਟਾਰੀ ਪੰਜਾਬ ਦੀ ਰਕਾਨ ਦਾ ਸਾਰਾ ਨਕਸ਼ਾ ਖਿੱਚਿਆ ਹਰਮਨਜੀਤ ਨੇ ਹੂੰ 11:19 ਹੋਏ ਰਾਣਾ ਜੀ ਫੋਨ ਤੁਸੀਂ 11:25 ਮਿੰਟ ਤੇ ਕਰੋ ਮੈਨੂੰ ਖਾੜਾ ਬੰਨ ਲੈਣ ਦੇ ਹਲੇ ਪਹਿਲਾਂ ਨਹੀਂ ਗੱਲ ਹੋਣੀ ਤੁਹਾਡੀ ਤੁਹਾਡਾ ਧੰਨਵਾਦ ਹੈ ਸਾਰਿਆਂ ਦਾ ਜਿੱਥੇ ਵੀ ਸੁਣਦੇ ਹੋ ਪੰਜਾਬ ਦੇ ਵਿੱਚੋਂ ਖਬਰਾਂ ਜਦ ਦਾ ਕੋਣ ਜ਼ਾਤਾਂ ਲੱਗਿਆ ਉਹਦੇ ਵਿੱਚੋਂ ਗੱਲਾਂ ਕੁਝ ਵਧੀਆ ਨਹੀਂ ਆ ਰਹੀਆਂ ਬਾਹਰ ਸਨੇਹਾ ਲਾਓ ਪਿੱਛੇ ਇਹ ਡਲਿਆਂ ਨਾਲ ਜਾਂ ਸਤਕਾਰਯੋਗ ਬਜ਼ੁਰਗ ਹੈ 90 ਸਾਲ ਦਾ ਦੇਖੋ ਵਖਰੇਵੇਂ ਕੋਈ ਵੀ ਹੋ ਸਕਦੇ ਨੇ ਕੋਈ ਵੀ ਕਾਰਨ ਹੋ ਸਕਦਾ ਗੋਟਾਂ 'ਚ ਨਾਂ ਬਣੀ ਹੋ ਸਕਦੀ ਹੈ ਪਰ ਉਹ ਪੰਜ ਵਾਰ ਪ੍ਰਧਾਨ ਕੀ ਮਨਿਸਟਰ ਬਣਿਆ 25 ਸਾਲ ਉਹਨੇ ਇਪੀਐ ਸਰਦਾਰੀ ਤੇ ਜੱਦੇ ਉਸ ਖਿੱਤੇ ਦੇ ਵਿੱਚ ਵਿਕਾਸ ਸਿੰਘ ਬਾਦਲੂਨੀ ਰਾਜਨੀਤੀ ਚ ਆਏ ਨੇ ਕੋਈ ਖੰਗਾ ਨਹੀਂ ਦਿੱਤਾ ਚਾਹੇ ਉਹਨਾਂ ਨੂੰ ਸਾਰੇ ਸ਼ਾਸਤ ਤੇ ਸ਼ਸਤਰ ਦੀ ਵਿਧੀ ਸਾਰੀ ਆਉਂਦੀ ਹੈ ਸਭ ਕੁਝ ਉਹਨਾਂ ਨੂੰ ਆਉਂਦਾ ਪਰ ਕੱਕਿਆਂ ਵਾਲਾ ਤੇ 90 ਸਾਲ ਦੀ ਉਮਰ ਦਾ ਲਿਹਾਜ਼ ਚਾਹੀਦਾ ਇਹ ਜਿਹੜੀ ਗੱਲ ਹੋਈ ਹੈ ਰੱਤੇ ਖੇੜੇ ਬਿਲਕੁਲ ਗਲਤ ਹੈ ਮੂਰ ਹੀ ਗਲਤ ਹੈ ਜਿਹੜੇ ਡਲਿਆਂ ਗੱਲ ਹੈ ਤਖਬੀਜ਼ ਬਾਦਲ ਦੀ ਕਾਰਵਾਈ ਤੇ ਉਹ ਵੀ ਗਲਤ ਹੈ ਤਕਰਾਰ ਹੋ ਸਕਦੀ ਹੈ ਜਿਵੇਂ ਮਨਪ੍ਰੀਤ ਬਾਦਲ ਨੂੰ ਘੇਰਿਆ ਹੁੰਦੜ ਨੂੰ ਘੇਰਿਆ ਨਕਈ ਨੂੰ ਘੇਰਿਆ ਘੇਰਿਆ ਮਤਲਬ ਖੜ ਕੇ ਗੱਲ ਹੋ ਸਕਦੀ ਹੈ ਵੀ ਹੁਣ ਕਿਵੇਂ ਵੋਟਾਂ ਮੰਗਦੇ ਫਿਰਦੇ ਆ ਪਹਿਲਾਂ ਵੀ ਅਸੀਂ ਇੱਥੇ ਸੀ ਪਰ ਆ ਜਿਹੜਾ ਕੰਮ ਹੈ ਇਹ ਪੁੱਠਾ ਪਊ ਬਹੁਤ ਰੱਤੇ ਖੇੜੇ ਵਾਲੀ ਘਟਨਾ ਅਮਰੀਕ ਅਜਨਾਲੇ ਦੇ ਭਾਈ ਵੱਲੋਂ ਕੀਤੀ ਤੇ ਮੈਨੂੰ ਅੱਜ ਪਹਿਲੀ ਵਾਰ ਹੈਰਾਨੀ ਹੋਈ ਕਿ ਅਮਰੀਕ ਸਿੰਘ ਅਜਨਾਲਾ ਉਹ ਦੰਦਵੀ ਟਕਸਾਲ ਦਾ ਅਜਨਾਲਾ ਗਰੁੱਪ ਕਰਕੇ ਲਿਖਦੇ ਤੇ ਹੈ ਦਲ ਦੇ ਨਾਲ ਇਹ ਕੀ ਕਹਾਣੀ ਹੋ ਗਈ ਯਾਦ ਹੈ ਤੁਹਾਨੂੰ ਜਦ ਅ ਇੱਕ ਸਰਕਾਰੀ ਰੈਸਟ ਹਾਊਸਾਂ ਦੇ ਵਿੱਚ ਜੀਪਾਂਜ ਬਿਠਾਈ ਫਿਰਦੇ ਸੀ ਮੁਖਮਸਿਓਂ ਆ ਨਾਲ ਹੀ ਅਮਰੀਕ ਸਿੰਘ ਅਜਨਾਲਾ ਤੇ ਮੈਨੂੰ ਲੱਗਦਾ ਉਹ ਪਿਛਲੇ ਸਾਲ ਦੀ ਗੱਲ ਹੈ ਜਦ ਆਪਣਾ ਇਕੱਠ ਸਰਵੱਤ ਖਾਲਸਾ ਹੋਇਆ ਸੀ ਮੈਨੂੰ ਤਾਂ ਇਉਂ ਪਤਾ ਲੱਗਿਆ ਵੀ ਨੇੜੇ ਨੇ ਇਹ ਪਰ ਉਹਦੇ ਭਾਈ ਬਨੂ ਐਡੀ ਆਪ ਹੁਦਰੀ ਗੱਲ ਕਿਵੇਂ ਹੋ ਯਾਦ ਰੱਖਿਓ ਇਹ ਦਾ ਚ ਜੇਲ੍ਹ ਗਏ ਬੰਦੇ ਜਦ ਬਾਹਰ ਆਉਂਦੇ ਨੇ ਤਾਂ ਨੇਤਾ ਬਣ ਆਉਂਦੇ ਨੇ ਸਾਡੇ ਸਾਹਮਣੇ ਜੋਧਪੁਰ ਵਾਲਾ ਇਤਿਹਾਸ ਹੈ ਮਰਜੀਬੜੇ ਜਿਹੜੇ ਗਏ ਸੀ ਉਹ ਮਰਜੀਬੜੇ ਉਸ ਤਰ੍ਹਾਂ ਹੀ ਲੱਗੇ ਘਰਾਂ ਦੇ ਵਿੱਚ ਘਾਹ ਉੱਗ ਖੜਿਆ ਪਰ ਜਾਲਮ ਤੋਂ ਨਿਕਲੇ ਵਿਸੇ ਬਲਟੋਲੇ ਆਉਣੀ ਮਹਿਤੇ ਚਾਵਲੇ ਆਉਣੀ ਹਰਮਿੰਦਰ ਗਿੱਲ ਸੰਧੂ ਆਉਣੀ ਤੇ ਨਾਲ ਹੀ ਗਰਚਨ ਗਰੇਵਾਲ ਆਉਣੀ ਅੱਜ ਉਹ ਨੇ ਫਿੱਟ ਕਰਕੇ ਚਿੱਪਾਂ ਸਿਰ ਦੇ ਵਿੱਚ ਅੰਦਰੋਂ ਕੱਢੇ ਇਸ ਤਰ੍ਹਾਂ ਜਾਣਗੇ ਕੋਈ ਅੰਦਰ ਜਾਊ ਬਾਹਰ ਨੇਤਾ ਬਣ ਕੇ ਆਉ ਤੇ ਮੁਰਤੇ ਕਾਨੂੰ ਪੁ ਦੇਖਦਾ ਉਹ ਐਮਐਲ ਆ ਜਿਵੇਂ ਆ ਬਣੇ ਹੋਏ ਨੇ ਜਿਨ੍ਹਾਂ ਦੇ ਨਾਮ ਦੱਸਿਆ ਮੈਂ ਤੁਹਾਨੂੰ ਇਹਨਾਂ ਨੂੰ ਪਿੱਛੇ ਸਨੇਹਾ ਲਿਓ ਅਕਲ ਦੋ ਪਿੰਡਾਂ ਚ ਜਿੱਥੇ ਤੁਹਾਡੀ ਜਗ੍ਹਾ ਇਸ ਸਤਕਾਰ ਸਹਿਤ ਗੋਟਾ ਪਾਓ ਡਲੇ ਨਾ ਮਾਰੋ ਜੁੱਤੀਆਂ ਨਾ ਮਾਰੋ ਪੁੱਠੀ ਪੈ ਤੂੰ ਹਾਰ ਜਾਉਂਗੇ ਕੋਈ ਵੀ ਵਿਰੋਧੀ ਆ ਆਪ ਮੈਨੂੰ ਨਹੀਂ ਪਤਾ ਸੀ ਸਤਕਾਰ ਕਾਇਮ ਰੱਖੋ ਬਜ਼ੁਰਗ ਨੇ ਉਹ ਵੱਡੇ ਨੇ ਸਾਡੇ ਧਰਮ ਦੇ ਵਿੱਚ ਸਾਡੇ ਸਭਿਆਤਾ ਦੇ ਵਿੱਚ ਵੱਡਿਆਂ ਦਾ ਸਤਕਾਰ ਹੈ ਗੁਰੂਵਾਲ ਵੇਖੋ ਉਹੀ ਗੁਰੂ ਜਿਹੜਾ ਬਾਜ਼ ਦੇ ਪਿੱਛੇ ਰੋਲਾ ਪਾ ਕੇ ਤਾਜ ਮੰਗਦਾ ਜਿਹੜਾ ਪੁੱਤ ਪਿਤਾ ਨੂੰ ਜਿਹੜਾ ਸ਼ਹੀਦ ਹੈ ਜਿਦਾ ਥੱਲੇ ਘੋੜਾ ਪੰਜਾਂ ਮਾਰ ਕੇ ਸ਼ਰੀਰ ਸਾਹਿਬ ਘੋੜੇ ਨੂੰ ਧਰਤੀ ਤੇ ਗੱਡਣ ਉਹੀ ਗੁਰੂ ਫਿਰ ਕਾਤਲ ਦੇ ਪੁੱਤ ਦੇ ਨਾਲ ਇਕੱਠਾ ਸ਼ਿਕਾਰ ਵੀ ਖੇਲਦਾ ਜਿਹਨੇ ਨੀਹਾਂ ਦੇ ਵਿੱਚ ਚਿਣੇ ਲਾਲ ਉਸਦੇ ਪੁੱਤ ਦੇ ਨਾਲ ਉਹਦੇ ਰਾਜ ਮਹਿਲਾਂ ਦੇ ਵਿੱਚ ਉਹਦੇ ਵੱਡਿਆਂ ਮਹਿਲਾਂ ਦੇ ਵਿੱਚ ਉਹਦੇ ਦਰਬਾਰ ਦੇ ਵਿੱਚ ਨੀਲੇ ਦਾ ਸ਼ਾਹ ਅਸਵਾਰ ਬਣੇ ਬਣਾਏ ਘੋੜੇ ਜਾ ਚੜਦਾ ਇਹ ਆ ਸਦੀ ਮੀਰੀ ਤੇ ਪੀਰੀ ਇਹ ਨਹੀਂ ਹੈ ਡਲਿਆਂ ਦੇ ਵਿੱਚੋਂ ਜੁੱਤੀਆਂ 'ਚੋਂ ਕੱਖ ਨਹੀਂ ਲੱਭਣਾ ਬਹੁਤ ਡਲੇ ਤੇ ਅਸੀਂ ਜੁੱਤੀਆਂ ਮਾਰ ਕੇ ਵੇਖਿਆ ਮੌਰ ਕੁੱਟਣ ਦੇ ਬਹੁਤ ਭੜੇ ਔਰ ਹਮਦਰਦੀ ਦੀ ਵੋਟ ਮਿਲੂਗੀ ਜਿੱਤੀ ਜਟਾਈ ਬਾਜੀ ਹਾਰੋਂਗੇ ਸਨੇਹਾ ਲਾਓ ਪਿੱਛੇ ਵਪਾਰਕ ਸੰਦੇਸ਼ 11:30 ਮਿੰਟ ਹੋਏ ਨੇ ਇੱਥੇ ਗੱਲ ਪਹਿਲੀ ਕੰਪਲੀਟ ਕਰਦੇ ਆ ਜਿਹੜੀ ਸਿਮਰਤ ਨੇ ਗੱਲ ਕੀਤੀ ਹੈ ਕਿ ਜੇ ਹੁਕਮ ਦੇਤਾ ਫਿਰ ਆਮ ਆਦਮੀ ਪਾਰਟੀ ਵਾਲੇ ਬਚਨੇ ਨਹੀਂ ਆਵੀ ਗੱਲ ਨਹੀਂ ਹੈ ਬੀਬਾ ਇੰਉਂ ਵੀ ਠੀਕ ਨਹੀਂ ਆਵੀ ਗੱਲ ਉੱਚੀ ਹੈ ਜਿਵੇਂ ਕੋਲੇ ਵਾਲੀ ਵਾਲਾ ਕਹਿੰਦਾ ਸੀ ਵੀ ਕੜੇ ਲਿਹਾਦਾਂਗੇ ਵਿਤੋਂ ਵੱਧ ਨਹੀਂ ਗੱਲ ਕਰੀਦੀ ਅੱਤ ਖੁਦਾ ਦਾ ਵੈਰ ਹੈ ਹੁੰਜੇ ਸੁੱਟ ਲੈਂਦਾ ਉਹ ਦਰਿਏ ਡਾਡੇ ਤੋਂ ਜਰਨੈਲੀਆਂ ਜਨੂਲੀਆਂ ਸਭ ਰੁਲ ਜਾਂਦੀਆਂ ਇੱਜ਼ਤ ਦੀ ਗੱਲ ਹੈ ਜਿੱਥੇ ਉਧਰ ਇਹ ਵੀ ਲੋਕ ਪਾਗਲ ਨੀ ਪਿੰਡਾਂ ਦੇ ਵਿੱਚ ਇੱਕੋ ਭਾਈ ਪਣਪੇ ਚ ਰਹਿਣ ਵਾਲੇ ਉਥੇ ਦੀ ਵੀ ਬੇਨਤੀ ਤੇ ਇੱਥੇ ਦੀ ਵੀ ਮੈਂ ਬੇਨਤੀ ਕਰਨਾ ਆਪਣੇ ਸ਼ਹਿਰਾਂ 'ਚ ਜੀਹਨੂੰ ਮਰਜ਼ੀ ਵੋਟ ਪਾਓ ਆਪਦੇ ਵਿੱਚ ਸਤਕਾਰ ਰੱਖੋ ਵੋਟਾਂ ਮੁੱਕ ਚਾਰ ਫਰਵੇ ਨੂੰ ਆਪਾਂ ਇੱਥੇ ਰਹਿਣਾ ਪਤਾ ਨਹੀਂ ਕਿਹਨੇ ਕੀ ਬਣਨਾ ਮਾੜਾ ਨਾ ਕਰੋ ਕਿਸੇ ਦਾ ਆਪਣੀ ਆਪਣੀ ਗੱਲ ਤੇ ਵਜ਼ਿੱਦ ਵੀ ਨਹੀਂ ਹੋਣ ਦੀ ਲੋੜ ਆਪਣੀ ਜਿੱਥੇ ਤੁਹਾਡੀ ਗੱਲ ਬਣਦੀ ਹੈ ਵੋਟ ਪਾ ਦਿਓ ਤੇ ਉਹਦੇ ਹੱਕ 'ਚ ਵੈਲੀ ਕਰੋ ਮਾੜਾ ਨਾ ਕਹੋ ਬਿਲਕੁਲ ਹੁਣ ਪੰਜਾਬ ਇੰਸ਼ੋਰੈਂਸ ਤੋਂ ਸ਼ੇਰ ਜੰਗrana ਜੀ ਅੜਿਕ ਰਹੇ ਨੇ ਲੋਹੜੀ ਬੰਪਰ ਬਾਰੇ ਉਹਨਾਂ ਨੇ ਗੱਲਬਾਤ ਕਰਨੀ ਹੈ ਸ਼ੇਰ ਜੰਗrana ਜੀ ਤੁਹਾਡਾ ਸਵਾਗਤ ਪਾਜੀ ਤੁਹਾਨੂੰ ਸੁਣਨ ਵਾਲੇ ਸਾਰੇ ਪੈਨ ਪ੍ਰੋਗਰਾਮ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਤੇ ਲੋਹੜੀ ਦੀਆਂ ਐਡਵਾਂਸ ਦੇ ਵਿੱਚ ਬਹੁਤ ਮੁਬਾਰਕਾਂ ਜੀ ਮੁਬਾਰਕਾਂ ਜੀ ਤੇ ਕਿਹੜਾ ਇਹ ਜਿਹੜਾ ਬੰਪਰ ਡਰਾ ਦੀ ਗੱਲ ਦੱਸ ਕੇ ਗਿਆ ਸੀ ਪਿਛੇ ਦਿਨ ਉਹ ਜੀ ਤੇ ਉਹਦੇ ਬਾਰੇ ਕੁਝ ਹੋਰ ਤੁਸੀਂ ਗੱਲ ਦੱਸਣੀ ਚਾਹੁੰਦੇ ਹੋ ਜ਼ਰੂਰ ਜੀ ਮੈਂ ਮੈਸੇਜ ਹੀ ਦੇਣਾ ਚਾਹੁੰਦਾ ਆਪਣੀ ਸਾਰੀ ਕਮਿਊਨਿਟੀ ਨੂੰ ਇਨਵਾਈਟ ਕਰਨਾ ਚਾਹੁੰਦਾ ਜਿਹੜੇ ਵੀ ਪੈਂਟਰਾਮ ਨੇ ਅੱਜ ਤੱਕ ਆਦੇ ਬੱਚਿਆਂ ਦਾ ਇਹ ਪੰਜਾਬ ਇਸ਼ੂ ਦੇ ਅਸੀਂ ਤੇ ਕੰਟੈਸਟ ਆਪਣੇ ਪਹਿਲੇ ਗੁਰੂ ਸਾਹਿਬ ਗੁਰਨਾਨਕ ਦੇਵ ਜੀ ਨੇ ਸਾਨੂੰ 13 ਦਾ ਜਿਹੜਾ ਇੱਕ ਕਨਸੈਪਟ ਦਿੱਤਾ ਕਰਦੇ ਹੋਏ ਅਸੀਂ ਆਪਣੀ ਕਮਿਊਨਿਟੀ ਦਾ ਧੰਨਵਾਦ ਕਰਨਾ ਸੀ ਪੂਰੇ ਕੈਨੇਡਾ ਦੇ ਵਿੱਚ ਐਸ ਟਾਈਮ ਪੰਜਾਬ ਇਸ਼ੂ ਨੇ ਜਿਹੜਾ ਘਰ ਘਰ ਆਪਣਾ ਨਾਮ ਬਣਾਇਆ ਆਪਣੀ ਕਮੇਟੀ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਤੇ ਸੌਖਾ ਸਿਰਫ ਆਪਣੇ ਬੱਚਿਆਂ ਦਾ ਨਾਮ ਤੇ ਡੇਟ ਆਫ ਬਰਥ ਸਾਨੂੰ ਟੈਕਸਟ ਕਰ ਦਿਓ ਜਾਂ ਕਾਲ ਕਰ ਲਓ ਤੇ ਤੁਹਾਡਾ ਨਾਮ ਇਸ ਡਰਾ ਫ੍ਰੀ ਵਾਲੇ ਡਰਾ ਵਿੱਚ ਐਂਟਰ ਹੋ ਜਾਊਗਾ ਤੇ ਨੰਬਰ ਹੈਗਾ ਪਿਛਲਾ ਨੰਬਰ ਅਸੀਂ ਸਪੈਸ਼ਲੀ ਇਹੀ ਲਿਆ ਹੈਗਾ ਜਿਹੜਾ ਸਾਡਾ ਡਰਾਅ ਸੀਗਾ 604 613 13 ਜਾਂ ਸਾਡੀ ਵੈਬਸਾਈਟ ਹੈ ਜੀ ਪੰਜਾਬ ਇੰਸ਼ੂਰਸ.ਸੀਏ ਸਾਡੀ ਵੈਬਸਾਈਟ ਤੇ ਕੱਢਣਾ ਹੈਗਾ ਉਹਦੇ winner ਤੁਸੀਂ ਹੋਵੋ ਸੋ ਦੀ ਗੱਲ ਦੱਸਦੇ ਆ ਜਦੋਂ ਆਪਾਂ 13 ਵੀਕ ਸਟਾਰਟ ਕੀਤਾ ਸੀ ਹਰ ਵੀਕ ਜਿਹੜਾ ਆਪਾਂ ਪ੍ਰਾਈਜ਼ ਕੱਢੇ ਸੀਗੇ 1000 ਡਾਲਰ ਦਾ ਗਿਫਟ ਕਾਰਡ ਸੀਗਾ ਫਿਰ Uh, 500 ਡਾਲਰ ਦਾ ਵੀਜ਼ਰ ਸੀਗਾ ਆਪਣੇ ਇਸ ਤੋਂ ਬਾਅਦ ਕੀ ਵੀ ਸੀਗੇ ਕਾਫੀ ਚੀਜ਼ਾਂ ਸੀ ਜਿਹੜੇ ਬੱਚਿਆਂ ਨਾਲ ਰਿਲੇਟਡ ਸੀਗੇ ਤੇ ਉਦੋਂ ਆਪਾਂ ਨੂੰ ਇਹ ਉਮੀਦ ਹੁੰਦੀ ਸੀ ਕੋਈ ਨੀ ਅਗਲੇ ਵੀਕ ਆਪਣੇ ਕੋਲ ਆ ਜਣਾ ਦਾ ਫਾਈਨਲ ਵਨ ਸੋ ਇਹ ਹੈਗਾ ਜੀ ਮੇਨ ਹੈਗਾ ਵਾਰਲਡ ਡਿਜ਼ਨੀ ਵਰਲਡ ਦਾ ਇੱਕ ਟੂਰ ਹੈਗਾ ਇਨ ਸੈਕੰਡ ਹੈਗਾ ਜੀ ਲਾਸ ਵੈਗਸ ਦਾ ਜਿਹੜੇ ਬੱਚੇ ਵੀ ਵਿਨ ਕਰਨਗੇ ਉਹਨਾਂ ਦੀ ਸਾਰੀ ਫੈਮਿਲੀ ਨੂੰ ਪੰਜਾਬ ਇਸ਼ੂਅੰਸ ਵੱਲੋਂ ਇਹ ਟ੍ਰਿਪ ਜਿਹੜਾ ਹੈਗਾ ਫ੍ਰੀ ਦੇ ਵਿੱਚ ਜਿਹੜਾ ਅਰੇਂਜ ਕੀਤਾ ਗਿਆ ਹੈਗਾ ਸੋ ਜਿਹੜਾ ਲੱਕੀ ਬੱਚਾ ਹੋਏਗਾ ਉਹਨਾਂ ਦੇ ਰeal ਬ੍ਰਦਰ ਸਿਸਟਰ ਨੇ ਪੇਰੈਂਟਸ ਨੇ 3 ਦਿਨ ਲਈ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਡਿਜ਼ਨੀ ਵਰਲਡ ਦਾ ਦੇ ਰਹੇ ਹੈਗੇ ਤੇ ਜੇ ਉਹਨਾਂ ਨੇ ਜਾਣਾ ਹੋਇਆ ਤੇ ਮੈਂ ਕਹਾਂਗਾ ਤੁਸੀਂ ਆਪਣਾ ਪਾਓ ਬਿਕਾਜ਼ ਹੁਣ 1 ਦਿਨ ਸਿਰਫ ਰਹਿ ਗਿਆ ਅਸੀਂ ਕੱਲ 12 ਜਨਵਰੀ ਤੱਕ ਜਿਹੜਾ ਹੈਗਾ ਸਾਰਾ ਜਿਹੜਾ ਜਿੰਨੇ ਵੀ ਪਾਰਟਿਸਪੈਂਟ ਹੋਣਗੇ ਉਹਨਾਂ ਦਾ ਨਾਮ ਲਵਾਂਗੇ ਕਿਉਂਕਿ 13 ਤਰੀਕ ਨੂੰ ਕਾਫੀ ਅਸੀਂ ਸੈਲੀਬ੍ਰੇਸ਼ਨ ਕਰਕੇ ਬਿਜ਼ੀ ਆ ਨੰਬਰ ਫਿਰ ਮੈਂ ਦੱਸ ਦਾਂ ਜੀ 604 603 13 13 604 603 13 13 ਜਬ ਪੰਜਾਬ ਇੰਸ਼ੁਰਡ.ca ਸਾਡੀ ਵੈਬਸਾਈਟ ਹੈ ਤੁਸੀਂ ਡਾਇਰੈਕਟਲੀ ਵੀ ਜਾ ਸਕਦੇ ਹੋ ਤੇ ਨਾਲ ਹੀ ਭਾਜੀ ਮੈਂ ਦੱਸਣਾ ਚਾਹੁੰਦਾ ਜਿਹੜਾ ਵਾਲਟ ਡਿਜ਼ਨੀ ਲੈਂਡ ਹੈਗਾ ਵਾ ਡਿਜ਼ਨੀ ਵਰਲਡ ਹੈ ਇਹ ਇਸ ਸਟੋਰੀ ਬੜੀ ਡਿਫਰੈਂਟ ਹੈ ਕਿ ਤੇ ਰॉय ਦੋ ਬ੍ਰਦਰਸ ਕਿਡ ਨੇ ਕੋਸ਼ਿਸ਼ ਕੀਤੀ ਸੀ ਵੀ ਦਾ ਇੱਕ ਸੀਗਾ ਅਸੀਂ ਦੁਨੀਆ ਦੇ ਉੱਤੇ ਇੱਕ ਦਾ ਰਿਜ਼ੋਰਟ ਇਦਾਂ ਦਾ ਕੋਈ ਬੱਚਿਆਂ ਲਈ ਬਣਾਉਣਾ ਹੈਗਾ ਜਿੱਥੇ ਸਾਰੀ ਦੁਨੀਆ ਤੋਂ ਬੱਚੇ ਆ ਕੇ ਇੰਜੋਏ ਕਰ ਸਕਣ ਲੇਕਿਨ ਜਿਹੜਾ ਉਹਨਾਂ ਦਾ ਡ੍ਰੀਮ ਸੀ ਕਿਉਂਕਿ ਕਾਫੀ ਬਿਲੀਅਨਸ ਆਫ ਸੀਗਾ ਮੈਨੂੰ ਆਪ ਉੱਥੇ ਤਿੰਨ ਵਾਰੀ ਜਾਣ ਦਾ ਮੌਕਾ ਮਿਲਿਆ ਤੇ 110 ਕਿਲੋਮੀਟਰ ਦੇ ਵਿੱਚ ਦੇ ਬ੍ਰਦਰ ਜਾਂਦੇ ਸੀਗੇ ਅਸੀਂ ਇਦਾਂ ਡ੍ਰੀਮ ਨੂੰ ਫੁੱਲਫੁੱਲ ਕਰਨਾ ਹੈ ਇਸ ਕਰੋ ਕਿਸੇ ਨੇ ਵੀ ਇਸ ਨੂੰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹ ਕਹਿੰਦੇ ਤੁਹਾਡਾ ਡ੍ਰੀਮ ਬੜਾ ਵਧੀਆ ਹੈ ਡ੍ਰੀਮ ਨੂੰ ਸਪੋਰਟ ਕਰਦੇ ਹਾਂ ਪਰ ਅਸੀਂ ਫਾਈਨਾਂਸ ਨਹੀਂ ਕਰ ਸਕਦੇ ਕਿਉਂਕਿ ਦੁਨੀਆ ਤੇ ਇਦਾਂ ਦੀ ਕੋਈ ਪਰ ਕਾਮੀ ਦੋਨਾਂ ਬ੍ਰਦਰਸ ਨੇ ਹੋਟਲਾਨੀ ਛੱਡਿਆ 1965 ਵਿੱਚ ਸਟਾਰਟ ਕੀਤਾ ਤੇ 1971 ਦੇ ਵਿੱਚ 6 ਸਾਲਾਂ ਦੇ ਵਿੱਚ ਨੂੰ ਆਪਣਾ ਬਣਾ ਕੇ ਤੇ 1971 ਦੇ ਵਿੱਚ ਲੋਕਾਂ ਓਪਨ ਕੀਤਾ ਸੀਗਾ ਅੱਜ 52 ਮਿਲੀਅਨ ਤੋਂ ਜ਼ਿਆਦਾ ਵਿਜ਼ਟਰ ਹਰ ਸਾਲ ਜਿਹੜਾ ਵਿਜ਼ਿਟ ਕਰਦੇ ਆਪਣੇ ਬੱਚੇ ਉੱਥੇ ਇੰਜੋਏ ਕਰਦੇ ਨੇ ਤੇ ਪੰਜਾਬ ਇੰਸ਼ੂਰੈਂਸ ਨੇ ਉਪਰਾਲਾ ਕੀਤਾ ਕਿਉਂਕਿ ਪੰਜਾਬ ਇੰਸ਼ੂਰ ਨੂੰ ਸਾਡੀ ਕਮਿਊਨਿਟੀ ਨੇ ਆਪਣੇ ਦਿਲ ਵਿੱਚ ਜਗ੍ਹਾ ਦਿੱਤੀ ਜਿਹੜੀ ਬਹੁਤ ਘੱਟ ਲੋਕਾਂ ਨੂੰ ਮਿਲਦੀ ਹੈ ਸਾਨੂੰ ਉਹਨਾਂ ਨੇ ਅਕਸੈਪਟ ਕੀਤਾ ਜਿਹੜੀਆਂ ਸਾਡੀਆਂ ਪੂਰੇ ਕੈਨੇਡਾ ਵਾਈਡ ਉਹਨਾਂ ਨੇ ਕੀਤਾ ਟੋਰਾਂਟੋ ਹੈੱਡ ਆਫਿਸ ਸਾਡਾ ਕੀਤਾ ਮੈਂ ਆਪਣੇ ਸਾਰੇ ਤੁਸੀਂ ਆਪਣੇ ਬੱਚਿਆਂ ਦਾ ਨਾਮ ਇਸ ਡਰਾਅ ਫ੍ਰੀ ਵਾਲੇ ਡਰਾਅ ਜਰੂਰ ਐਂਟਰ ਕਰੋ ਉੱਥੇ ਜਾ ਕੇ ਜਿਹੜਾ ਨਜ਼ਾਰਾ ਹੈਗਾ ਭਾਜੀ ਬਹੁਤ ਹੀ ਵਧੀਆ ਹੈਗਾ ਇਸ ਤੋਂ ਇਲਾਵਾ ਜਿਹੜੇ ਉਤੇ 3 ਮੀਨਿਟ ਟਰੈਕਸ਼ਨ ਹੈਗੇ ਨੇ ਅ ਪਪਲ ਜੀ ਨੰਬਰ ਨੋਟ ਕਰੋ 604 603 1313 ਕਿਉਂਕਿ ਅੱਜ ਦਾ ਦਿਨ ਤੇ ਕੱਲ ਦਾ ਦਿਨ ਹੈਗਾ ਆਪਣੇ ਕੋਲ ਸਿਰਫ ਉਹਨਾਂ 2 ਦਿਨ ਬਚੇ ਨੇ ਤਾਂ ਕਿ ਆਪ ਆਪਣੇ ਬੱਚਿਆਂ ਦਾ ਸਾਰਿਆਂ ਦਾ ਨਾਮ ਸੀ ਹੈ ਤੇ ਫਿਰ ਜਿਹੜੀਆਂ ਉਥੋਂ ਮੇਨ 3 ਟਰੈਕਸ਼ਨਸ ਹੈ ਜਿਹੜੀਆਂ ਮੈਨੂੰ ਜਾਦਾ ਵਧੀਆ ਲੱਗਦੀਆਂ ਨੇ ਸਭ ਤੋਂ ਮੇਨ ਹੈਗਾ ਮੈਜਿਕ ਕਿੰਗਡਮ ਸੈਕੰਡਰੀ ਡਿਜ਼ਨੀ ਹਾਲੀਵੁੱਡ ਸਟੂਡੀਓ ਤੇ 3rd ਹੈ ਡਿਜ਼ਨੀ ਐਨੀਮਲ ਕਿੰਗਡਮ ਤੇ ਜਿਹੜਾ ਉੱਥੋਂ ਦਾ ਸਿੰਡਰੇਲਾ ਕੈਸਲ ਤੇ ਬੜਾ ਹੀ ਮਨਮੋਹਕ ਹੁੰਦਾ ਬਿਕਾਜ਼ ਜਿਹੜੇ ਆਪਣੇ ਬੱਚੇ ਨੇ ਸਾਰਾ ਦਿਨ ਟੀਵੀ ਦੇ ਦੇਖਦੇ ਨੇ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਨੇ ਮਿੱਕੀ ਮਾਊਸ ਮਿਨੀ ਮਾਊਸ ਗੂਫੀ ਡੋਨਲਡ ਡੱਕ ਸਾਰੇ ਉੱਥੇ ਘੁੰਮ ਰਹੇ ਹੁੰਦੇ ਨੇ ਸੋ ਜਿਹੜੇ ਆਪਣੇ ਛੋਟੇ ਬੱਚੇ ਨੇ ਉਹਨਾਂ ਨੂੰ ਐ ਲੱਗਦਾ ਹੁੰਦਾ ਵੀ ਕਿ ਇੱਕ ਡ੍ਰੀਮ ਨਾਮ ਇਸ ਫ੍ਰੀ ਵਾਲੇ ਲੱਕੀ ਡਰਾਅ ਚ ਨਹੀਂ ਪਾਇਆ ਸੀ ਤੇ ਪੰਜਾਬ ਤੇ ਜਾ ਕੇ ਜਾਂ ਤੁਸੀਂਾਨੂੰ ਤੇ ਸਿਰਫ ਡੇਟ ਆਫ ਬਰਥ ਭੇਜਣਾ ਹੈਗਾ ਸਾਡੇ ਬੱਚਿਆਂ ਦਾ ਨਾਮ ਇਸ ਲੱਕੀ ਡਰਾਅ ਦੇ ਵਿੱਚ ਆ ਜਾਣਾ ਹੈਗਾ ਮੈਂ ਧੰਨਵਾਦ ਕਰਦਾ ਆਪਣੀ ਕਮਿਊਨਿਟੀ ਦਾ ਜਿਨ੍ਹਾਂ ਨੇ ਇੰਨਾ ਸਾਨੂੰ ਵਧੀਆ ਫਰਮੈਂਟਿਕ ਦਿੱਤਾ ਸਾਡੇ ਕੰਟੈਸਟ ਦੇ ਵਿੱਚ ਪਿਛਲੇ 13 ਵੀਕਾਂ ਦੇ ਵਿੱਚ ਨੰਬਰ ਗੇਮ ਸੇ ਮੈਂ ਜੀ 604 603 13 13 604 603 13 13 ਇਸ ਤੋਂ ਇਲਾਵਾ ਮੈਂ ਭਾਵੇਂ ਇੱਕ ਹੋਰ ਚੀਜ਼ ਸਾਂਝੀ ਕਰਨਾ ਚਾਹੁੰਦਾ ਸਾਰੇ ਬੱਚੇ ਲੱਕੀ ਹੁੰਦੇ ਤੇ ਆਇਆ ਹੈਗਾ ਇੱਥੇ ਲੱਕੀ ਹੈਗਾ ਪਰ ਇੱਕ ਮੈਂ ਗੱਲ ਸਾਂਝੀ ਕਰਨਾ ਚਾਹੁੰਦਾ ਹੈਗਾ ਜਿੱਦਾਂ ਬਿਊਟੀ ਕੰਟੈਸਟ ਹੁੰਦੇ ਨੇ ਜਿੱਦਾਂ ਮੰਨ ਮਿਸ ਵਰਲਡ ਮਿਸ ਵਰਲਡ ਵਗੈਰਾ ਕਾਫੀ ਇਦਾਂ ਦੇ ਕੰਟੈਸਟ ਹੁੰਦੇ ਨੇ ਇਹ ਨਹੀਂ ਹੈਗਾ ਵੀ ਜਿਹੜੇ ਲੋਕ ਉਹਦੇ ਕਰਦੇ ਨੇ ਉਹ ਦੁਨੀਆ ਤੇ ਸਭ ਤੋਂ ਸੋਹਣੇ ਹੁੰਦੇ ਇਦਾਂ ਕਦੇ ਨੀ ਹੁੰਦਾ ਦੁਨੀਆ ਤੇ ਹੋਰ ਵੀ ਬੜੀ ਸੋਹਣੀ ਹੁੰਦੇ ਨੇ ਲੇਕਿਨ ਹੀ ਜਾਂਦਾ ਇਸ ਕਰਕੇ ਮੈਂ ਕਹੂੰਗਾ ਡਿਲੇ ਨਾ ਕਰੋ ਅਗਰ ਤੁਸੀਂ winner ਬਣਨਾ ਹੈਗਾ ਤੇ ਇਹਦੇ ਜਿਹੜਾ ਸਾਡਾ ਕੰਟੈਸਟ ਹੈਗਾ ਫ੍ਰੀ ਵਾਲਾ ਤੇ ਬੱਚਿਆਂ ਦਾ ਨਾਮ ਜ਼ਰੂਰ ਐਂਟਰ ਕਰੋ ਤੇ ਸਾਰੀ ਫੈਮਿਲੀ ਰੈਡੀ ਹੋ ਜਾਓ ਡਿਜ਼ਨੀ ਵਰਲਡ ਜਾਣ ਲਈ ਜਾਂ ਲਾਸ ਵੈਗਸ ਜਾਣ ਲਈ ਨੰਬਰ ਬੜਾ ਆਸਾਨ ਹੈ ਜੀ 604 603 1313 604 603 1313 ਜਾਂ ਪੰਜਾਬੀ ਸ਼ੋਰਟਕੱਟ ਇਹ ਸਾਡੀ ਵੈਬਸਾਈਟ ਹੈ ਜੀ ਧੰਨਵਾਦ ਜੀ ਰਾਣਾ ਜੀ ਧੰਨਵਾਦ ਤੁਹਾਡਾ ਸਮਾਂ ਦੇਣ ਲਈ ਥੈਂਕ ਯੂ ਵੈਰੀ ਮਚ ਜੀ ਤੁਸੀਂ ਟਾਈਮ ਦਿੱਤਾ ਧੰਨਵਾਦ ਤੁਹਾਡਾ 604 603 1313 ਥੈਂਕ ਯੂ ਵੈਰੀ ਮਚ ਲੇਖ ਲਿਆ ਜੀ ਨੰਬਰ ਲੋਕਾਂ ਨੇ ਫਾਰਕਸ ਸੰਦੇਸ਼ ਪਿਛਲੇ ਦਿਨੀ ਮੈਂ ਵੈਨੀਪੈਕ ਦੇ ਇੱਕ ਬੱਚੇ ਤੇਗਵੀਰ ਦੀ ਗੱਲ ਤੁਹਾਨੂੰ ਸੁਣਾਈ ਸੀ ਬਹੁਤ ਛੋਟੀ ਉਮਰ ਹੈ ਡੱਡੇ ਤੋਂ ਡਰੀਏ ਮੈਂ ਸਦਾ ਕਹਿਣਾ ਖੁਦ ਵੀ ਉਸੇ ਗੱਲ ਦਾ ਧਾਰਨੀ ਹੈ ਉਹਨੇ ਪਤਾ ਨਹੀਂ ਕਿੱਥੋਂ ਥੋਡੀ ਜ਼ਿੰਦਗੀ ਦਾ ਕਾਹਨਾ ਹਲਾਉਣਾ ਡਰ ਵੀ ਹੈ ਨਹੀਂ ਇਹਨੂੰ ਮੈਂ ਡਰਾਉਣ ਦਾ ਤੁਹਾਨੂੰ ਦੱਬਣ ਦਾ ਨਹੀਂ ਅਸੀਂ ਉਸਦੇ ਆਪਕੇ ਧੀ ਪੁੱਤਰ ਸਾਨੂੰ ਉਹ ਪਿਆਰ ਕਰਦਾ ਪਰ ਕੁਝ ਇੱਕ ਕਿਸਮਤ ਦਾ ਲੇਖ ਲਾ ਲਓ ਦੀ ਕਹਾਣੀ ਲਾ ਲਓ ਲਾ ਲਓ ਈ ਵਾਰ ਕੋਈ ਚੀਜ਼ਾਂ ਜਿਹੜੀਆਂ ਉਹ ਦਿੰਦਾ ਪਰ ਉਹ ਘੱਟ ਸਕਦੀ ਨੇ ਇਦੋਂ ਵੱਧ ਦੇ ਸਕਦਾ ਉਦੋਂ ਘਟਾ ਸਕਦਾ ਕਿਹੜਾ ਉਹਦਾ ਹੱਥ ਫੜਨਾ ਉਹਨੇ ਜਦ ਗਰਦਨ ਫੜਨੀ ਹਿੱਕ ਨਾਲ ਲਾਉਣਾ ਕੁਝ ਕਰਦਾ ਰਹਿੰਦਾ ਡਰਨਾ ਚਾਹੀਦਾ ਦੋਸਤੋਂ ਜੱਗੋਂ ਤੇਰਵੀਂ ਗੱਲ ਬੰਦਾ ਜਦ ਕਰਦਾ ਉੱਚੀ ਗੱਲ ਕਰਦਾ ਮੈਂ ਮੈਂ ਮੈਂ ਭੇਡ ਵਾਂਗੂ ਬੋਲਦਾ ਇਹਦੇ ਵਿੱਚੋਂ ਕੱਖ ਨਹੀਂ ਕੱਢੀਦਾ ਲਮਕਾ ਦੂ ਪੁੱਠਾ ਉਹ ਜੀ ਕਿਕਰ ਦੇ ਨਾਲ ਜਿੱਥੇ ਉੱਪਰੋਂ ਹਿੱਲੋਂਗੇ ਤਾਂ ਵੀ ਕੰਢੇ ਥੱਲੇ ਗਿਰੋਂਗੇ ਤਾਂ ਗਰਦਨ ਦੀ ਸੰਗਲੀ ਟੁੱਟੂ ਤੇ ਇੱਕ ਵੀਰ ਹਲੇ ੋੜਾ ਪਰ ਜੁਆਕ ਹੈ ਉਸ ਨੂੰ ਹੋਇਆ ਅਕਤੂਬਰ ਦੇ ਵਿੱਚ ਪਤਾ ਲੱਗਿਆ ਮਹੀਨੇ ਤਿੰਨ ਹੋਏ ਨੇ ਬੋਨ ਮੈਰੋ ਚਾਹੀਦੀ ਤੇ ਇਹਦੇ ਲਈ ਜਿਹੜਾ ਸਵਾਭ ਹੈ ਇੱਕ ਟੈਸਟ ਹੈ ਜਿਹੜਾ ਖਾਲਸਾ ਦਵੰਤ ਗੁਰਦੁਆਰਾ ਸਾਹਿਬ ਦੇ ਵਿੱਚ ਐਤਵਾਰ ਨੂੰ 11 ਤੋਂ 4 ਵਜੇ ਦੇ ਵਿੱਚ ਵਿੱਚ ਹੋਣਾ ਸਾਰੋਂ ਤੋਂ 35 ਸਾਲ ਦੀ ਉਮਰ ਚਾਹੀਦੀ ਹੈ ਤੇ ਪ੍ਰੋਵਿੰਸ਼ੀਅਲ ਸੋ ਇਸ ਦੇ ਕਰ ਰਹੇ ਨੇ ਤੇ ਨੌਜਵਾਨ ਮੁੰਡੇ ਜੈ ਖੰਗੂੜੇ ਵਰਗੇ ਤੇ ਉਸ ਦਾ ਗਰੁੱਪ ਇਸ ਨੂੰ ਆਰਗੇਨਾਈਜ਼ ਕਰਦਾ ਤੇ ਮਿਹਨਤ ਕਰਦਾ ਦੀ ਜਾਨ ਬਚਾਉਣ ਲਈ ਬੇਨਤੀ ਆ 11 ਤੋਂ 4 ਵਜੇ ਤੱਕ ਐਤਵਾਰ ਨੂੰ ਖਾਲਸਾ ਦਵੰਸ ਸੁਸਾਇਟੀ ਪਹਿਲਾ ਗੁਰੂ ਘਰ ਆਪਣਾ ਬਜ਼ੁਰਗਾਂ ਦਾ ਉੱਥੇ 17 ਤੋਂ 35 ਸਾਲ ਦੇ ਮਰਦ ਤੇ ਇਸਤਰੀਆਂ ਨੂੰ ਬੇਨਤੀ ਆ ਪਹੁੰਚ ਤੇ ਤਾਂ ਕਿ ਤੇਗ ਵੀਰ ਦੀ ਜਾਨ ਆਪਾਂ ਬਚਾ ਸਕੀ ਇਹ ਭਾਈਚਾਰਾ ਆਪਣਾ ਹੈ ਤੇ ਇਹ ਕਿਤੇ ਵੀ ਹੋ ਸਕਦਾ ਆਪਾਂ ਮਦਦ ਕਰੀਏ ਸ਼ਕਲਾ ਜੀ ਸਤਿ ਸ਼੍ਰੀ ਅਕਾਲ ਗਿਰਸਰ ਥਾਨੇ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਮੇਰੀ ਸਤਿ ਹਾਂਜੀ जी ਇਸੇ ਥੇੜਿਆ ਵਿੱਚ ਅਗੱਲ ਸਾਡਾ ਆਪਣਾ ਸ਼ੋਅਰੂਮ ਅਸੀਂ ਖੋਲ੍ਹ ਦਿੱਤਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕਰਦਾ ਆ ਅਸਟ੍ਰੇਲੀਆ ਵਾਲਿਆਂ ਦਾ ਕਿ ਬਹੁਤ ਹੀ ਸਾਡੀ ਗ੍ਰੈਂਡ ਓਪਨਿੰਗ ਸ਼ੋਰੂਮ ਚ ਆਏ ਔਰ ਬਹੁਤ ਹੀ ਸਾਡੇ ਆਪਣੇ ਸ਼ਹਿਰ ਚ ਮਿਲਣ ਲੱਗੇ ਆ ਬਹੁਤ ਹੀ ਅੱਛੀ ਗੱਲ ਹੈ ਜਿਸਰ ਨਾਲ ਮੈਂ ਪਹਿਲਾਂ ਤੁਹਾਨੂੰ ਦੱਸਣਾ ਤੁਹਾਡੇ ਬਹੁਤ ਸਿਆਣੇ ਹੈਗੇ ਔਰ ਬਹੁਤ ਹੀ ਸਪੈਨਟਰ ਸਾਡਾ ਪ੍ਰੋਗਰਾਮ ਚ ਦੱਸਣ ਦੇ ਹੈਗੇ ਔਰ ਮੈਂ ਦੱਸ ਦਿਆਂ ਕਿ ਸਾਡਾ ਹੁਣ ਸ਼ੋਰੂਮ ਬ੍ਰਿਸਬਨ ਤੇ ਦੇਚ ਹੈਗਾ ਇਹਦਾ ਐਡਰੈਸ ਹੈਗਾ ਯੂਨਿਟ ਨੰਬਰ 15 549 ਅੰਡਰਵੁੱਡ ਰੋਡ ਰੌਚਡੋ ਸ਼ਾਪਿੰਗ ਵਿਲੇਜ ਦੇ ਵਿੱਚ ਹੈਗਾ। ਔਰ ਦੇ ਵਿੱਚ ਹੈਗਾ। ਉੱਤੇ ਨਾ ਟੈਲੀਫੋਨ ਜਿਸ ਨਾਲ ਜਿਹੜੇ ਕਿ ਆਸਟ੍ਰੇਲੀਆ ਵਾਲੇ ਤੋਂ ਤੁਸੀਂ ਸਾਡੇ ਜਿੰਨੇ ਵੀ ਪ੍ਰੋਡਕਟਸ ਸਾਰੇ ਮਦਰ ਇੰਡੀਆ ਦੇ ਲੈ ਸਕਦੇ ਆ। ਔਰ ਇਸੇ ਹੀ ਇਸੀ ਸਰੋਤੋਂ ਜਿੰਨਾ ਪੂਰਾ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਸੀਜੀਡੀ ਕਵਰ ਕਰਦੇ ਆ ਜਿੰਨੇ ਸਾਡੇ ਮੇਲ ਆਰਡਰ ਆਉਂਦੇ ਸਕੇ ਅਸੀਂ ਹੁਣ ਸਾਰੇ ਦੇ ਆਫਿਸ ਤੋਂ ਕਵਰ ਕਰਾਂਗੇ। ਅਗਰ ਕਿਸੇ ਵੀ ਪ੍ਰਾਪਰਨ ਨੂੰ ਹੋਰ ਜਾਣਕਾਰੀ ਚਾਹੀਦੀ ਜੀ ਮੇਰੇ ਖਿਆਲ 5-6 ਦਿਨ ਰਹੇ ਉੱਥੇ ਹੁਣ ਆਹ ਗਰਮੀ ਦਾ ਮਾਹੌਲ ਆ ਕਿਹੜੇ ਜਗਾ ਤੁਸੀਂ ਘੁੰਮ ਕੇ ਆਏ ਤੇ ਕਿਉਂ ਜਾਂ ਲੱਗਿਆ ਤੁਹਾਨੂੰ ਦੇਸ਼ ਜੀ ਪਹਿਲੀ ਵਾਰ ਗਏ ਹੋ ਕਹਿੰਦੇ ਆਸਟ੍ਰੇਲੀਆ ਵਧੀਆ ਬਹੁਤ ਹੈ ਭਾਈਚਾਰਾ ਸਾਡਾ ਬਹੁਤ ਵਧੀਆ ਉੱਥਾਂ ਜੀ ਹਾਂ ਜੀ ਸਰ ਮੈਂ ਐਕਚੁਅਲੀ ਕਾਫੀ 25 ਸਾਲ ਤੋਂ ਤੇ ਲੇਕਿਨ ਹਮੇਸ਼ਾ ਆਪਣੀ ਫੈਮਿਲੀ ਨਾਲ ਜਾਂਦਾ ਸੀਗਾ ਇਸ ਵਾਰ ਅਸੀਂ ਗਏ ਸਕੇ ਮੈਨੂੰ ਜਾਣ ਦਾ ਮੌਕਾ ਮਿਲਿਆ ਬ੍ਰਿਸਬਨ ਸਿਡਨੀ ਨਾਊਰ ਐਕਚੁਅਲੀ ਪਹਿਲੇ ਜਨਵਰੀ ਨੂੰ ਮੈਂ ਗੁਰੂ ਘਰ ਦੋ ਜਿਹੜਾ ਗਿਆ ਬ੍ਰਿਸਬਨ ਦੇ ਵਿੱਚ ਬਹੁਤ ਹੀ ਅੱਛਾ ਲੱਗਾ ਉੱਥੇ ਇੰਨਾ ਰਸਤੀ ਭਾਰਤੀ ਨਹੀਂ ਸੀ ਨਿਉਦੀ ਔਰ ਬੱਚੇ ਬਜ਼ੁਰਗ ਬਹੁਤ ਹੀ ਤਦਾਦ ਵਿੱਚ ਜੰਗਾਇ ਸੀਗਾ ਉਦੋਂ ਤੱਕ 10 ਸਾਲ ਨਵੀਂ ਸਾਲ ਤੋਂ ਔਰ ਉੱਥ ਦਾ ਵਾਤਾਵਰਨ ਵੀ ਬਹੁਤ ਅੱਛਾ ਹੈ ਮਿਲ ਲੋਕ ਹੈ ਗਿਆ ਬੜੇ ਬੜੇ ਲੋਕਾਂ ਨੇ ਕਾਰਜ ਆ ਪਾਇਆ ਹੈਗੇ ਆ ਬੜੀਆਂ ਅੱਛੀ ਸੀਮ ਕਾਰਾਂ ਰੱਖੀਆਂ ਹੈਗੀਆਂ ਬੜੇ ਖੁਸ਼ਹਾਲ ਪੰਜਾਬੀ ਉਥੇ ਆਪਣੀ ਪਣਪਰਾ ਜਿਨ੍ਹਾਂ ਨੇ ਬਿਜ਼ਨਸ ਵੀ ਕਰਦੇ ਹੈਗੇ ਆ ਰੈਸਟੋਰੈਂਟ ਆ ਸਟੋਰ ਆ ਜਾਂ ਜਿਹੜੇ ਵੀ ਲਾਈਨ ਦੇ ਵਿੱਚ ਹੈਗੇ ਆ ਦੇ ਹੀ ਅੱਛਾ ਕਰ ਰਹਾ ਹੈ। ਅੱਛਾ ਜੀ ਤੇ ਹੋਰ ਪ੍ਰੋਡਕਟ ਇਸ ਸਾਲ ਦੇ ਸ਼ੁਰੂ ਦੇ ਵਿੱਚ ਪਹਿਲੀ ਤੇ ਗੱਲ ਛੋਟਾ ਪੈਕ ਇੱਕ ਬਣਾਉਣਾ ਸੀ ਤੁਸੀਂ ਬਸਮੇ ਦਾ ਉਹ ਢਾਈ ਦਾ ਉਸ ਦੀ ਗੱਲ ਦੱਸੋ ਵੀ ਉਹ ਕਦ ਬਣੂਗਾ ਤੇ ਹੋਰ ਜਿਹੜੇ ਪ੍ਰੋਡਕਟਸ ਨਵੇਂ ਇਸ ਸਾਲ ਬਾਰੇ ਆਏ ਉਹਨਾਂ ਬਾਰੇ ਦੋ ਜਾਣਕਾਰੀ। ਹਾਂਜੀ ਪਹਿਲਾਂ ਤਾਂ ਮੈਂ ਦੱਸੂਗਾ ਹੈਡ ਆਈ ਬਾਰੇ ਇਹ ਡਰੱਗ ਕੀ ਗੱਲ ਕੀਤੀ ਆ ਉਹ ਮੈਂ ਹਮੇਸ਼ਾ ਹੀ ਲਾਸਤਾਂ ਦੀ ਜਿਕੇ ਅਸੀਂ ਵੀ ਅੰਡਰਸਰ ਵੀ ਦੇ ਵਿੱਚ ਸਾਡਾ ਅੰਡਰ ਯੂਜ਼ ਕੀਤਾ ਮੈਂ ਉਹਨਾਂ ਨੂੰ ਦੱਸ ਦਿਆਂ ਕਿ ਤੁਸੀਂ ਕਈ ਵਾਰ ਕੁਐਸਚਨ ਪੁੱਛਦੇ ਰਹਿ ਗਿਆਂ ਕਿ ਸਿਰਫ ਪੈਣਾ ਵਾਸਤੇ ਜਾਂ ਭਰਾਵਾਂ ਵਾਸਤੇ ਹੈ ਕੋਈ ਵੀ ਭਣਸਾ ਲਾ ਸਕਦਾ ਹੈਗਾ ਦਾੜੀ ਨੇ ਵੀ ਲਾ ਸਕਦੇ ਆ ਮੁੱਛਾਂ ਵੀ ਲਾ ਸਕਦੇ ਆ ਆਈਬ੍ਰੋਨ ਵੀ ਲਾ ਸਕਦੇ ਆ ਇਹ ਬਹੁਤ ਹੀ ਅੱਛਾ ਪ੍ਰੋਡਕਟਸ ਆ ਇਹ ਕਿਹੜੀ ਇਹ ਵੀ ਕਸ਼ ਨੰਦਾ ਹੈ ਕਿ ਤੁਸੀਂ ਵੀ ਇੰਡੀਆ ਵਿੱਚੋਂ ਲੈ ਸਕਦੇ ਆ ਨਹੀਂ ਇੰਡੀਆ ਵਿੱਚੋਂ ਤੁਹਾਨੂੰ ਪ੍ਰੋਡਕਟ ਨਹੀਂ ਮਿਲੇਗਾ ਇਹ ਸਾਡਾ ਪ੍ਰੋਡਕਟ ਜਰਮਨ ਚ ਬਣਾਇਆ ਹੈਗਾ ਹੁਣ ਬਹੁਤ ਹੀ ਫੈਮਲੀਆਂ ਇੰਡੀਆ ਨੂੰ ਦੇ ਜਾ ਰਹੇ ਆ ਸਾਡਾ ਪ੍ਰੋਡਕਟ ਬੜੀ ਬਾਕੀ ਅਸੀਂ ਜਿੰਨਾ ਬਚਿਆ ਨੂੰ ਦੇ ਕੇ ਆਵਾਂਗੇ ਉਹ ਵੀ ਖੁਸ਼ ਹੋਣਗੇ ਔਰ ਇਸ ਵਿੱਚ ਕੋਈ ਵੀ ਸਮੈਲ ਨਹੀਂ ਹੈ ਕੋਈ ਕੈਮੀਕਲਸ ਨਹੀਂ ਹੈ ਕੋਈ ਅਮੋਨੀਆ ਨਹੀਂ ਹੈ ਤੁਹਾਡੇ ਟੱਬ ਨੂੰ ਕੋਈ ਮਾਰਕ ਨਹੀਂ ਆਊਗਾ ਤੁਹਾਡੀ ਸਕਿਨ ਨੂੰ ਟੱਚ ਨਹੀਂ ਕਰਦਾ ਹੈਗਾ ਜਦ ਕੱਲ ਦੇ ਅਪਰੋਕਸੀਮੇਟਲੀ ਉਹ 1 ਮਹੀਨਾ ਰਹਿੰਦਾ ਹੈਗਾ ਦਾੜੀ ਵਿੱਚ 2 ਵੀਕਸ ਪਲੱਸ ਲੇਕਿਨ ਵਾਲਾਂ ਵਿੱਚ 1 ਮਹੀਨਾ ਔਰ ਤੁਸੀਂ ਸਿਰਫ 6 ਮਿੰਟ ਲਾਓਗੇ ਤਾਂ ਤੁਹਾਡੇ ਵਾਲਾਂ ਦਾ ਰੰਗ ਨੇਚਰਲ ਬ੍ਰਾਊਨ ਆਊਗਾ ਜੇ ਤੁਸੀਂ ਵੀ ਤੁਹਾਨੂੰ ਕਲਰ ਮਿਲ ਸਕਦਾ ਹੈਗਾ ਇਹ ਅੱਜ ਤਕਰੀਬਨ ਕ੍ਰਾਸ ਕੈਨੇਡਾ ਵਿੱਚ 250 ਲੋਕੇਸ਼ਨ ਤੇ ਉਪਲਬਧ ਹੈਗਾ ਅਮਰੀਕਾ ਦੇ ਵਿੱਚ ਵੀ ਬੈਲਿੰਘਮ ਤੁਸੀਂ ਸਿਆਟਲ ਚਲੇ ਜਾਓ ਸੈਕਰਾਮੈਂਟਲ ਜਲ ਜੋ ਤੁਸੀਂ ਤੁਹਾਨੂੰ ਪ੍ਰੋਡਕਟ ਨੰਬਰ ਦਾ ਹੁਣ ਤਾਂ ਆਸਟ੍ਰੇਲੀਆ ਨਿਊਜ਼ੀਲੈਂਡ ਸੀਰੀਜ਼ ਵਿੱਚ ਨਹੀਂ ਮਿਲਦਾ ਹੈਗਾ ਅਗਰ ਤੁਹਾਡੇ Town ਜਾਂ ਸ਼ਹਿਰ ਚ ਅਵੇਲੇਬਲ ਨਹੀਂ ਹੈ ਤੁਸੀਂ ਸਾਨੂੰ ਅਸੀਂ ਤੁਹਾਡੇ ਘਰ ਡਿਲੀਵਰ ਹੋਵੇ ਤੇ ਹੁਣ ਮਦਰ ਇੰਡੀਆ ਦਾ ਜਿਹੜਾ ਮੇਨ ਲੋਕੇਸ਼ਨ ਮੇਨ ਤੇ ਮੰਗਲਵਾਰ ਤੋਂ ਬਿਨਾਂ ਤੇ ਉਸ ਦੇ ਬਾਰੇ ਜਾਣਕਾਰੀ ਦਿਓ ਜੀ ਤੇ ਅਖੀਰ ਦੇ ਵਿੱਚ ਹੋਰ ਕੁਝ ਕਹਿਣਾ ਚਾਹਾਂ ਹਾਂ ਅਗੇ ਅਸੀਂ ਮੰਡੇ ਟੂ ਸੰਡੇ ਖੋਲਦੇ ਹਾਂ 10:06 ਤੀਜ ਦੇ ਬੰਦ ਹੁੰਦਾ ਹੈਗਾ ਤੁਸੀਂ ਸਾਨੂੰ ਕਿਸੇ ਟਾਈਮ ਵੀ ਕਾਲ ਕਰ ਸਕਦੇ ਹੈਗੇ ਆ ਲੇਕਿਨ ਟ੍ਰਾਂਟੋ ਵਿੱਚ ਮੈਂ ਦੱਸਣਾ ਵੀ ਸਾਡਾ ਪ੍ਰੋਡਕਟਸ ਏਸ਼ੀਅਨ ਫੋਰਟੋਂ ਮਿਲਦਾ ਹੈਗਾ ਕੈਲਗਰੀ ਦੇ ਵਿੱਚ ਬਹੁਤ ਫੋਨ ਕਾ ਉਸਤਾਨੀਆਂ ਹੈਗੀਆਂ ਉਥੋਂ ਤੁਹਾਨੂੰ ਤੇ ਓਕੇ ਜਨਰਲ ਫੋਟੋ ਵੀ ਇਹ ਪ੍ਰੋਡਕਟ ਮਿਲ ਸਕਦਾ ਹੈਗਾ ਜਿਹੜੀ ਸਾਡੀ ਸੇਲ ਚੱਲ ਰਹੀ ਤੇ ਜਾਣ ਕਰਕੇ ਉਹ ਕਾਫੀ ਤੇ ਤੁਹਾਨੂੰ ਅਸੀਂ ਮਿਸ ਕਰ ਗਏ ਲੇਕਿਨ ਐਂਡ ਆਫ ਤੁਸੀਂ ਇੱਕ ਆਈਟਮ ਕੋਈ ਵੀ ਲਓ ਸੈਕੰਡ ਆਈਟਮ ਤੁਹਾਨੂੰ 50% ਮਿਲੇਗੀ ਆ ਤੁਸੀਂ ਕਿਸੇ ਟਾਈਮ ਵੀ ਆ ਸਕਦੇ ਆ ਸਾਡਾ ਸਟੋਰ ਐਵਰੀ ਡੇ 6 ਵਜੇ ਤੱਕ ਖੁੱਲ੍ਹਾ ਹੁੰਦਾ ਹੈਗਾ ਤੁਸੀਂ ਦੇ ਅਸੀਂ ਬੰਦ ਹੁੰਦੇ ਹੈਗੇ ਹਾਂ ਧੰਨਵਾਦ ਜੀ ਥੈਂਕ ਯੂ ਸ਼ਕਲਾ ਜੀ ਤੇ ਫੇਰ ਗੱਲਬਾਤ ਹੋਏਗੀ ਹਾਂ ਜੀ ਸਰ ਮਦਰ ਇੰਡੀਆ ਤੋਂ ਆਸਟ੍ਰੇਲੀਆ ਘੁੰਮ ਕੇ ਆਏ ਨੇ ਸਕਲਦੀਪ ਸਿੰਘ ਜੀ ਲਾਈਨ ਨੰਬਰ 3 ਤੇ ਹੋ ਸਿੰਘ ਜੀ ਬਕ ਪਾਰਕਸ ਨੇ ਸਭ ਤੋਂ Kursi te baithan ja rahe Donald Trump ne pehli patrakaron naal milni kiti hai July to baad sat athh mahine ho gaye sab to waddi gall ik koi sir te chad ke rahi ke Russia naal sambandh Russia naal sambandh Russia naal sambandh intelligence agencies ne America diyan ne patrakaranu associate press nu ਰਸ਼ੀਆ ਹੁਣ ਡੋਨਲਡ ਟਰੰਪ ਦੇ ਸਾਰੇ ਜਿਹੜੇ ਉਹਦੇ ਫਾਈਨੈਂਸ਼ੀਅਲ ਅਕਾਊਂਟ ਨੇ ਜਾਂ ਉਹਦੀ ਪਰਸਨਲ ਜ਼ਿੰਦਗੀ ਆ ਉਹਨੂੰ ਕੰਪਰੋਮਾਈਜ਼ ਕਰ ਰਿਹਾ ਹੈ ਉਸ ਨੂੰ ਲੱਭ ਰਿਹਾ ਹੈ ਇਸ ਗੱਲ ਤੋਂ ਬੇਸਲੈਸ ਉਸ ਕਿਹਾ ਡੋਨਲਡ ਟਰੰਪ ਕਹਿੰਦਾ ਨਾ ਗੱਲ ਹੈ ਤੇ ਨੰਬਰ 2 ਮੀਡੀਆ ਨੂੰ ਤਾਂ ਡਿਸਆਨੈਸਟ ਕਹਿੰਦਾ ਹੀ ਰਿਹਾ ਹੁਣ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਬਰੀਫਿੰਗ ਜਿਹੜੀ ਹੋਇਆ ਕਰਮੀਆਂ ਵਾਈਟ ਹਾਊਸ ਦੀ ਉਹਦੇ ਵਿੱਚ ਪ੍ਰੈਸ ਸੈਕਟਰੀ ਜਾਂ ਆਉਂਦਾ ਮੈਨੂੰ ਨਹੀਂ ਲੱਗਦਾ ਹੁਣ ਮੱਥੇ ਲੱਗੂਗਾ ਆਪਣਾ ਅਲੱਗ ਢੰਗ ਹੈ ਡੋਨਲਡ ਟਰੰਪ ਦੇ ਕੰਮ ਦਾ ਹੁਣ ਸਾਰੇ ਜਿਨ੍ਹਾਂ ਦੇ ਅੰਦਰ ਲਿਖਿਆ ਹੈ ਵਰਗੇ ਰਹੇ ਕੱਲ ਕਮੇਟੀ ਦੇ ਮੂਹਰੇ ਜਮਾਈ ਮੁਕਰ ਰਹੇ ਨੇ ਉਹ ਕਹਿੰਦਾ ਮੈਂ ਤਾਂ ਇਹ ਗੱਲੇ ਕਰਦਾ ਮੈਂ ਤਾਂ ਪੁੱਠੀ ਗੱਲ ਕਦੇ ਵੀ ਨਹੀਂ ਕਰਦਾ ਜਿਵੇਂ ਪੰਜਾਬੀ ਬੰਦੇ ਕਹਿੰਦੇ ਹੁੰਦੇ ਤੇ ਤੇ ਦੋਸ਼ ਨੇ ਉਹ ਹਾਲੇ ਵੀ ਇਹ ਮੰਨ ਨਹੀਂ ਰਿਹਾ ਕਿ ਇਹ ਗੱਲ ਠੀਕ ਹੈ ਟਰੰਪ ਕਾ ਨਾਂ ਨਾ ਇਹ ਬੇਸਲੈਸ ਹੈ ਇਹ ਦੇ ਪਿੱਛੇ ਕੋਈ ਹੈ ਨਹੀਂ ਕਨਫਲਿਕਟ ਆਫ ਇੰਟਰਸਟ ਦੇ ਨਾਂ ਤੇ ਤੇ ਫੇਰ ਗੱਲ ਬਣੂ ਗੱਲ ਜਿੱਤਣ ਤੱਕ ਸੀ ਬੰਦਾ ਜਿੱਤ ਗਿਆ ਇਹ ਦੇ ਪਿੱਛੇ ਨੇ ਕੁਝ ਕਰ ਲਿਆ ਉਹਨੂੰ ਹੈਕ ਕਰਕੇ ਇਨਫੋਰਮੇਸ਼ਨ ਕੱਢ ਦਿੱਤੀ ਜਾਂ ਕੁਝ ਵੀ ਹੋ ਗਿਆ ਇਹ ਪਰ ਫੇਰ ਵੀ ਹੁਣ ਜਿਹੜਾ ਇਲਸਾਨਾ ਮੋਬਿਲ ਦਾ ਸੀਓ ਐਕਸਨ ਮੋਬਿਲਸ ਦੇ ਸੀਓ ਰੈਕਸ ਇਲਸਾਨ ਜੀ ਨੇ ਉੱਥੇ ਦੇ ਨਾਲ ਪੁੱਤ ਨਾਲ ਉਹਦੀਆਂ ਫੋਟੋਆਂ ਨੇ ਇਕੱਠੇ ਹੱਸਦੇ ਆ ਖੇਡਦੇ ਆ ਮੇਨ ਸੂਤਰ ਧਾਰ ਅਸਲ ਰਿਹਾ ਉੱਥੇ ਕੁਝ ਰਫਾਇਨਰੀ ਲਾਉਣ ਲਈ ਉਹ ਵੀ ਕਹਿੰਦਾ ਕਹਿੰਦਾ ਆਪਣੀ ਤਾਂ ਗੱਲੇ ਹੈ ਨਹੀਂ ਜਮਈ ਆਪਣਾ ਕੋਈ ਹੈ ਨਹੀਂ ਪਰ ਰਸ਼ੀਆ ਤੋਂ ਖਤਰਾ ਬਹੁਤ ਅਸਨ ਹੁਣੇ ਸਭ ਸਰ ਕਾਟੋ ਮੈਂ ਚੜਾਂ ਵਾਲੀ ਕਹਾਣੀ ਹੈ ਤੇ ਇਸ ਦੇ ਵਿੱਚ ਕੁਝ ਨਹੀਂ ਗੱਲ ਸੱਚ ਇਹ ਹੈ ਕੇ ਬਿਲਕੁਲ ਰਸ਼ੀਆ ਦੀ ਤਰਜ਼ਾ ਡੋਨਲਡ ਤੇ ਲਾਉਣਾ ਸੀ ਸੋਸ਼ਲ ਮੀਡੀਆ ਤੇ ਉਹਨੇ ਬੜਾ ਰੌਲਾ ਪਿਆ ਪਰ ਜਿਸ ਤਰ੍ਹਾਂ ਫੌਜੀ ਮਸ਼ਕਾਂ ਦੇ ਲਈ 4000 ਤੇ ਬਹੁਤ ਹੋਰ ਹਮਲਾ ਫੈਲਾ ਬਹੁਤ ਯੂਕਰੇਨ ਦੇ ਵਿੱਚ ਚਲੇ ਗਿਆ ਤੇ ਹੁਣ ਦਿਖਾਉਣਗੇ ਪਰ ਰਸ਼ੀਆ ਦਾ ਕੋਈ ਫਰਕ ਨਹੀਂ ਪੈਣਾ ਉਹ ਬਹੁਤ ਪਾਵਰਫੁਲ ਉਹਨਾਂ ਕੋਲ ਮਿਲਟਰੀ ਦਾ ਸਿਸਟਮ ਹੈ ਨਿਊਕਲੀਅਰ ਵੈਪਨਸ ਉਹਦੇ ਕੋਲ ਨੇ ਡਰਣ ਵਾਲਿਆਂ 'ਚ ਹੈ ਨਹੀਂ ਉਹ ਤੇ ਹਾਂ ਬਰਾਬਰ ਦੇ ਦੋਨੇ ਦੇਸ਼ ਨੇ ਆਰਥਿਕ ਤੌਰ 'ਤੇ ਪੈਸੇ ਢੇਲੇ ਪਾਸਿਓਂ ਦਾ ਕੰਮ ਕੱਚਾ ਪਰ ਜੇ ਮਿਲਟਰੀ ਵਾਲੇ ਪਾਸੇ ਵੇਖੋ ਜੰਗੀ ਸਾਜੋ ਸਮਾਨ ਵਾਲ ਵੇਖੋ ਤਾਂ ਉਹ ਪਿੱਛੇ ਨਹੀਂ ਤੇ ਇਸ ਲਈ ਜਿਹੜੀ ਉਹ ਹਲੇ ਗੱਲਬਾਤ ਚੱਲ ਰਹੀ ਐ ਬੜੀ ਕਰੜੀ ਪੱਤਰਕਾਰਾਂ ਦੀ ਗੱਲ ਪਰ ਸਵਾਲ ਉਹਨੇ ਕਿ ਪੁੱਛਣ ਦਿੱਤੇ ਜਿੰਨੇ ਜਵਾਬ ਦੇਣਾ ਸੀ ਕਰਕੇ ਆਖਰੀ ਜਿਹੜੀ ਕੱਲ ਸਪੀਚ ਸ਼ਿਕਾਗੋ ਦੇ ਵਿੱਚ ਦਿੱਤੀ ਬਰਾਕ ਆਵਾਮਾ ਨੇ ਜਦ ਆਪਣੀ ਘਰ ਵਾਲੀ ਤੇ ਬੱਚਿਆਂ ਦਾ ਨਾਮ ਲਿਆ ਛੋਟੀਆਂ ਬੱਚੀਆਂ ਸੀ ਕਹਿੰਦਾ ਜਿਹੜਾ 8 ਸਾਲ ਪਹਿਲਾਂ ਮੈਂ ਵਾਈਟ ਹਾਊਸ ਚ ਬੜਿਆ ਏਦਿਕ ਜ਼ਿੰਦਗੀ ਦੀਆਂ ਤਲਖ ਸਚਾਈਆਂ ਸੀ ਕਿ ਮੇਰੇ ਤੋਂ ਸਮਾਨਾ ਦੇ ਹੋਇਆ ਅੱਖਾਂ ਚੋਂ ਦੇ ਜੋ ਆਏ ਤੇ ਰਮਾਲ ਨਾਲ ਉਹਨੇ ਸਾਫ ਕੀਤੇ ਮਸ਼ਾਲ ਹਵਾਮਾ ਵੀ ਰੋ ਰਹੀ ਸੀ ਤੇ ਉਸਨੇ ਕਿਹਾ ਕਹਾਣੀਆਂ ਕੋਈ ਨਹੀਂ ਬੜੀ ਗੱਲ ਉਹਨੇ ਪਤੇ ਦੀ ਕਲ ਪ੍ਰੈਜ਼ੀਡੈਂਟ ਨੇ ਕਹੀ ਕਹਿੰਦਾ ਤੁਹਾਡੇ ਭੇਜਿਓਏ ਬੰਦੇ ਜੇ ਨਹੀਂ ਕੰਮ ਕਰਦੇ ਕਲਿੱਪਬੋਰਡ ਲਾਓ ਉਹਦੇ ਤੇ ਲਿਖੋ ਇਹਨੇ ਕੀ ਕੀ ਨਹੀਂ ਕੀਤਾ ਤੇ ਆਪ ਕੁਦੋ ਤੇ ਉਸ ਸੀਟ ਤੇ ਜਾ ਕੇ ਬੈਠੋ ਕਹਿੰਦਾ ਦੇਖੋ ਮੇਰੇ ਵੱਲ ਮੈਂ ਇੱਕ ਵਕੀਲ ਆ ਹੋਰ ਵੀ ਵਕੀਲ ਨੇ ਮਸ਼ਹੂਰ ਆਵਾਮਾ ਵਕੀਲ ਸੀ ਮੈਂ ਪਹਿਲੀ ਵਾਰ ਸੈਨੇਟਰ ਬਣ ਗਿਆ ਤੇ ਦੂਜੀ ਵਾਰ ਮੈਂ ਨੋਮੀਨੇਸ਼ਨ ਜਿੱਤ ਕੇ ਕਿੱਥੇ ਬੈਠਿਆ ਜਾ ਕੇ ਇਹ ਗੱਲ ਪੱਕੀ ਹੈ ਜਿਹੜਾ ਬਰਾਕ ਆਵਾਮਾ ਨੇ ਇਤਿਹਾਸ ਸਿਰਜਤਾ ਇਹ ਦੁਆਰਾ ਸਿਰਜਣ ਦੇ ਲਈ ਬਹੁਤ ਔਖਾ ਹੈ ਮਾਰਟਨ ਜੂਨੀਅਰ ਕੀ ਕਹਿੰਦਾ ਕਹਿੰਦਾ ਸਭ ਤੋਂ ਵੱਡੀ ਦਰਘਟਨਾ ਸਭ ਤੋਂ ਵੱਡੀ ਮਾੜੀ ਗੱਲ ਇਹ ਨਹੀਂ ਕਿ ਜਿਹੜੇ ਲੋਕਾਂ ਕੋਲ ਜ਼ੋਰ ਹੈ ਉਹ ਤੁਹਾਡੇ ਤੇ ਜ਼ੋਰ ਅਜ਼ਮਾਈ ਕਰ ਰਹੇ ਨੇ ਸਭ ਤੋਂ ਵੱਡੀ ਤਰਾਸ ਦੀ ਆ ਗੱਲ ਪੱਕੀ ਹੋਣੀ ਚਾਹੀਦੀ ਹੈ ਜਰਵਾਣੇ ਦਾ ਜ਼ੁਲਮ ਕਰਨਾ ਤੇ ਉਸ ਨੂੰ ਸਹਿਣਾ ਉਹ ਕਹਿੰਦਾ ਜ਼ੁਲਮ ਕਰਨਾ ਉਹਨਾ ਮਾੜਾ ਜਦ ਤੱਕ ਤੁਸੀਂ ਬੋਲਦੇ ਸੁਬਰਾਕ ਬਾਮਾ ਨੇ ਬਹੁਤ ਵਧੀਆ ਕੱਲ ਜਿਹੜਾ ਹਰ ਇੱਕ ਚੀਜ਼ ਉਹ ਕਹਿੰਦਾ ਮੈਂ ਟਰਾਈ ਬੈਸਟ ਕੀਤੀ ਇਸ ਲੋਕਤੰਤਰ ਨੂੰ ਲਾਗੂ ਕਰਨ ਲਈ ਦੁਨੀਆ ਦੇ ਵਿੱਚ ਡੈਮੋਕ੍ਰੇਸੀ ਹੈ ਜਿਹੜੀ ਇਹ ਸੌਖੀ ਨਹੀਂ ਰੱਖਣੀ ਇਹਦੇ ਲਈ ਕੰਮ ਕਰਨਾ ਪੈਂਦਾ ਮੈਂ ਆਪਣਾ ਸਾਰਾ ਕੁਝ ਕੀਤਾ ਬਹੁਤ ਲੰਮਾ ਹੁਣ ਆਫ ਲੈ ਰਹੇ ਨੇ ਇੱਕ ਕਿਤਾਬ ਲਿਖਣਗੇ ਤੇ ਡੈਮੋਕ੍ਰੇਸੀ ਲਈ ਉਹ ਕੰਮ ਕਰਨਗੇ ਦੁਬਾਰਾ ਬਣ ਤਾਂ ਸਕਦੇ ਨਹੀਂ 8 ਸਾਲ ਦਾ ਜਿਹੜਾ ਸਿਸਟਮ ਹੈ ਨਹੀਂ ਜੇ ਸ਼ਰਤ ਲਾ ਲਓ ਜੇ ਅੱਗੇ ਜਾ ਸਕਦੇ ਤੇ ਫੜਦੇ ਬਰਾਕ ਬੰਬਾਂ ਡਾਲਰ ਟਰੰਪ ਨਹੀਂ ਸੀ ਆ ਸਕਦਾ ਵਾਈਟ ਹਾਊਸ ਦੇ ਵਿੱਚ ਇਹ ਗੱਲ ਪੱਕੀ ਸੀ ਹਲੇ 85% ਰੇਟਿੰਗ ਹੈ ਰਾਖਾ ਬਹਾਮਤ ਬਹੁਤ ਵੱਡੀ ਗੱਲ ਹੈ ਖਬਰਾਂ ਤੇ ਖਬਰਾਂ ਜੀ ਠੰਡ ਪੋਰਾ ਪਵਾਂ ਪੈ ਰਹੀ ਹੈ ਪਰ ਇਹ ਮੌਸਮ ਨੇ ਸੂਰਜ ਨੇ ਮਹੀਨਾ ਹੋ ਗਿਆ ਬਸ ਰੱਖ ਲੇ ਨਹੀਂ ਤਾਂ ਗੋਡੇ ਸੀਟੀਆਂ ਮਾਰ ਲੱਗ ਸੀ ਇੰਨਾ ਮੀਂਹ ਪੈਂਦਾ ਸੀ ਇਹੋ ਜਿਹੀ ਜਿਹੜਾ ਆ ਮੌਸਮ ਹੈ ਇਹੋ ਜਿਹੀ ਥੇਰ ਇਜ਼ ਦਾ ਮੌਸਮ ਐ ਐਡਮਿੰਟਨ ਕੈਲਗਰੀ ਦੇ ਵਿੱਚ ਮਾਈਨਸ 30 32 ਦੇਖਣ ਨੂੰ ਆ ਮਾਈਨਸ 16 ਮਾਈਨਸ 18 ਸਵੇਰੇ ਵਿੰਡਚਿਲ ਮਾਈਨਸ 18 ਸੀ ਫ੍ਰੀਜ਼ਰ ਵੈਲੀ ਦੇ ਵਿੱਚ ਅਗਲੀ ਵਾਰ ਅਗਲੀ ਠੰਡ ਤੋਂ ਪਹਿਲਾਂ ਸਾਰਾ ਆਪਣਾ ਸੰਦ ਵਲੇਵਾ ਘਰੇ ਰੱਖੋ ਇਸ ਵਾਰ ਨਾ ਤਾਂ ਲੂਣ ਲੱਭਿਆ ਨਾ ਸ਼ਵਲਾਂ ਲੱਭੀਆਂ ਲੋਕਾਂ ਨੂੰ ਤੇ ਲੂਣ ਜੇ ਨਹੀਂ ਵੀ ਹੁੰਦਾ ਰੇਤਾ ਵੀ ਕੰਮ ਸਾਰ ਦਿੰਦਾ ਪਰ ਆਪਣਾ ਡਰਬੇ ਦੇ ਨਾਲ ਹੀ ਵਾਕਵੇ ਸਾਈਡ ਵਾਲਾ ਉਹ ਘਰ ਦਾ ਠੀਕ ਰੱਖੋ ਜੇ ਕੋਈ ਮਾੜਾ ਬੰਦਾ गिर ਗਿਆ ਉਹਨੇ ਉੱਥੋਂ ਉੱਠਣਾ ਨਹੀਂ ਜਦ ਤੱਕ ਐਂਬੂਲੈਂਸ ਨਹੀਂ ਆਉਂਦੀ ਯਾਦ ਰਖ ਲਿਓ ਉੱਥੇ ਢੂ ਲਾ ਕੇ ਬੈਠੋ ਵੀ ਹੁਣ ਐਂਬੂਲੈਂਸ ਆਉ ਤਾਂ ਲਿਜਾਓ ਇੱਕ ਗੱਲ ਸੁਣਾਈ ਹੈ 124 ਤੇ 68 ਵਾਲੇ ਇੰਸੈਕਸ਼ਨ ਤੇ ਗੁਰਦੁਆਰਿਆਂ ਸਕੂਲਾਂ ਦੇ ਵੀ ਭਾਈਚਾਰਾ ਬਹੁਤ ਬਸਤ ਦੋ ਕੱਠੀਆਂ ਗੱਡੀਆਂ ਫੋਰਵੇ ਸਟਾਪ ਤੋਂ ਇਕੱਠੀਆਂ ਚੱਲ ਗਈਆਂ ਕੋਲ ਜਾ ਕੇ ਖੜ ਗਈਆਂ ਬੇਬੇ ਪਿੱਛੇ ਡਿਗੀ ਪਿੱਛੇ ਬੈਠੀ ਗਈ ਚੱਲੇ ਬਾਡਰ ਗੱਡੀ ਚੰਗਾ ਕਰ ਦਿੰਦੇ ਆਉਂਦੇ ਨੂੰ ਇੰਿਓ ਗਰਦਰ ਫੜਨੀ ਆ ਇਹ ਉਹਨਾ ਕਰਿਆ ਕਰੋ ਬਹੁਤ ਕੁਛ ਦੇਸ਼ ਨੇ ਆਪਾਂ ਨੂੰ ਦਿੱਤਾ ਸੱਚ ਵੀ ਬਿਨਾ ਤੇ ਖੜ ਕੇ ਪਰਿਵਾਰਾਂ ਨੂੰ ਰੋਟੀ ਪਹੋਚੀ ਦਿੱਤੀ ਫਰਿਜਾਂ ਤੁਹਾਡੀਆਂ ਪੈਂਟਰੀਆਂ ਭਰੀਆਂ ਸਿਰ ਤੇ ਛੱਤ ਹੈ ਗੱਡੀ ਬਾਹਰ ਖੜੀ ਹੈ ਤੇ ਤੁਸੀਂ ਸੇਤਿਆਬ ਐ ਬਸ ਬਸਾ ਪਿਛੇ ਨਾ ਭੱਜੋ ਬਸ ਸਟੈਂਡ ਤੇ ਖੜੋ ਬਸ ਆ ਉਹ ਨੇ ਸਭ ਨੂੰ ਦਿੱਤਾ ਹੋਇਆ ਵੀ ਮਾੜਾ ਨਹੀਂ ਕਦੇ ਪਿਛਲੀ ਜ਼ਿੰਦਗੀ ਚੰਗੇ ਦਿਨ ਆ ਜਾਂਦੇ ਨਾ ਹਰੇਕ ਨੂੰ ਹੀ 50 ਕਿੱਲੇਾਂ ਦੇ ਆਲੇ-ਦਾਲੇ ਸਿੰਧ ਦੀ ਘੋੜੀ ਹਣਕ ਦੀ ਦਿਖਦੀ ਐ ਮੇਰੇ ਵਰਗਾ 5 ਕਨਾਲਾਂ ਵਾਲਾ ਵੀ 50 ਕਿੱਲੇ ਕਹਿੰਦਾ ਉਹ ਬਸ ਉੱਥੇ ਫਿਰ ਜੈਨ ਦਾ ਆਪਣੀ ਖਾਸੀ ਐ ਰਗਮ ਉਥੋਂ ਲੈ ਆਉਣੀ ਆਪਾਂ ਫੇਰ ਇਹ ਬੈਠੇ ਬੰਦੇ ਰਾਤ ਨੂੰ ਗੱਲ ਜਲ ਪੂਰਾ ਕੈਮ ਹੋ ਜਾਂਦਾ ਫਿਰ ਪਿਛਲੀਆਂ ਗੱਲਾਂ ਭੁੱਲ ਜਾਂਦੇ ਆ ਵੀ ਮਸਾਂ ਹੀ ਲਸਣ ਬੀਜਣ ਜੀ ਇਹਦੇ ਵੱਧ ਹੋਊ ਪਰ ਜ਼ਿਆਦਾਤਰ ਆਪਾਂ ਤਰੱਕੀਆਂ ਨਾਲ ਬਹੁਤ ਖੁਸ਼ ਹੋਇਆ ਗगन ਨੂੰ ਹੱਥ ਫਲਾਉਣਾ ਉਹ ਗਿਆ ਬਾਕੀ ਸਲੋ ਡਾਊਨ ਹੋ ਕੇ ਜ਼ਿੰਦਗੀ ਨੂੰ ਨੇੜੇ ਰੱਖ ਕੇ ਬਹੁਤ ਆਰਾਮ ਦੇ ਨਾਲ ਵਧੀਆ ਜ਼ਿੰਦਗੀ ਨੰਘ ਸਕਦੀ ਹੈ ਆਪਣਾ ਪਰਿਵਾਰ ਦਾ ਖਿਆਲ ਰੱਖੋ ਸਿਹਤ ਦਾ ਖਿਆਲ ਰੱਖੋ ਬਾਕੀ ਇੱਕ ਹੋਰ ਗੱਲ ਕੱਲ ਰਾਤੀ ਅਸੀਂ ਗੱਲ ਕਰ ਰਹੇ ਛੋਟਾ ਵੀਰ ਗੈਰੀ ਕਲਾਰਖਣਾ ਪਾਜੀ ਜ਼ਿੰਦਗੀ ਆਪਣੇ ਥੰਮਿਆ ਨਹੀਂ ਥੰਮਣੀ ਕਈ ਵਾਰ ਪਤੇ ਦੀ ਗੱਲ ਕਰਦਾ ਆਪਣੇ ਕੋਸ਼ਿਸ਼ ਕਰੋ ਵਧੀਆ ਕਰ ਲਈਏ ਬਸ ਕਿਉਂ ਵੀ ਨਾ ਸੋਚਿਆ ਕਰੋ ਫਲਾਣ ਨੇ ਮੈਨੂੰ ਐ ਕਹਿਤਾ ਫਲਾਣ ਨੇ ਮੈਨੂੰ ਐ ਕਹਿਤਾ ਇਹ ਚਿੰਗ ਫੁੰਗਲੀਆਂ ਐ ਹੀ ਅਲੱਗ ਤੇ ਤੁਰਦੀ ਖੜਮੀ ਐ ਤੇ ਨਾਲ ਕੋਸ਼ਿਸ਼ ਕਰੀਏ ਕਿ ਆਪਾਂ ਵਧੀਆ ਰਹੂਗੀ ਕਾ ਤੇ ਬਾਕੀ ਹੋਰ ਇੱਕ ਮਨਪੀਤ ਸਿੰਘ ਬਰਾੜ ਨਿੱਕੇ ਦਾ ਅੱਜ ਜਨਮ ਦਿਨ ਹੈ ਰਾਜੋਵਾਲਾ ਪਿੰਡ ਅਫਰੀਦਕੋਟ ਜ਼ਿਲ੍ਹਾ ਮਿਸ਼ਨ ਚ ਨਿੱਕੇ ਨੇ 5-10 ਦੇ 5-7 ਰਵਨਦੀਪ ਜਵੰਦਾ ਵੀ ਉਹਦੇ ਚੋ ਹੈ ਤੇ ਇਹ ਛੋਟੇ ਭਾਈਆਂ ਦੀ ਇੱਕ ਫੌਜ ਆਪਣੀ ਵਾਲੇ ਆਨ ਕਨਾਤਰੇ ਨੇ ਸੋਾ ਸ਼ੇਰਪੁਰ ਐਸਆਰਏ ਜਿਨ੍ਹਾਂ ਤੇ ਵਸਦੇ ਨੇ ਚਰਵੀ ਕਲਾ ਦੇ ਮੁੰਡੇ ਨੇ ਇਹ ਜਿਹੜੇ ਖੁਸ਼ ਰਹਿੰਦੇ ਆ ਖੋਸਾ ਸਾਰੇ ਇਹ ਛੋਟੇ ਵੀ ਨੇ ਜਿਹੜੇ ਦਿਲ ਦੀਆਂ ਆਪਣੇ ਨਾਲ ਖੋਲਦੇ ਜੈਸ ਖੋਸਾ ਮੁੰਡਾ ਉਹ ਅੱਜ ਨੇ ਏਅਰ ਤੇ ਆ ਕੇ ਦੱਸਿਆ ਸੀ ਕਿ ਕੀ ਐ ਮੈਰਾ ਉਹਨਾਂ ਕੀ ਐ ਜ਼ਿੰਦਗੀ ਮੇਰੀ ਮਰਦੇ ਮਰਦੇ ਦੀ ਕਿਵੇਂ ਬਚੀ ਕਿੱਡਾ ਗੁਰਦਾ ਚਾਹੀਦਾ ਕਿੱਡਾ ਜਿਗਰਾ ਚਾਹੀਦਾ ਕੋਈ ਨਹੀਂ ਆਪਣੇ ਆਪ ਨੂੰ ਕਹਿੰਦਾ ਹੀਰ ਗੁਆਰਡ ਵਧੀਆ ਲੱਗਦੀ ਆ ਘਰੇ ਹੀਰ ਨਹੀਂ ਵਧੀਆ ਲੱਗਦੀ ਪਰ ਜਿਗਰੇ ਦੇ ਨਾਲ ਬੋਲਣਾ ਇਹ ਬਹੁਤ ਵਧੀਆ ਗੱਲ ਹੈ ਧੰਨਵਾਦ ਤੁਹਾਡਾ ਸਾਰਿਆਂ ਦਾ ਥਾਂ ਰੱਖਦੇ ਹੋ ਪਿਆਰ ਕਰਦੇ ਥੈਂਕ ਯੂ ਸੋ ਮਚ ਅਮਨ ਖੜਕੜ ਪ੍ਰੋਗਰਾਮ ਦੇ ਸਪான்ਸਰ ਨੇ 64825 13 14 ਕੋਈ ਵੀ ਕਿਸੇ ਕਿਸਮ ਦੀ ਤੁਸੀਂ ਲੈਣੀ ਅਮਨ ਖੜਕੜ ਦੇ ਤਿੰਨ ਦਫ਼ਤਰ ਨੇ ਸਰੀਆ ਬੈਨਕੂਵਰ ਦੇ ਵਿੱਚ ਤੇ ਜਿੱਥੇ ਤੁਸੀਂ ਮੋਰਗੇਸ ਦੇ ਲਈ ਉਹਨਾਂ ਨੂੰ ਮਿਲ ਹੋ ਉਹਨਾਂ ਦਾ ਤੇ 99 ਕਿੱਲੇ ਤੇ 22 ਲੱਖ 80 ਹਜ਼ਾਰ ਦੀ ਹੈ ਸਿਰਫ 684888 ਅਰਲੀਨ ਨਾਗਰਾ ਦਾ ਨੰਬਰ ਹੈ ਤੇ ਬਿਲਕੁਲ ਲੈਵਲ ਜ਼ਮੀਨ ਹੈ ਕੋਈ ਵਿੱਚ ਦੀ ਤਰੀਕ ਨਹੀਂ ਕੋਈ ਵੀ ਜਗਾ ਵੇਸਟ ਨਹੀਂ ਤੇ 베ਰੀ ਉਹਦੇ ਚ ਲੱਗ ਸਕਦੀ ਐ ਕਿੰਗ ਜਾਰਜ ਨੂੰ ਲੱਗਦੀ ਐ ਤੇ 52 ਨੂੰ ਲੱਗਦੀ ਐ ਤੇ 76 ਤੇ ਜਾਵੜਦੀ ਗਾਹ ਜਾਵੜਦੀ ਐ 604 684 88 88 159 83 40 ਐਵਨੀ ਹੁੰਦਾ ਇਹ ਖੱਤਾ ਹੈ 9.5 ਕਿੱਲੇ ਫੋਟੋ ਵੀ ਐ ਉਹਦੀ ਲਿਸਟਿੰਗ ਤੇ ਹਲੀ ਨਾਗਰਾ ਤੇ ਜਾ ਕੇ ਤੁਸੀਂ ਵੇਖ ਸਕਦੇ ਜਦੋਂ ਜੇਜ ਸਿੰਘ ਦੀ ਕਿਸ ਨੇ ਵੀਡੀਓ ਭੇਜਿਆ ਗਾਲਾਂ ਕੱਢਦੇ ਸੀ ਇਹ ਨਾ ਜਿਹੜੀ ਬਿਜ਼ਨਸ ਕਮਿਊਨਿਟੀ ਹੈ ਇਹ ਸ਼ਹਿਰੀ ਵਰਗਾ ਜਿਹੜਾ ਜਿਆਦਾ ਟੱਕਣ ਚ ਪਾ ਕੇ ਪੀ ਲੈਂਦੇ ਆ ਤੇ ਭੈਣ ਭੈਣ ਭੈਣ ਭੈਣ ਬਹੁਤ ਕਰਦੇ ਆ ਪੰਜਾਬ ਦੇ ਪਿੰਡਾਂ ਸਾਹ ਸਾਹ ਬਹੁਤ ਕਰਦੇ ਆ ਤੇ ਇਹ ਜਿਹੜਾ ਇਹ ਸਾਡੀ ਪੜੀ ਲਿਖੀ ਕਮਿਊਨਿਟੀ ਹੈ ਨਾ ਬਹੁਤ ਆਏ ਹੋਇਆ ਇੱਥੇ ਵੀ ਹੁਣ ਉਹਨਾਂ ਨਾਲ ਇਕੱਠਿਆਂ ਚ ਕਿਤੇ ਬੈਠ ਜਾਓ ਵਾਈ ਐਮ ਸੀ ਇੱਕ ਬੈਠਾ ਸੋਫੇ ਤੇ ਅੱਧਾ ਸੋਫਾ ਦੱਬੀ ਮੈਂ ਕਿਹਾ ਹੋਰ ਜੀ ਭਾਜੀ ਠੀਕ ਹੋਂ ਉਹ ਕੋਈ ਜਗ੍ਹਾ ਤਾਂ ਲੱਭ ਕੇ ਦਿਓ ਮੈਂ ਕੀ ਕਰਨਾ ਸਕੂਨ ਪਾਉਣਾ ਉਹ ਮੈਂ ਹੈ ਸਕੂਲ ਪਾਉਣਾ ਹੈ ਇਹ ਪ੍ਰਾਇਮਰੀ ਸਕੂਲ ਖੋਲਣਾ ਹੈ ਉਹ ਦਿੱਲੀ ਸਾਡੇ 6 ਸਕੂਲ ਨੇ ਜੀ ਇੱਥੇ ਅਸੀਂ ਸਕੂਲ ਹੀ ਖੋਲਣਾ ਬਸ ਹੁਣ ਇਹ ਸਕੂਲ ਖੋਲਣ ਲੱਗੇ ਹੋਣੇ ਸਰੀ ਚ ਖਿਆਲ ਰੱਖਿਓ ਇਹਨਾਂ ਸਕੂਲਾਂ ਚ ਸਿੱਖਿਆ ਕੀ ਆਊ ਇਹਨਾਂ ਸਕੂਲਾਂ ਚ ਗਾਂ ਨੂੰ ਕਿੱਥੇ ਨੂੰ ਲੋਕ ਜਾਣਗੇ ਤੇ ਨੂੰ ਥੱਬੇ ਦੇ ਦੇ ਉੱਥੋਂ ਭੇਜ ਕੌਣ ਰਿਹਾ ਥੋੜੀ ਜੀ ਨਿਗ੍ਹਾ ਰੱਖੇ ਇਹ ਚੱਲਣ ਲੱਗਿਆ ਹੋਇਆ ਹੁਣ ਕੰਮ ਸਕੂਲਾਂ ਦੇ ਪਿੱਛੇ ਲੋਕ ਪਏ ਹੋਏ ਨੇ ਹੁਣ ਤੇ ਜੇ ਜੇ ਸਿੰਘ ਗਾਲਾਂ ਕੱਢ ਰਿਹਾ ਅਸੀਂ ਐਉਂ ਕਰ ਦਿੰਨੇ ਆ ਅਸੀਂ ਫਰਾਕ ਕਰ ਦਿੰਨੇ ਆ ਅਸੀਂ ਸਿੰਘਾਂ ਵਾਲਾ ਕੰਮ ਕਰਦੇ ਆ ਹਰ ਗੱਲ 'ਚ ਗਾਲ ਕੱਢਦਾ ਬੰਦਾ ਕਿਹਨੇ ਜਨਰਲ ਬਣਾਇਆ ਇਹ ਕਮਿਸ਼ਨਡ ਅਫੀਸਰ ਨੇ ਇਹਨਾਂ ਨੇ ਪੜ੍ਹਾਈ ਕੀਤੀ ਆ ਆਹ ਕਹਾਣੀ ਹੈ ਸਟਾਰ ਮੋਢਿਆਂ ਤੋਂ ਲਾ ਕੇ ਅਕਲ ਜਿਹੜੀ ਆ ਖੂਚ ਸਿੱਟ ਕੇ ਬੰਦਾ ਗਾਲਾਂ ਕੱਢ ਰਿਹਾ ਅਲਦਾਲੇ ਬੰਦੇ ਬੈਠਿਆ ਅਸੀਂ ਤਾਂ ਕਹਿੰਦੇ ਆ ਨਾ ਬਈ ਤੂੰ ਤੇ ਕਿਸ ਮਾਰਨਾ ਬੈਲਟ ਤੋਂ ਸੱਲੇ ਕਿਸ ਨੂੰ ਕਹਿੰਦਾ ਮੈਂ ਨਹੀਂ ਛੜਦਾ ਮੂੰਹੇ ਜਿਹੜਾ ਸਾਊ ਆ ਉਹਨੇ ਗਾਣਾ ਮਹਿਲਾਂ ਦੇ ਵਿੱਚ ਪੀ ਕੇ ਸਕੌਚ ਉਹਨੇ ਪਤਾ ਹੀ ਨਹੀਂ ਕੀ ਕਹਿ ਦੇਣਾ ਪਿਛਲੀਆਂ ਦੋ ਤਿੰਨ ਇੰਟਰਵਿਊਆਂ 'ਚ ਪਤਾ ਹੀ ਨਹੀਂ ਕਿੱਧਰ ਦੇ ਵਿੱਚ ਕਲੀਅਰਲੀ ਦੇ ਹੱਥ ਵਾਗਡੋਰ ਹੋ ਵਾਗਡੋਰ ਮੈਨੂੰ ਲੱਗਦਾ ਅਮਰਿੰਦਰ ਕੈਪਟਨ ਦਾ ਕਲੇਸ਼ ਬਹੁਤ ਆ ਦਿੱਲੀ ਰੌਹਲ ਚੱਲਦਾ ਨਹੀਂ ਉਹ ਕਹਿੰਦਾ ਮੇਰੀ ਮਾਂ ਨੂੰ ਇਹ ਭਾਬੀ ਕਹਿੰਦਾ ਬਿਬਕੇ ਲੋਕਾਂ 'ਚ ਜਾਣ ਕੇ ਪੁੱਠੀ ਗੱਲ ਕਰਦਾ ਸੋਨੀਆ ਜੀ ਨਹੀਂ ਕਹਿੰਦਾ ਮੈਂ ਇਹਨੂੰ ਅੰਕਲ ਕਹਿੰਦਾ ਸੀਟਾਂ ਦਾ ਰੌਲਾ ਪਿਆ ਸੀਟਾਂ ਮਿਲ ਨਹੀਂ ਰਹੀਆਂ ਇੱਕ ਦੂਜੇ ਦਾ ਖਿੱਚ ਤਾਣ ਹੋ ਰਹੀ ਹੈ ਦੂਲੋਂ ਖੰਨੇਓ ਬਾਗੀ ਹੋਇਆ ਪਿਆ ਕਹਿੰਦਾ ਮੈਨੂੰ ਪੈਲ ਦੀ ਟਿਕਟ ਨਹੀਂ ਦਿੱਤੀ ਮੈਂ ਦਲਤਾਂ ਨੂੰ ਲੈ ਕੇ ਇੱਕ ਪਾਸੇ ਹੋ ਜਾਣਾ ਮਸਖਰੇ ਨੂੰ ਸਾਰੀ ਵਾਗ ਦੇਣ ਲੱਗ ਗਿਆ ਬਾਪੂ ਕਹਿੰਦਾ ਸੀ ਕਿ ਗੁਰਦੁਆਰਿਆਂ ਦੇ ਧਰਮ 'ਚ ਲੋੜ ਹੀ ਨਹੀਂ ਭਗਵੰਤ ਸਿੱਧੂ ਪੜਿਓ ਇਤਿਹਾਸ ਕਦੇ ਉਨੇ ਖੱਬੀਆਂ ਕੋਲ ਚੱਕ ਕੇ ਫਿਰ ਗੱਲ ਕਰਨੀ ਹੈ ਤੇ ਨਾਲ ਜਿਹੜਾ ਪਿੱਛੇ 'ਚ ਵੀ ਇਹ ਹੋਇਆ 15 ਦਿਨ 18 ਦਿਨ ਪਹਿਲਾਂ ਇਹਨਾਂ ਦੇ ਨੌ ਆਉਣਗੇ ਫਿਰੇ ਭੱਜੇ ਫਿਰਨਗੇ ਕੁਛ ਨਹੀਂ ਵੱਟੀ ਦਾ ਤੇ ਨਵਜੋਤ ਵੀ ਉਧਰ ਤਿਆਰੀ ਹੈ ਇਧਰਲੇ ਬੰਨੇ ਕਦੇ-ਕਦੇ ਕੇਸਰੀ ਵਾਲੇ ਵੀ ਲੋਕ ਕਹਿੰਦੇ ਨੇ ਕਿ ਜਿਹੜੀ ਐਨਜੀਓ ਚਲਾਈਆ ਵਿਵੇਕਾਨੰਦ ਫਾਊਂਡੇਸ਼ਨ ਦਾ ਡਾਇਰੈਕਟਰ ਮੁੱਦਲਾ ਇਹ ਰਿਹਾ ਤੇ ਜਿਹੜਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਆ ਮਿਸਟਰ ਡੋਵਲ ਦਵਾਲ ਜਿਹਨੂੰ ਕਹਿੰਦੇ ਨੇ ਜਿਹੜਾ ਗੜਵਾਲ ਦਾ ਹੈ ਸਿੱਖ ਸੰਘਰਸ਼ ਦੇ ਵਿੱਚ ਵੀ ਹਰਮੰਦਰ ਸਾਹਿਬ ਦੇ ਵਿੱਚ ਵੀ ਤੇ ਪਾਕਿਸਤਾਨ ਦੇ ਵਿੱਚ ਵੀ ਇੰਟੈਲੀਜੈਂਸੀ ਲਈ ਉਹਨੇ ਸੀਵੀਆਈ ਲਈ ਕੰਮ ਕੀਤਾ ਉਹਦਾ ਟਾਪ ਮੇਨ ਏਡ ਆ ਉਹ ਤੇ ਉਹ ਬੰਦਾ ਤੇ ਕੇਜਰੀਵਾ ਦੋਨੇ ਬਵੇਕਾ ਨਾਲ ਫਾਊਂਡੇਸ਼ਨ ਦੇ ਕਿਸੇ ਸਮੇਂ ਮੈਂਬਰ ਰਹੇ ਆ 5 ਸਾਲ ਐਜ਼ ਏ ਇਨਕਮ ਟੈਕਸ ਦੇ ਡਾਇਰੈਕਟਰ ਦੇ ਤੌਰ ਤੇ ਕੰਮ ਕੀਤਾ ਨੇ 2000 ਤੋਂ 2010 ਤੱਕ ਐਨਜੀਓ ਚ ਕੰਮ ਕੀਤਾ ਦੇ ਵਿੱਚ ਜਿਹੜੀ ਵਾਲ ਨੇ ਅਨਸ਼ਨ ਸ਼ੁਰੂ ਕੀਤੀ ਆ ਇਹ ਪ੍ਰੀਪਲਾਨਡ ਚੀਜ਼ਾਂ ਨੇ ਮੰਨਣਾ ਪਊ ਠੀਕ ਹੈ ਤੀਜੀ ਢੇਰਾ ਪਰ ਸੱਚ ਤੋਂ ਪਿੱਛੇ ਨਾ ਵਟਿਆ ਕਰ ਜਿਹੜੀ ਗੱਲ ਸੱਚ ਹੈ ਸੱਚ ਹੈ ਉਹ ਮੈਂ ਐਉਂ ਨਹੀਂ ਕਹਿੰਦਾ ਵੀ ਐਨਜੀਓ ਚ ਕੰਮ ਕਰਕੇ ਉਹ ਪ੍ਰਿਸ਼ਟ ਜਿਹੜਾ ਹੋਣਾ ਜਾਂ ਨਾ ਹੋਣਾ ਇਹ ਗੱਲ ਨਹੀਂ ਹੈ ਉਹ ਬਹੁਤ ਕਲੀਅਰ ਰਾਜਨੀਤਿਕ ਹੈ ਉਹਦੀ ਸ਼ਬਦਾਵਲੀ ਬਹੁਤ ਵਧੀਆ ਹੈ ਉਹਦੇ ਤਰਕ ਬਹੁਤ ਵਧੀਆ ਨੇ ਉਹਦੇ ਬਹੁਤ ਵਧੀਆ ਨੇ ਤਾਂ ਹੀ ਉਹ ਪਾਰੂ ਪੈ ਰਿਹਾ ਤੂਤੀ ਬੋਲਦੀ ਆ ਤੇਜਲੀ ਬਰਦੀ ਔਰ ਇਹਦੇ 'ਚ ਇਹ ਬਾਦਲ ਪਰਵਾਰ ਤੇ ਅਮਰਿੰਦਰ ਕੈਰੋਂ ਬਰਾੜਾਂ ਦੀ ਇਹਨਾਂ ਦੀ ਹਾਰ ਹੈ ਇਹ ਪੰਜ ਵੱਡੇ ਪਰਿਵਾਰਾਂ 'ਚ ਆ ਕੇ ਛੇਵਾਂ ਬੰਦਾ ਹਰਿਆਣੇ ਦਾ ਹਿਸਾਰ ਤੋਂ ਆ ਕੇ ਵੜ ਗਿਆ ਇਹ ਵਰਨ ਤੁਸੀਂ ਦਿੱਤੀ ਤੁਸੀਂ ਲੋਕਾਂ ਸਾਹਮਣੇ ਤੇ ਲੋਕ ਤੁਹਾਡੇ ਤੋਂ ਆਕੀ ਹੋਏ ਬੈਠੇ ਜਿਹੜਾ ਵਿਦਰੋਹ ਹੋ ਰਿਹਾ ਲੋਕ ਦੁਖੀ ਨੇ ਪਰ ਫੇਰ ਵੀ ਹੱਥੋਂ ਪਾਈ ਡਲਿਆਂ ਦੀ ਜਾਂ ਜੁੱਤੀਆਂ ਗੱਲਾਂ ਇਹ ਠੀਕ ਨਹੀਂ ਇਹ ਨਹੀਂ ਕਰਨੀ ਬਿਲਕੁਲ ਨਾ ਕਰੋ ਔਰ ਰਾਜਨੀਤੀ ਚ ਪੈਰ ਫਿਸਲਦੇ ਕੁਛ ਨਹੀਂ ਪਤਾ ਲੱਗਦਾ ਜੇ ਇਸ ਤਰ੍ਹਾਂ ਹੀ ਜਿਨ੍ਹਾਂ ਨਾਲ ਤੁਸੀਂ ੱੱਕਾ ਕਰਦਾ ਜੇ ਉਹਨਾਂ ਦੀ ਦੁਆਰਾ ਮਿਨਿਸਟਰੀ ਆ ਗਈ ਸੁੱਕਣੇ ਪਾ ਦੇਣਗੇ ਸੁੱਕਣੇ ਲੋਕ ਤੋ ਰਾਜਨੀਤੀ ਚ ਸਭ ਕੁਝ ਪੋਸੀਬਲ ਆ ਜਿਹੜੇ ਦੇਸ਼ ਦੇ ਵਿੱਚ ਕਿਸੇ ਅਫੀਸਰ ਦੀ 5-10000 ਰੁਪਇਆ ਕੀਮਤ ਆ ਉੱਥੇ ਸਾਰਾ ਕੁਝ ਪੋਸੀਬਲ ਆ ਤਾਂ ਹੀ ਤਾਂ ਇਲੈਕਟ੍ਰ ਜਿਹੜਿਆ ਇਲੈਕਟ੍ਰੋਨਿਕ VOTING ਮਸ਼ੀਨ ਦਾ ਰੋਲਾ ਪੈ ਰਿਹਾ ਕਿ ਇਹਦੀ ਐ ਨਾ ਹੋ ਉਹ ਨਾ ਹੋ ਲੋਕ ਡਰਦੇ ਆ ਕਿਉਂਕਿ ਪਤਾ ਉੱਥੇ ਕੀ ਗੱਲ ਚੱਲਦੀ ਪਰ ਫਿਰ ਵੀ ਇਹ ਚੀਜ਼ ਪੋਸੀਬਲ ਨਹੀਂ ਹਾਲੇ ਤੱਕ ਇਹਦਾ ਕੋਈ ਅੰਕੜਾ ਨਹੀਂ ਦਿੱਲੀ ਦੇ ਵਿੱਚ ਵੀ ਇਹ ਹੋ ਸਕਦਾ ਸੀ ਲੋਕ ਜਿਹੜਾ ਰੋ ਹੈ ਉਹ ਪਰਚੀ ਦੇ ਨਾਲ ਬਦਲ ਸਕਦੇ ਨੇ ਤੁਸੀਂ ਗੱਲ ਬਿਲਕੁਲ ਅਲੱਗ-ਅਲੱਗ ਦਸ਼ਾਵਾਂ 'ਚ ਖੜੀ ਐ ਅਕਾਲੀ ਦਲ, ਬੀਜੇਪੀ ਪਾਰਟੀ ਇਹ ਕਹਿ ਰਹੀ ਆ ਅਸੀਂ ਬਹੁਤ ਜਿਹੜਾ ਕੰਮ ਕੀਤਾ ਪਿਛਲੇ 8 ਸਾਲਾਂ 'ਚ ਅਸੀਂ ਵਿਕਾਸ ਦੇ ਨਾਂ 'ਤੇ ਵੋਟ ਮੰਗਦੇ ਆ ਲੋਕ ਕਹਿੰਦੇ ਵਿਕਾਸ ਹੋਇਆ ਨਹੀਂ ਅਸੀਂ ਦੁਖੀ ਆ ਤੇ ਤਿੰਨੇ ਪਾਰਟੀਆਂ ਅੱਗੇ ਤਾਂ ਤੀਜਾ ਧਿਰ ਵੀ ਨਹੀਂ ਸੀ ਆਇਆ ਔਰ ਇੱਕ ਗੱਲ ਜ਼ਰੂਰ ਫਾਈਨਲ ਹੋਈ ਹੋਈ ਐ ਕਿ ਇਸ ਵਾਰ ਤੀਸਰੀ ਧਿਰ ਦਾ ਕੁਝ ਨਹੀਂ ਬਣਦਾ ਮੁੜ ਕੇ ਤੀਸਰੀ ਧਿਰ ਪੰਜਾਬ 'ਚ ਨਹੀਂ ਕਦੇ ਆਊਗੀ ਮਨਪ੍ਰੀਤ ਬਾਦਲ ਨੇ ਵੇਖਿਆ ਸਿੱਧਾ ਹਾਧਾ ਤੇ ਕਿੱਥੇ ਜਾ ਕੇ ਖੜਾ ਹੋਇਆ ਆਮ ਆਦਮੀ ਪਾਰਟੀ ਦੇ ਉੱਪਰਲੇ ਦਾ ਕੰਮ ਇਹ ਹੈ ਸਾਡਾ ਹੱਥ ਪਹ ਗਿਆ ਫਿਰ ਅਸੀਂ ਦਿੱਲੀ ਤੇ ਜਾਂ ਕੇਜੀਦੀ ਵਾਲਾ ਉਹਨਾਂ ਦਾ ਪੰਜਾਬ ਦਾ ਨਿਸ਼ਾਨਾ ਵੀ ਦਿੱਲੀ ਦਿਖਦੀ ਹੈ ਦਿੱਲੀ ਔਰ ਕੇਜੀਦੀ ਦਿੱਲੀ ਚ ਬਹਿਣਾ ਚਾਹੁੰਦਾ ਇਹ ਬਹੁਤ ਲੰਮਾ ਜਿਹੜਾ ਰਸਤਾ ਹੈ ਉਹਨਾਂ ਦਾ ਔਰ ਕੋਸ਼ਿਸ਼ ਚੱਲ ਰਹੀ ਹੈ ਔਰ ਕੰਮ ਕਰ ਰਹੇ ਨੇ ਪਰ ਇਉਂ ਵੀ ਨਹੀਂ ਹੈ ਵਿਸ਼ਪਾਰ ਦੇ ਮੇਲੇ ਨੂੰ ਕਮਿਸ਼ਨਰ ਲੋਕ ਤੇ ਲੋਕ ਪਿੱਛੇ ਤੁਰ ਗਏ ਨਹੀਂ ਉਹ ਕਰ ਵੀ ਰਹੇ ਨੇ ਇੱਕ ਚਪੜਾਸੀ ਦੇ ਪੁੱਤ ਨੂੰ ਇੱਕ ਚੌਕੀਦਾਰ ਦੇ ਬਣ ਸਕਦਾ ਚੌਕੀਦਾਰ ਦਾ ਪੁੱਤ ਬਰਾਬਰ ਦੇ ਤੱਬਰ ਇੰਨੇ ਆ ਜਾਂਦੇ ਨੇ ਔਰ ਮੁੰਡਾ ਉਹਨੇ ਠੁੱਕੀ ਕੱਢੀ ਪਈ ਸਾਡੇ ਏਰੀਆ 'ਚ ਇੰਨਾ ਕੰਮ ਕੀਤਾ ਉਹ ਤੇ ਉਹਦੀ ਘਰ ਵਾਲੀ ਇਸ ਤਰ੍ਹਾਂ ਸਮਰਾਲੇ ਤੋਂ ਸਰਵੰਤ ਸਿੰਘ ਮਾਨਕੀ ਉਹ ਬੰਦਾ ਜਿਹਨੇ ਐਸਜੀ ਪੀਸੀ ਦੀ ਜਬੇ ਅਦਵੀ ਹੋਈ ਜਿਹਨੇ ਜਾ ਕੇ ਸਮਰਾਲੇ ਚੌਂਕ ਦੇ ਵਿੱਚ ਧਰਨਾ ਲਾਇਆ ਤੇ ਨਾਲ ਐਸਜੀ ਦਾ ਦਿੱਤਾ ਤਸੀਫ ਹੁਣ ਲੋਕ ਪਿਆਰ ਕਰ ਰਹੇ ਨੇ ਉਹਨਾਂ ਨੂੰ ਕਿਉਂਕਿ ਇਹ ਜਿਹਦਾ ਕੁਛ ਨਹੀਂ ਗੁਰਪੀਰ ਉੱਥੇ ਤੇ ਜਿੱਥੇ ਪੈਸੇ ਦਾ ਯੋਗ ਹੈ ਸਰਦਾਰੀਆਂ ਦਾ ਯੋਗ ਹੈ ਥਾਰਾਂ ਦਾ ਤੇ ਫੋਰਚੂਨਰਾਂ ਦਾ ਤੇ ਅਸਲਿਆਂ ਦਾ ਯੋਗ ਹੈ ਉੱਥੋਂ ਇੱਕ ਦਲਤ ਪਰਿਵਾਰ ਦਾ ਮੁੰਡਾ ਉਹਨੂੰ ਲੋਕ ਸਿਰ ਤੇ ਚੱਕੀ ਫਿਰਦੇ ਸਾਡੇ ਹਲ ਵਿੱਚ ਉਹਦਾ ਕਾਰਨ ਕੀ ਹੈ ਇਹ ਲੋਕ ਇਹਨਾਂ ਨੂੰ ਆਮ ਆਦਮੀ ਪਾਰਟੀ ਦਾ ਪਿਆਰ ਕਰ ਰਹੇ ਨੇ ਉਹ ਦਿਨੋਂ ਦਿਨ ਪਿਆਰ ਨਹੀਂ ਬਣਿਆ ਉਹਨਾਂ ਨੇ ਬਹੁਤ ਲੰਮਾ ਕੰਮ ਕੀਤਾ ਹੋਇਆ ਤੇ ਜੇ ਮੌਜੂਦਾ ਪਾਰਟੀਆਂ ਨੇ ਜਗ੍ਹਾ ਦਿੱਤੀ ਤਾਂ ਹੀ ਉਹ ਬੜੇ ਨਾਖੁਸ਼ ਲੋਕ ਹੋਏ ਤਾਂ ਹੀ ਬੜੇ ਹਾਂ ਇਹ ਬਦਲਾਅ ਜਿਹੜਾ ਲੋਕ ਬਦਲ ਦੇਣਗੇ ਜਾਂ ਇਹ ਨਾਅਰੇ ਚਹਿ ਲੈ ਜੂ ਇਹ ਮਾਰਚ 'ਚ ਪਤਾ ਲੱਗ ਜਾਣਾ ਪਰ ਫਿਰ ਵੀ ਤੁਹਾਡੀ ਸੁਣੀ ਦੀ ਆ ਉੱਥੇ ਇਹ ਡਲਿਆ 'ਚ ਇਹ ਜੁੱਤੀਆਂ 'ਚ ਇਹਨਾਂ ਚ ਕੱਖ ਨਹੀਂ ਇਹ ਬਿਲਕੁਲ ਭਰਾ ਮਾਰੂ ਜੰਗ ਚ ਨਹੀਂ ਪੈਣਾ ਨਾ ਉੱਥੇ ਨਾ ਇੱਥੇ ਇਹ ਬੇਨਤੀ ਮੰਨ ਲਿਓ ਹੱਥ ਜੋੜ ਕੇ ਦੂਰੰਦੇ ਸਪੌਂਸਰ ਹੈ ਮਹਿਕ ਰੈਸਟੋਰੈਂਟ ਵਾਲੇ 604 585 ਦਾ ਫਿਸ਼ ਤੇ ਚਿਕਨ ਜਲ ਤੋਰੀ ਦਾ ਪਕੌੜਾ ਤੇ ਮੁਰਗਾ ਤੁਹਾਨੂੰ ਦਿੰਦੇ ਆ ਸਪੈਸ਼ਲ ਓਪਨਿੰਗ ਦੇ ਲਈ ਬਹੁਤ ਵਧੀਆ ਖਾਣਾ ਇਹਨਾਂ ਦਾ ਬੜਾ ਮਸ਼ਹੂਰ ਮਹਿਕ ਰੈਸਟੋਰੈਂਟ ਹੈ ਨਵੀਂ ਮੈਨੇਜਮੈਂਟ ਥੱਲੇ ਆ 94 ਤੇ ਤੇ 6045853331 ਬਾਰਕਸ ਨੈਸ਼ਨਲ ਵਾਲ ਬਾਰਸੋ ਨੇ ਆ ਖਬਰਾਂ 'ਚ ਕੁਝ ਗੱਲ ਕਰਦਾ ਤੇ ਨਾਲ ਜਾਇਦਾਦ ਦੇ ਮਲਾਂਕਣ ਦੀ ਕਲ ਦੀ ਗੱਲ ਚੱਲੀ ਆ ਜਿਹੜੀ ਉਹਨੂੰ ਅੱਗੇ ਤੋਰਨਾ ਮੁੰਡੇ ਕੁੜੀ ਦੀ ਜਿਹੜੀ ਲੋੜੀ ਹੈ ਉਹ ਇਸ ਵੀਕਐਂਡ ਤੇ ਐ ਤੇ ਕੱਲ ਨੂੰ ਐਮੀ ਘੁੰਮਣ ਸਾਰਾ 11:40 ਮਿੰਟ ਤੇ ਉਸਦੀ ਜਾਣਕਾਰੀ ਦੇਣਗੇ ਕਿ ਇਹ ਕਿਸ ਤਰ੍ਹਾਂ ਹੋ ਰਿਹਾ ਹੈ ਕੀ ਕੀ ਇਸ ਪ੍ਰੋਗਰਾਮ ਦੇ ਵਿੱਚ ਹੋਣਾ ਹੈ ਕੱਲੋਂ ਉਹ ਗੱਲ ਕਰਨਗੇ ਐਮੀ ਘੁੰਮਣ ਹੋਣੀ ਇੱਕ ਬਹੁਤ ਵਧੀਆ ਇਹ ਹੈ ਉਪਰਾਲਾ ਜਿਹਦੇ ਵਿੱਚ ਬੱਚੀਆਂ ਤੇ ਬੱਚੇ ਦੋਨਾਂ ਦੀ ਧੀਆ ਪਹਿਲਾਂ ਤੇ ਫਿਰ ਪੁੱਤ ਇਹ ਬਰਾਬਰੀਤਾ ਦੀ ਗੱਲ ਹੈ ਅੱਗੇ ਚੱਲਾਂ ਤਾਂ ਉਦੋਂ ਪਹਿਲਾਂ ਕੁਝ ਸਕਾਲਰ ਨੇ ਜੀ ਸਿਮਰਨ ਸਿੰਘ ਜੀ ਲਾਈਨ ਨੰਬਰ 3 ਤੁਸੀਂ ਹਾਂ ਜੀ ਜਿਲਸਾ ਸਤਿ ਸ਼੍ਰੀ ਅਕਾਲ ਜੀ ਸਿਮਰਨ ਬੋਲ ਰਿਹਾ ਸਸਿਕਾ ਜੀ ਦਾ ਬਾਬਾ ਸਾਹਿਬ ਕੀ ਹਾਲ ਨੇ ਹਾਂ ਜਿਲਸਾ ਵਧੀਆ ਮੈਂ ਦੇਖਿਆ ਕੋਈ ਵੀ ਐਕਟੀਵਿਟੀ ਨਹੀਂ ਹੈਗੀ ਇਲੈਕਸ਼ਨ ਦੀ ਜਿੱਲਾ ਆਪਾਂ ਥੋੜੀ ਜਿਆਦਾ ਗੱਲ ਕਰਦੇ ਆ ਉੱਥੇ ਲੋਕ ਵੀ ਬਹੁਤ ਸ਼ਾਂਤ ਨੇ ਕਿਸੇ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਹੋਰ ਕਿਸੇ ਪਾਰਟੀ ਦੀ ਕੋਈ ਐਕਟੀਵਿਟੀ ਨਹੀਂ ਹੈਗੀ ਆਮ ਆਦਮੀ ਪਾਰਟੀ ਦੀ ਥੋੜੀ ਐਕਟੀਵਿਟੀ ਹੈ ਜੀ ਖਾਸ ਕਰਕੇ ਸਾਡੇ ਮਾਝੇ ਵਾਲੀ ਸਾਈਡ ਤੇ ਪਰ ਹੋਰ ਕਿਸੇ ਪਾਰਟੀ ਦਾ ਕੋਈ ਕੋਈ ਐਕਟੀਵਿਟੀ ਨਹੀਂ ਨਾ ਕੋਈ ਲੋਕਾਂ 'ਚ ਕੋਈ ਕੋਈ ਉਤਸ਼ਾਹ ਆ ਕੋਈ ਇਲੈਕਸ਼ਨ ਦਾ ਕੋਈ ਗੱਲ ਨਹੀਂ ਬਿਲਕੁਲ ਐ ਲੋਕ ਸ਼ਾਂਤ ਬੈਠੇ ਹੋਏ ਹੂੰ ਤੇ ਫਿਰ ਇਹ ਇਹ ਗੱਲ ਲੱਗਦੀ ਆ ਜਿਹੜੀ ਬਦਲਾਅ ਦੀ ਗੱਲ ਸਿਮਰਨ ਤੁਹਾਡੇ ਹੁਣ ਮਾਧਿ ਮਾਜੇ ਦੇ ਵਿੱਚ ਬਹੁਤ ਬਹੁਤ ਜੇ ਨਸ਼ੇ ਦੀ ਗੱਲ ਤੇ ਤੁਸੀਂ ਬਹੁਤ ਨੇੜਿਓਂ ਜ਼ਮੀਨੀ ਹਕੀਕਤਾਂ ਦੇ ਨਾਲ ਜੁੜਿਆ ਪਰਿਵਾਰ ਹੈ ਸ਼ਾਹ ਪਰਿਵਾਰ ਹੈ ਸ਼ਾਹ ਤੋਂ ਲੈ ਕੇ ਤੇ ਤੁਹਾਡੇ ਚਾਚਾ ਜੀ ਪਿਛਲੇ ਦਿਨੀ ਆ ਗਏ ਗੱਲ ਕਰਨੀ ਪਰ ਜ਼ਮੀਨੀ ਜ਼ਮੀਨੀ ਹਕੀਕਤ ਕੀ ਹੈ ਉਹਦੇ ਬਾਰੇ ਸਿਮਲਰ ਹੋਣੀ ਜਾ ਕੇ ਆਏ ਆ ਬਾਕੀ ਕਹਿੰਦੇ ਬਹੁਤ ਘੱਟ ਹੈ ਆਮ ਆਦਮੀ ਪਾਰਟੀ ਦਾ ਲੋਕਾਂ 'ਚ ਹਲਾਰਾ ਬਹੁਤ ਹੈ ਹਲਾਰਾ ਪੰਜਾਬੀਆਂ ਦਾ ਜਿਹੜਾ ਇਹ ਮੈਂ ਇਸ ਤੋਂ ਡਰਦਾ ਹੈ ਕਈ ਵਾਰ ਇਹ ਹਲਾਰੇ ਹੁੱਲੇ ਹਲਾਰੇ ਜੋਗੀ ਰਹਿ ਜਾਂਦੇ ਆ ਕੁਲਵੰਤ ਸਿੰਘ ਜੀ ਲਾਈਨ ਨੰਬਰ 4 ਤੁਸੀਂ ਇਰ ਤੇ ਹਾਂਜੀ ਸਾਸਰੀ ਗਾਲ ਗਿਲ ਗੱਲ ਕੀਤੀ ਸੀ ਕੇਸਰੀਵਾਲ ਸਾਹਿਬ ਦੀ ਹੁਣੇ ਕਾਲਰ ਬੜਾ ਝੂਰ ਹੈ ਪੰਜਾਬ ਦੇ ਅੰਦਰ ਮੈਂ ਦੋ ਤਿੰਨ ਗੱਲਾਂ ਸੋਚਦਾ ਕੇਦਰੀਵਾਲ ਸਾਹਿਬ ਸਿਰਫ ਪੰਜਾਬ ਨੂੰ ਹੀ ਉਹਨਾਂ ਨੇ ਰੁਖ ਕਿਉਂ ਕੀਤਾ ਇਲੈਕਸ਼ਨਾਂ ਜਿਹੜੀਆਂ ਨੇ ਯੂਪ ਦੇ ਵੀ ਹੋ ਰਹੀਆਂ ਹੋਰ ਦੂਜੀਆਂ 5 ਸਟੇਟਾਂ 'ਚ ਹੁੰਦੀਆਂ ਪਈਆਂ ਉਧਰ ਨੂੰ ਲੋਕ ਜਿੱਥੇ ਰਹਿੰਦਾ ਹੈ ਉੱਥੋਂ ਦੇ ਲੋਕ ਇਹਨੂੰ ਪਕੰਦ ਕਿਉਂ ਨਹੀਂ ਕਰਦੇ ਬੰਦਾ ਇੰਨਾ ਇਮਾਨਦਾਰ ਹੈ ਤੇ ਫਿਰ ਯੂਪ ਦੇ ਲੋਕ ਵੀ ਇਹਨੂੰ ਪਸੰਦ ਕਰਨ ਯੂਪ ਦੇ ਵਿੱਚ ਦੇ ਇਹਨਾਂ ਨੇ ਪੈਰ ਵੀ ਨਹੀਂ ਪਾਇਆ ਪੰਜਾਬ ਵਾਲਦੋਈ ਮੂੰਹ ਕੀਤਾ ਸਿਰਫ ਕਿਉਂਕਿ ਪੰਜਾਬ ਦੇ ਅੰਦਰ ਲੋਗ ਜਿਹੜਾ ਅੱਕੇ ਪਿਆ ਕਾਂਗਰਸ ਤੋਂ ਵੀ ਤੇ ਅਕਾਲੀ ਦਲ ਤੋਂ ਵੀ ਜਿੱਦਾਂ ਕਹਿੰਦੇ ਕੋੜੀ ਬੰਦਾ ਕੱਪੜੇ ਬਦਲ-ਬਦਲ ਕੇ ਤੰਗ ਆ ਜਾਂਦਾ ਹੈ ਉਸ ਤਰੀਕੇ ਨਾਲ ਉਹ ਕੋੜੀ ਬੰਦੇ ਜਿਹੜੇ ਤੰਗ ਆਏ ਹੋਏ ਆ ਵੀ ਅਸੀਂ ਕੋਈ ਹੋਰ ਲੈ ਕੇ ਆਣਾਂ ਬੰਦਾ ਸਿਰਫ ਇਹ ਦਿਮਾਗ ਦੇ ਅੰਦਰ ਗੱਲ ਹੈ ਚਾਹੇ ਤੀਜਾ ਕੋਈ ਬੰਦਾ ਹੋਵੇ ਸੋ ਇਸ ਕਰਕੇ ਜਿਹੜਾ ਜਪਤਾਰ ਐਮਪੀ ਦੀਆਂ ਸੀਟਾਂ ਨੂੰ ਮਿਲ ਗਈਆਂ ਜਿੱਦਾਂ ਕਹਿੰਦੇ ਆ ਕਿ ਉਂਗਲ ਪਕੜਾਈ ਤੇ ਬਾਹ ਫੜਨ ਨੂੰ ਫਿਰਦੇ ਆ ਸੋ ਉਹ ਹਾਲਤ ਹੋ ਰਹੀ ਆ ਆਦਰਵਾਇਸ ਜੇ ਤੁਸੀਂ ਸੋਚੋ ਕਿ ਵੀ ਇਮਾਨਦਾਰ ਬੰਦੇ ਆ ਜਾਂ ਕੋਈ ਇਹ ਕਰਕੇ ਦਿਖਾ ਲੈਣਗੇ ਤੋਂ ਮੈਨੂੰ ਨਹੀਂ ਨਜ਼ਰ ਆਉਂਦਾ ਕੋਈ ਉਹ ਜੀ ਗੱਲ ਜੇ ਇਮਾਨਦਾਰ ਹੁੰਦੇ ਤੇ ਯੂਪੀ 'ਚ ਖੜੇ ਹੁੰਦੇ ਉਹ ਤੇ ਜਾਂ ਹੋਰ ਸਟੇਟਾਂ 'ਚ ਵੀ ਖੜੇ ਹੁੰਦੇ ਪਰ ਪਿਆਰ ਨਹੀਂ ਕਿ ਸਿਰਫ ਪੰਜਾਬ ਚ ਮੈਂ ਸਿਰਫ ਦੇਖਿਓ ਚੱਲ ਸਾਹਿਬ ਬਾਰੇ ਕੀ ਇਹ ਬੰਦਾ ਮੋਕਾ ਪ੍ਰਸਤ ਬੰਦਾ ਸਿਰਫ ਮੋਕਾ ਪ੍ਰਸਤ ਜਿਹਨੂੰ ਕਹਿ ਸਕਦਾ ਮੈਂ ਇਮਾਨਦਾਰੀ ਵਾਲੀ ਗੱਲ ਦੇ ਅੰਦਰ ਕੋਈ ਨਹੀਂ ਆ ਸਿਰਫ ਮੌਕਾਪ੍ਰਸਤ ਹੈ ਜੋ ਅਗਲਾ ਅੰਦੋਲਨ ਤੇ ਕੈਸ਼ ਕਰ ਲਿਆ ਮੌਕਾ ਉਹਨੇ ਲੋਕਾਂ ਦੀ ਜਿਹੜੀ ਪੀੜ ਸੀ ਉਹਨੂੰ ਸੰਭਾਲ ਲਿਆ ਤੇ ਫਿਰ ਲੀਡਰ ਮੌਕਾ ਚੱਕਦੇ ਆ ਸਾਰੇ ਲੀਡਰ ਰਲੀਆਂ ਖੜਕਾਉਂਦੇ ਆ ਚੱਕਦੇ ਆ ਤੇ ਕੇਜਦੀਵਾਲ ਨੇ ਚੱਕ ਲਿਆ ਫੇਰ ਕੀ ਔਖਾ ਹੋ ਗਿਆ ਦੇਚ ਇੱਦਾਂ ਦੇਖੋ ਇਹ ਹੋ ਗਿਆ ਮੈਂ ਗੱਲ ਤੁਹਾਨੂੰ ਇਹ ਮੋਟੀ ਸਮਝਾਣਾ ਚਾਹੁੰਦਾ ਵਾਂ ਕਿ ਇਮਾਨਦਾਰ ਜਿਸ ਤਰ੍ਹਾਂ ਅਸੀਂ ਆ ਕਿ ਵੀ ਇਮਾਨਦਾਰ ਬੰਦਾ ਇਮਾਨਦਾਰ ਨਹੀਂ ਅਗਰ ਇਮਾਨਦਾਰ ਹੁੰਦਾ ਵੋਟ ਮਿਲ ਜਾਣੀ ਸੀਗੀ ਜਾਂ ਹੋਰ ਕਿੱਡਾ ਹੋ ਰਹੀਆਂ ਉਹ ਜੀ ਥੈਂਕ ਯੂ ਧੰਨਵਾਦ ਤੁਹਾਡੀ ਗੱਲ ਮੈਂ ਸਮਝ ਗਿਆ ਸਾਹਿਬ ਸਾਹਿਬ ਪਰ ਰਾਜਨੀਤਿਕਤਾ ਹੈ ਰਾਜਨੀਤੀ ਉਹ ਕਰਦੇ ਆ ਕਈ ਵਾਰ ਸ਼ੁਰੂ ਸ਼ੁਰੂ ਚ ਬਹੁਤ ਬੜਾ ਔਖਾ ਮੁਲੰਮਾ ਲਾਇਆ ਆਮ ਦੇ ਸਪੋਰਟਰਾਂ ਤੋਂ ਉਹਦੇ ਬਾਰੇ ਗੱਲ ਨਹੀਂ ਸੀ ਕਰਨ ਦਿੰਦੇ ਅਲੀ ਅਲੀ ਕਰਦੇ ਸੀ ਫਿਰ ਉਹਨਾਂ ਨੂੰ ਗੱਲ ਇਹ ਗ੍ਰਹਿਣ ਕਰਨੀ ਪਈ ਇਹ ਰਾਜਨੀਤੀ ਰਾਜਨੀਤੀ ਕਰਦੇ ਆ ਸਾਫ਼ ਤੇ ਦੇਖੋ ਕੁਝ ਨਾ ਕੁਝ ਤਾਂ ਹੈ ਇੱਕ ਤਾਂ ਬਦਲਾਅ ਦੀ ਗੱਲ ਲਾ ਲਓ ਤੀਜੀ ਧਿਰ ਦੀ ਗੱਲ ਲਾ ਲਓ ਜਾਂ ਤੀਜੀ ਧਿਰ ਹਲੇ ਪਰਖੀ ਨਹੀਂ ਉਹਦੀ ਲਾ ਲਓ ਜਾਂ ਦਿੱਲੀ ਦਾ ਮਾਡਲ ਲਾ ਲਓ ਮਾੜੀ ਜੀ ਗੱਲ ਇੱਕ ਪਾਣੀ ਦੀ ਸੀ ਪਾਣੀ ਦੀ ਚੋਰੀ ਰੋਕ ਕੇ ਲੋਕਾਂ ਨੂੰ ਹੀ ਪਾਣੀ ਜਦੋਂ ਫ੍ਰੀ ਦਿੱਤਾ ਤਾਂ ਲੋਕ ਖੁਸ਼ ਹੋਗੇ ਕਲ ਇਹਨੇ ਕੋਨਾ ਦੇ ਲਾਤੇ ਤੇ ਸਕੈਨਿੰਗ ਮਸ਼ੀਨਾਂ ਝੁੱਗੀਆਂ ਦੇ ਆਲ ਦੇ ਵਾਲੇ ਲਾਤੀਆਂ ਗੱਲ ਹੈ ਬਿਲਕੁਲ ਤੇ ਇਹ ਵੀ ਹੈ ਵੀ ਤਿੰਨ ਘਰ ਜੋੜ ਕੇ ਬੰਗਲਾ ਬਣਾ ਲਿਆ ਉਹ 2 ਲੱਖ ਤਨਖਾਹ ਲੈਂਦਾ ਚਲੋ ਉਹ ਤਾਂ ਸਾਰੇ ਜਿਹੜੇ ਨੇ ਰਾਜਨੀਤਿਕ ਬੰਦੇ ਲੈਂਦੇ ਆ ਉਹਨੇ ਪਰਿਵਾਰ ਵੀ ਤੋੜਨਾ ਜੇ ਉਹ ਕਰਾਪਸ਼ਨ ਨਹੀਂ ਕਰਦਾ 2 ਲੱਖ ਨਾਲ ਉਹਨੇ ਟੱਬਰ ਵੀ ਤੋੜਨਾ ਅਜੇ ਛਿੱਲ ਲਾਹੇ ਲੋਕਾਂ ਦੀ ਫੇਰ ਉਹਨੂੰ ਦੋ ਲੱਖ ਦੀ ਵੀ ਲੋੜ ਨਹੀਂ ਕਹਿ ਸਕਦਾ ਮੈਂ 1 ਰੁਪਿਆ ਵੀ ਨਹੀਂ ਲੈਣਾ ਤਨਖਾਹ ਤਾਂ ਕਿਉਂਕਿ ਉਹਨੂੰ ਪਤਾ ਦੂਜੇ ਮੈਂ ਦੂਜੇ ਪਾਸਿਓਂ ਗੱਲ ਕਰ ਲੈਣੀ ਜਿਹੜਾ ਤੇ ਠਾਕਰਾਂ ਦੇ ਵਿੱਚ ਜਾ ਕੇ ਹਾਰਵਰਡ ਲੈਵਲ ਦੀ ਪਟਾਈ ਦੀ ਗੱਲ ਨਹੀਂ ਉਹ ਡਾਂਗਾ ਖਾਣੀਆਂ ਸੀ ਉੱਥੇ ਮਾਰੋ ਸਸਰੇ ਕੋ ਜਿਹੜਾ ਇਹ ਕਹਿਣਾ ਸੀ ਉੱਥੋਂ ਕਿੱਥੇ ਭੱਜਣਾ ਸੀ ਯਾਦਵਾ ਤੇ ਠਾਕਰਾਂ ਦੇ ਪਿੰਡ ਹੈ ਉੱਥੇ ਜਿੱਥੇ ਬੰਦੇ ਤਾਂ ਉੱਥੇ ਕਾਤਲ ਜਿਹੜੇ 10 20 20 ਬੰਦੇ ਮਾਰ ਕੇ ਉਹ ਐਮਐਲਏ ਬਣੀ ਜਾਂਦੇ ਆ ਉੱਥੇ ਉਹ ਯੂਪੀ ਮੈਂ ਬਹੁਤ ਨੇੜਿਓਂ ਵੇਖੀ ਆ ਜੀ ਉਹਦੇ ਹੁੰਦਾ ਤੇ ਕੀ ਕੀ ਅਸਾਮ ਰੋਡ ਤੇ ਹੁੰਦਾ ਰਿਹਾ ਕਿੰਨਾ ਅਲਾਹਾਬਾਦ ਤੋਂ ਬਨਾਸ ਦੇ ਸੰਨ ਚ ਹੁੰਦਾ ਰਿਹਾ ਉੱਥੇ ਤਾਂ ਗੱਡੀ ਜਾਂਦੇ ਲੁੱਟ ਲੈਂਦੇ ਦਿਨੇ ਅੱਜ ਤੋਂ 25 ਸਾਲ ਪਹਿਲਾਂ 20 ਸਾਲ ਉਹ ਬਹੁਤ ਕੁਝ ਨੇੜਿਓਂ ਜ਼ਿੰਦਗੀ ਮੈਂ ਵੇਖੀ ਆ ਕਲਵੰਤ ਸਿੰਘ ਜੀ ਲੋਕ ਉੱਥੇ ਹੀ ਆਉਂਦੇ ਆ ਤੁਸੀਂ ਸਿਆਣੇ ਆ ਤੁਸੀਂ ਉੱਥੇ ਕਰਨੀ ਚਾਹੁੰਦੇ ਹੋ ਜਿੱਥੇ ਸਿਆਣੇ ਤੁਹਾਡੀ ਗੱਲ ਸੁਣੇ ਮੇਰੇ ਖਿਆਲ ਇਹ ਹੀ ਕਾਰਨ ਹੋ ਸਕਦਾ ਹੈ ਇਹ ਬਾਕੀ ਆਪਣੀ ਕੋਸ਼ਿਸ਼ ਅਗਲਾ ਕਰਦਾ ਕਿ ਨਾ ਕਿਵੇਂ ਹਰਜੀਤ ਸਿੰਘ ਦੀ ਲਾਈਨ ਨੰਬਰ 2 ਹਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਰ ਜੇ ਸਿੰਘ ਜੀ ਕਹ ਗਿਆ ਯੂਪੀ ਜੀ ਨੇ ਲੜੇ ਦੇਖੋ ਇਹ ਪਾਰਟੀ 2-3 ਸਾਲ ਪਹਿਲੇ ਬਣੀਆ ਤੇ ਚੋਣਾਂ ਲੜਨ ਲਈ ਥੰਡ ਚਾਹੀਦਾ ਉੱਥੇ 400 ਸੀਟਾਂ ਨੇ ਉੱਥੇ ਟਰੱਕ ਨੋਕਾਂ ਦਾ ਚਾਹੀਦਾ ਉੱਥੇ ਲੈਕਚਰ ਲੜਨ ਲਈ ਤੇ ਇਹਨਾਂ ਔਕਾਂ ਨੇ ਵੀ ਤੁਸੀਂ ਜਾ ਕੇ ਸਾਰੇ ਸਾਈਂ ਦੋ ਤਿੰਨ ਘਟਨਾਵਾਂ ਹੋਈਆਂ ਨੇ ਇਹਦੇ ਵਿੱਚ ਦੇਖੋ ਇੱਕ ਪਾਸੇ ਤਾਂ ਕਈਆਂ ਨੇ ਭਗਵਾਨ ਤੁਹਾਨੂੰ ਨੂੰ ਤਾਂ ਐਵੇਂ ਲਤੀਵੇ ਫੋਨ ਜਾਂਦੇ ਆ ਲੋਕ ਉਹਦੇ ਪਿੱਛੇ ਬੋਟ ਵਾਰ ਨਹੀਂ ਪਾਉਣੀ ਤੇ ਉਹ ਇਹ ਕਹੇ ਦੱਬ ਕੇ ਵੋਟ ਨਹੀਂ ਪਾ ਸਕਦਾ ਉਹ ਇਹ ਕਹੇ ਤੇ ਜਾ ਕੇ ਡੜਾ ਮੈਨੂੰ ਇਹ ਨਹੀਂ ਸਮਝ ਲੱਗਦੀ ਤੇ ਦੂਜੀ ਗੱਲ ਵੀ ਇਹ ਰਾਜਨੀਤੀ ਆ ਤੇ ਕੁਝ ਵੀ ਹੋ ਸਕਦਾ ਮੈਨੂੰ ਲੱਗਦਾ ਵੀ ਜਿਸ ਤਰੀਕੇ ਨਾਲ ਇਹ ਘਟਨਾਵਾਂ ਹੋ ਰਹੀਆਂ ਮਾਹੌਲ ਖਰਾਬ ਵੀ ਹੋ ਸਕਦਾ ਊਈ ਨਹੀਂ ਵੀ ਬਹੁਤ ਕੁਝ ਹੋ ਸਕਦਾ ਹੋ ਸਕਦਾ ਜਾਂ ਕੋਈ ਰੌਲਾ ਰੱਪੜਨ ਪਵਾ ਕੇ ਤੇ ਕੋਈ ਚੋਣਾ ਹੀ ਗਾਂ ਕਰਾ ਦਿੱਤੀ ਜਾਂ ਮੈਨੂੰ ਨਹੀਂ ਲੱਗਦਾ ਵੀ ਜਿਵੇਂ ਜਿਹੜੇ ਆਮ ਆਦਮੀ ਪਾਰਨਾ ਜੁੜੇ ਨੇ ਬਹੁਤ ਸਾਵੀਦਾਰ ਲੋਕ ਨੇ ਉਹ ਮੈਨੂੰ ਨਹੀਂ ਲੱਗਦਾ ਇਹ ਜਾਂ ਕਰਨਗੇ ਦੂਜਾ ਆਪਾਂ ਪਿੰਡਾਂ ਦੇ ਵਿੱਚ ਦੇਖਿਆ ਆਪਾਂ ਅਵਸਰ ਤੇ ਹੁਣ ਵਾਲੇ ਵਿੱਚ ਇੰਸਾ ਲੈਂਦੇ ਰਹਿ ਆ ਪਿੰਡਾਂ ਦੇ ਵਿੱਚ ਲੋਕ ਆ ਪਰ ਉਹ ਇੰਨਾ ਜਿਆਦਾ ਗਾਹ ਨਹੀਂ ਜਾਂਦੇ ਰੋੜੇ ਮਾਰਨ ਲੱਗ ਜਾਣ ਵਿਰੋਧ ਜ਼ਰੂਰ ਹੁੰਦਾ ਪਰ ਇਹ ਮੈਨੂੰ ਲੱਗਦਾ ਕੋਈ ਸ਼ਾਸਤ ਸ਼ਾਸਤ ਦੇ ਵਿੱਚ ਕੋਈ ਇੰਨੀ ਵੱਡੀ ਗੱਲ ਨਹੀਂ ਨਾਲੇ ਦੂਜਾ ਇਹ ਸਰਕਾਰ ਕੀ ਬੰਦਾ ਦੇ ਛੇ ਮੋੜੇ ਮਲਾ ਕੁੱਤੇ ਦੇ ਕੋਈ ਛੋਟੀ ਨਹੀਂ ਮਾਰਦਾ ਹੈਗਾ ਪੰਜਾਬ ਦੇ ਵਿੱਚ ਇਹ ਤਾਂ ਕੀਪਨੈਸ ਦੇ ਮਾਰਿਆ ਵੀ ਇਹ ਬਹੁਤ ਵੱਡੀ ਕੋਈ ਲੱਗਦਾ ਪਲਨ ਜੀ ਦਾ ਥੈਂਕ ਯੂ ਜੀ ਬਿਲਕੁਲ ਜੀ ਇੱਕੋ ਭਾਈ ਅਮਰੀਕਾ ਦੇ ਨਾਲੇ ਦਾ ਮੈਂ ਸਿੰਘ ਜੀ ਲਾਈਨ ਨੰਬਰ 3 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਛੋਟੇ ਪਹਿਲਾਂ ਤਲਵੰਤ ਬਾਈ ਜੀ ਕਹਿ ਕੇ ਗਏ ਆ ਬੇਈਮਾਨ ਆ ਕੇਜਰੀ ਆਲ ਫਿਰ ਚੰਗਾ ਦੱਸ ਦਿਓ ਉਹਨੂੰ ਪਾ ਦਿੰਨੇ ਆ ਫਿਰ ਤਾਂ ਬਾਦਲ ਜਾ ਕਪਤਾਨ ਹੀ ਰਹਿ ਗਿਆ ਉਹ ਵੀ ਮਾੜੇ ਆ ਫਿਰ ਇਹਨਾਂ ਨੂੰ ਕਿਸੇ ਨੂੰ ਤਾਂ ਕੋਣ ਪਾਉਣਾ ਹੀ ਆ ਕਿਸੇ ਨੂੰ ਪਾ ਲੈਣ ਦਿਓ ਜਿਸ ਕੋ ਸਵਰਦਾ ਸਵਰ ਲੈਣ ਦਿਓ ਗੱਲਾਂ ਕਰਨ ਨੂੰ ਜਿੰਨੀਆਂ ਮਰਜ਼ੀ ਕਰਾ ਲਓ ਜੁਪੀ ਚੋਂ ਨਹੀਂ ਖੜਦਾ ਉਦੋਂ ਤੁਸੀਂ ਦੱਸ ਦਿਓ ਸਾਨੂੰ ਬੰਦਾ ਦੇ ਦਿਓ ਅਸੀਂ ਉਹਨੂੰ ਵੋਟਾਂ ਬਈ ਕਾਲੀ ਦਲ ਨੂੰ ਨਾ ਪਾਓ ਕਾਂਗਰਸ ਨੂੰ ਉਹ ਵੀ ਮਾੜੇ ਆ ਫਿਰ ਚੰਗਾ ਬੰਦਾ ਦੇ ਦਿਓ ਅਸੀਂ ਉਹਨੂੰ ਵੋਟਾਂ ਪਾ ਦਿੰਨੇ ਆ ਆ ਬਾਈ ਪਹਿਲਾਂ ਬਹੁਤ ਵਧੀਆ ਗੱਲ ਕਰਕੇ ਮੈਂ ਇਹੀ ਕਹਿਣੀ ਸੀ ਉਹਦਾ ਕਰਨ ਵੀ ਉਹ ਭਗਵਾਨਤਮਾਨ ਉਹਨੂੰ ਐਵੇਂ ਲਤੀਫੇ ਸੁਣਨ ਜਾਂਦੇ ਆ ਹੁਣ ਕਹਿੰਦੇ ਉਹਦੇ ਕਹਿਣ ਤੇ ਰੋੜੇ ਮਾਰਦੇ ਕਹਿਣ ਤੇ ਰੋੜੇ ਮਾਰਦੇ ਤੇ ਅਗਲੇ ਠੋਕ ਪਾਉਣਗੇ ਤੇ ਬਾਕੀ ਹਰ ਨੇ ਬੜੇ ਦੂਜਾ ਕਹਿੰਦੀ ਆ ਵੀ ਜੇ ਕਹਿ ਤਾਂ ਕਾਲਿਆਂ ਨੂੰ ਵੀ ਇਹਨਾਂ ਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂ ਇਹਨਾਂ ਨੂੰ ਤਾਂ ਜਾਨੋਂ ਮਕਾ ਦੇਣਾ ਉਹਨੂੰ ਬਹੁਤ ਵੱਡੀ ਗਲਤਫਹਿਮੀ ਜਿ ਫਿਰਦੀ ਆ ਬਾਦਲ ਜਦੋਂ ਸੰਗਤ ਦਰਸ਼ਨ ਕਰਨ ਆਉਂਦਾ ਮੂਰੇ 56 ਜਿਆ ਹਜੇ ਲੱਗਾ ਹੁੰਦਾ ਉਹਦੇ ਉਹਨੂੰ ਕਹ ਉਹ ਚੱਕ ਕੇ ਸੰਗਤ ਦਰਸ਼ਨ ਕਰੇ ਫਿਰਦੇ ਚਾਹੀਦਾ ਕੰਮ ਕੋਈ ਕੀਤਾ ਨਹੀਂ ਤਾਂ ਵਜਦੇ ਆ ਛੇਤਰ ਆਲਾ ਦੇਖਣ ਇਹ ਵੇਖਣ ਵਜਦੇ ਕਾ ਤੋਂ ਆ ਨਹੀਂ ਤਾਂ ਕਹਨ ਕੋਈ ਪਰਵਾਹ ਹੀ ਨਹੀਂ ਉਹ ਫਿਰਦੇ ਆਮ ਆਦਮੀ ਪਾਰਟੀ ਵਾਲੇ ਤੇ ਕੋਈ ਹੱਥ ਲਾ ਕੇ ਦਿਖਾਵੇ ਜਦੋਂ ਹਮਲਾ ਕਰਾਇਆ ਇਹਨਾਂ ਨੇ ਕਰਾਉਣਾ ਕੰਮ ਖਰਾਬ ਕਰਾਉਣਾ ਸੋਖਾ ਜ਼ਾਦਰਾ ਵੋਟਾਂ ਗੱਲ ਸਾਬ ਪੈ ਜਾਣ ਤਾਂ ਵੀ ਚੰਗਾ ਲੱਗਦਾ ਨਹੀਂ ਹੈ ਇਸ ਹਿਸਾਬ ਨਾਲ ਥੈਂਕ ਯੂ ਸੋ ਮਚ ਧੰਵਾਦ ਜੀ ਦਰੇ ਹੀ ਹੈ ਕਿ ਹਲੇ ਮੌਜੂਦਾ ਸਰਕਾਰ ਹੈ ਉਹ ਚੋਣ ਹੀ ਕੋਈ ਜੇਹੀ ਗੱਲ ਨਾ ਹੋਵੇ ਕੰਮ ਸਰ ਕੋ ਗੜਬੜ ਹੋ ਜਾਵੇ ਮੰਗਤਾ ਜੀ ਲਾਈਨ ਨੰਬਰ 4 ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਮੈਂ ਆਹਾ ਮੈਂ ਵੀ ਇਹੀ ਗੱਲ ਕਾਣੀ ਸੀ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਜਿੱਤੀ ਪਈ ਆ ਨਾ ਹੁਣ ਸਾਰੇ ਲੀਡਰ ਕਹਿ ਰਹੇ ਕਾਂਗਰਸੀਏ ਵੀ ਜਿੱਦਾਂ ਅਕਾਲੀ ਦਲ ਦੇ ਵੀ ਇਹੇ ਬਹੁਤ ਮਾਰਾ ਹੋਇਆ ਬਹੁਤ ਮਾਰਾ ਮਾਰਾ ਇਹਨਾਂ ਨੂੰ ਉਦੋਂ ਨਹੀਂ ਦੱਸਿਆ ਜਿੱਦਾਂ ਕਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਬਾਕੀਆਂ ਪਾਰਟੀਆਂ ਜਦੋਂ ਧਾਰਾ ਸਾਰੀ ਆ ਜਾਂ ਦਰਬਾਰ ਸਾਹਿਬ ਤੇ ਟੈਕ ਦੇ ਬੇਲੇ ਇੰਦਰਾ ਗਾਂਧੀ ਤੋਂ ਇਹਨਾਂ ਤੋਂ ਇਹਨਾਂ ਨੇ ਦਖਤ ਕੀਤੇ ਜਾਂ ਇਹ ਪਤਾ ਸੀ ਆਪ ਫਾਰਮ ਹੋ ਤੇ ਉਧਰ ਕਿਤੇ ਚਲ ਗਿਆ ਹਿੜਿਆਣੇ ਵਾਲ ਉੱਥੇ ਬਹਿ ਗਿਆ ਮੁੰਡਾ ਉਦੋਂ ਨੂੰ ਭੇਜ ਦਿੱਤਾ ਅਮਰੀਕਾ ਨੂੰ ਤੇ ਉਹ ਇਹ ਮੈਂ ਦੇ ਹਿਸਾਬ ਦੇ ਨਾਲ ਜਦੋਂ ਮੈਂ ਕਹਿੰਦਾ ਇਹ ਗੱਲ ਇਹ ਕਹਿੰਦੇ ਮਾਰਾ ਹੋਇਆ ਮੈਂ ਕਹਿੰਦਾ ਵੀ ਇਹ ਸਹੀ ਬੰਦੇ ਨੇ ਕੰਮ ਕੀਤਾ ਵੀ ਲੈ ਗਈਆਂ ਸਾਰਾ ਕੁਝ ਲੈ ਗਿਆ ਆ ਕਰਕੇ ਲੋਕ ਉੱਥੇ ਦੇ ਦਬਾਇਓ ਆ ਜਿਹੜੇ ਲੋਕਾਂ ਦੇ ਵਿੱਚ ਅਜੇ ਵੀ ਇਹਨਾਂ ਨੇ ਨੁਕਸਾਨ ਜਿਹੜੀ ਇਹਨਾਂ ਨੇ ਗਦਾਰੀਆਂ ਕੀਤੀਆਂ ਸਿੱਖ ਧਰਮ ਦੇ ਨਾਲ ਆਪਣੇ ਧਰਮ ਦੇ ਨਾਲ ਜੋੜ ਕੇ ਇਹਨੂੰ ਦੇਖੋ ਤਾਂ ਇਹ ਇਹਨੇ ਬਹੁਤ ਕੀਤਾ ਪ੍ਰਕਾਸ਼ ਸਿੰਘ ਬਾਦਲ ਨੇ ਉਹੋ ਬੰਦੇ ਨੇ ਜਿੱਦਾਂ ਕੀਤਾ ਉਹਦੀ ਜਨਵੀਰ ਕਿਤੇ ਜਾਗੀ ਤਾਂ ਉਹਨੇ ਜਿੱਦਾਂ ਵੀ ਕਹ ਲਓ ਵੀ ਬਹੁਤ ਔਖਾ ਕੰਮ ਆ ਜਿੱਤੀ ਮਾ ਉਹ ਵਿਚਾਰੇ ਨੇ ਭੋਗਤਣਾ ਵੀ ਆ ਜੇਲ੍ਹ ਦੇ ਵਿੱਚ ਜਾ ਕੇ ਸਾਰਾ ਕੋਈ ਅਤਾਮਕਿਆ ਮੈਂ ਨਾ ਆਪਰਕਾਰ ਬਾਦਲ ਜਾਊਗਾ ਜੇਲ੍ਹ ਦੇ ਵਿੱਚ ਉਹ ਬਾਦਲ ਜਾਊਗਾ ਉਹ ਜੇਲ੍ਹ ਦੇ ਵਿੱਚ ਉਹਨੂੰ ਮਿਲਣਾ ਆਪ ਜਾਣਗੇ ਜਿੱਦਾਂ ਫਿਲਮਾਂ ਦੇ ਵਿੱਚ ਹੁੰਦੀ ਨਾ ਉਸ ਤਰ੍ਹਾਂ ਦਾ ਇਹ ਤਰੀਕਾ ਵਰਤਣਗੇ ਪਰ ਉਹ ਬੰਦੇ ਦੀ ਬਹੁਤ ਮੈਂ ਤਾਂ ਕਹਿੰਦਾ ਵੀ ਬਹਾਦਰੀ ਆ ਜਿੱਦਾਂ ਵੀ ਲੋਕਾਂ ਦੇ ਸਾਹਮਣੇ ਪੁਰਾਣੇ ਜਿਹੜੇ ਹੁਣ ਜ਼ਖਮਾਂ ਨੂੰ ਕਰਿਦਿਆ ਗਿਆ ਜਿੱਦਾਂ ਜਗਾਇਆ ਲੋਕਾਂ ਨੂੰ ਵੇ ਆ ਕੁ ਸੇ ਇਹ ਲੀਡਰ ਕਰਦੇ ਆ ਤੇ ਹੁਣ ਇਹ ਸਾਰੇ ਲੀਡਰ ਇੱਕੋ ਜਿਹੇ ਆ ਉਹ ਕਹਿੰਦੇ ਜਿਹੜੀ ਆ ਮਾਰੀ ਇਹ ਬਹੁਤ ਗਲਤ ਕੰਮ ਆ ਇਹ ਇਦਾਂ ਨਹੀਂ ਚਾਹੀਦਾ ਹੁਣ ਐਸ ਹੋਈ ਇਹ 90 ਸਾਲ ਦਾ ਜਿੱਦਾਂ ਹੋ ਕੇ ਵੀ ਉਹ ਇਦਾਂ ਲੋਕਾਂ ਦਾ ਰਜਾਇਨ ਕਾਦੇ ਨਹੀਂ ਪਹਿਲਾਂ ਕੀਤਾ ਇਹਨੇ ਵੀ ਹੁਣ ਇਹੀ ਗੱਲ ਨਹੀਂ ਹੋਣੀ ਆ ਲੋਕਾਂ ਵਿੱਚ ਲੋਕ ਮੇਰੇ ਹਿਸਾਬ ਦੇ ਨਾਲ ਉੱਥੇ ਦਬਾਇਓ ਆ ਲੋਕਾਂ ਨੂੰ ਮੁੱਦੇ ਅਜੇ ਵੀ ਦੇਦੇ ਪੰਜਾਬ ਦੇ ਧਾਰਮਿਕ ਦੇ ਤੌਰ ਤੇ ਜਿੰਨੇ ਲੋਕਾਂ ਨੇ ਸ਼ਹੀਦੀਆਂ ਦਿੱਤੀਆਂ ਜੇਲਾਂ ਦੇ ਵਿੱਚ ਬੰਦਾਂ ਦਾ ਜਿਹੜੇ ਉਹਨਾਂ ਦੇ ਵਿੱਚ ਗੁੱਸਾ ਹੈਗਾ ਪਰ ਸਿਕورٹی ਲੈ ਕੇ ਦਬਾ ਕੇ ਰਾਜਨੀਤੀ ਕਰਨੀ ਲੰਮੀ ਹਰ ਕਿਤੇ ਪਾਉਣੀ ਆ ਤਾਂ ਤੁਹਾਡੇ ਤੇ ਪਛਾ ਹੋਊਗਾ ਹੁਣ ਗਰੀਬ ਬੰਦਾ ਪਠਾਣੇ ਦੇ ਵਿੱਚ ਪਰਚਾ ਕਿੰਡਾ ਸਕਦਾ ਉਹਨਾਂ ਥੋੜੇ ਜਿਹੇ ਪੈਸੇ ਹੁੰਦੇ ਆ ਉਹ ਦਬਾਅ ਦੀ ਰਾਜਨੀਤੀ ਇਹ ਕਰ ਪ੍ਰਕਾਸ਼ ਸਿੰਘ ਬਾਦਲ ਤਾਂ ਇਹ ਮੇਰੇ ਹਿਸਾਬ ਦੇ ਨਾਲ ਬਹੁਤ ਵਧੀਆ ਇਹ काम ਹੋਇਆ ਵੀ ਇਹਨਾਂ ਦੇ ਜਿੱਦਾ ਵਿੱਚ ਜਿੱਤੀ ਪਈ ਇੱਥੇ ਵੀ ਜੇ ਹੁਣ ਇੱਥੇ ਸਾਰੀ ਕੀ ਆ ਜਾਣ ਨਾ ਇੱਥੇ ਆਣ ਕੇ ਦਿਖਾ ਲੈਣ ਇਹ ਆਣ ਕੇ ਬਾਦਲ ਤੇ ਪ੍ਰਕਾਸ਼ੂ ਬਾਦਲ ਵੀ ਆਉਂਦੇ ਆ ਉਹਨਾਂ ਦੇ ਕੀ ਹੁੰਦਾ ਇੱਥੇ ਹਾਲ ਲੋਕਾਂ ਇੱਥੇ ਆਜ਼ਾਦੀ ਆ ਨਾ ਥੋੜਾ ਜਿਹਾ ਵਿਚਾਰ ਰੱਖਣ ਦੀ ਚੰਗਾ ਜੀ ਮੈਂ ਕਹਿੰਦਾ ਇਸ ਕਰਕੇ ਕਹਿੰਦਾ ਵੀ ਬਹੁਤ ਵਧੀਆ ਹੋਇਆ ਜੀ ਧੰਨਵਾਦ ਧੰਨਵਾਦ ਜੀ ਧੰਨਵਾਦ ਸਰ ਸਿੰਘ ਰੰਦਾਵਾ ਜੀ ਹਾਂਜੀ ਜੀ ਸਰ ਲਾਈਨ ਸੀ ਸੋ ਆਪਾਂ ਗੱਲ ਕਰ ਰਹੇ ਸੀ ਹਾਂਜੀ ਤੇ ਤੁਸੀਂ ਸਾਰੇ ਖਿੱਤੇ ਦੇ ਵਿੱਚ ਫਿਰੇ ਹੋ ਤਾਂ ਲੋਕ ਜਾਣਦੇ ਆ ਮਾਝੇ ਦੇ ਵਿੱਚ ਤੇ ਤੁਹਾਡਾ ਆਪਣਾ ਵਰਗ ਹੈ ਜਿਹਦੇ ਵਿੱਚ ਵਕੀਲ ਨੇ ਪੜ੍ਹੇ ਲਿਖੇ ਨੇ ਲੋਕ ਕੀ ਸੋਚਦੇ ਆ ਅੰਦਰ ਕੀ ਆ ਦਿਲ ਕੀ ਆ ਜੋ ਮੈਨੂੰ ਲੱਗਦਾ ਆ ਉਹ ਆ ਕਿ ਜਿਹੜੀ ਜਿਹੜਾ ਕਾਂਗਰਸ ਦਾ ਪੱਕਾ ਵੋਟ ਬੈਂਕ ਸੀ ਨਾ ਜਿਹੜੇ ਜਿਹੜੇ ਸ਼ੈਡਿਊਲ ਕਾਸਮਜਵੀ ਸੇਖ ਲੋਕੀ ਜਾਂ ਜਿਹੜਾ ਕਾਂਗਰਸ ਦਾ ਕੇ ਇਕੱਲੇ ਦੀ ਗੱਲ ਵੱਲ ਜਾ ਚੁੱਕਾ ਰੀਜ਼ਨ ਇਹ ਕਿ ਚੋਣ ਕਣਕ ਐਂਡ ਸਿਲੰਡਰ ਗੈਸ ਸਿਲੰਡਰੇ ਵੰਡਦੇ ਰਹੇ ਆ ਸੋ ਆਮ ਲੋਕਾਂ ਦੇ ਕਹਿਣ ਦੀ ਇਹ ਗੱਲ ਆ ਕਿ ਸਾਨੂੰ ਛੱਠਾ ਸਾਲਾ ਚ ਅੱਗੇ ਕੋਈ ਮਿਲਿਆ ਸਾਨੂੰ ਆਟਾ ਦਾਲ ਮਿਲ ਜਾਂਦਾ ਆ ਤੇ ਛੱਠੀ ਬਹੁਤ ਵੱਡੀ ਗੱਲ ਏ ਉਹ ਟਰੱਕਾਂ ਦੇ ਟਰੱਕ ਉਹਨਾਂ ਨੇ ਸਾਢੇ 11 ਵਜੇ ਤੱਕ 12 ਵਜੇ ਤੱਕ इवन 3 ਤਰੀਕ ਤੱਕ ਲੋਕਾਂ ਨੂੰ ਵੰਡਦੇ ਰਹੇ ਹੋ। ਸੋ ਜਿਹੜਾ ਜਿਹੜਾ ਕਾਂਗਰਸ ਦਾ ਪੱਕਾ ਵੋਟ ਬੈਂਕ ਸੀ ਉਹ ਸਾਰਾ ਅਕਾਲੀ ਦਲ ਨਾਲ ਸਹਿਮਤ ਲੱਗ ਰਿਹਾ ਆ। ਨਾ ਕੁਛ ਵੱਲ ਗਿਆ। ਅੱਜ ਦੀ ਡੇਟ ਦੇ ਵਿੱਚ ਕਾਂਗਰਸ ਜਿਹੜੀ ਸਰਕਾਰ ਬਣਾਉਣ ਵਾਲੀ ਸਥਿਤੀ ਮੇਰੇ ਖਿਆਲ ਨਾਲ ਅਕਾਲੀ ਦਲ ਜੇ ਭਾਜਪਾ ਨੇ ਪੂਰੀ ਤਰ੍ਹਾਂ ਸਾਥ ਦਿੱਤਾ ਅਕਾਲੀ ਦਲ ਦਾ ਅਕਾਲੀ ਦਲ ਸਰਕਾਰ ਬਣਾਊਗਾ ਜਾਂ ਹੰਗ ਅਸੈਂਬਲੀ ਰਹੂਗੀ। ਸੋ ਕਾਂਗਰਸ ਅਸਾਈ ਦੀ ਡੇਟ ਸਰਕਾਰ ਬਣਾਉਣ ਦੀ ਸਥਿਤੀ ਚ ਇਹ ਕਿਸੇ ਮਿਲਾ ਗ੍ਰੀਟਲ ਕਰੋ ਵੈਰੀ ਗੁੱਡ ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਬਾਰੇ ਪਰਿਵਾਰ ਆਪ ਇਹਨਾਂ ਦੇ ਸਤਕਾਰਯੋਗ ਚਾਚਾ ਜੀ ਕਾਂਗਰਸ ਦੇ ਨਾਲ ਨੇ ਧੰਨਵਾਦ ਨਿਮਾ ਜੀ ਲਾਈਨ ਨਾ ਹੋਵੇ ਮਾੜਾ ਤੁਸੀਂ ਟਾਈਮ ਦਾ ਦੇਖਿਆ ਕਰੋ ਅਭੀ ਵੀ ਲਾਈਨ ਤੇ ਲੱਗੀ ਨਾ ਲਾਈਨ ਮੈਨੂੰ ਅੱਧਾ ਅੱਧਾ ਘੰਟਾ ਹੋ ਕਰਦੇ ਨੂੰ ਦੂਜੀ ਗੱਲ ਹੋਣਾ ਸੌਰੀ ਜੀ ਸੌਰੀ ਜਿਹੜੀ ਆਉਣਾ ਆ ਕੁਝ ਕਾਰ ਕਰਨਾ ਚਾਹੀਦਾ ਜਿਹੜਾ ਗੁੱਪਗਵਾਰ ਕੱਟਣਾ ਵੋਟਾਂ 'ਚ ਕੱਢਣਾ ਨੂੰ ਦੂਜੀ ਗੱਲ ਅੱਖਾਂ ਮੀਚ ਕੇ ਵੀ ਆਮ ਆਦਮੀ ਪਾਰਟੀ ਦੇ ਪਿੱਛੇ ਨਾ ਤਰਪੋ ਜਿਹੜੇ ਵਧੀਆ ਬੰਦੇ ਆ ਉਹਨਾਂ ਨੂੰ ਵੋਟ ਪਾਓ ਜਿਹੜਾ ਲੱਗਦਾ ਵੀ ਸਾਡੇ ਹੁਣੇ ਰਾਏ ਇੱਕ ਦੋ ਹਲਕੇ ਹੈਗੇ ਆ ਜਿਹੜੇ ਪਤਾ ਵੀ ਇਹ ਉਹ ਬੰਦੇ ਵਧੀਆ ਉਹਨਾਂ ਬੰਦਿਆਂ ਨੂੰ ਨਾ ਵੋਟ ਪਾਓ ਅੱਖਾਂ ਵਿੱਚ ਵਧੀਆ ਬੰਦਾ ਉਹਨਾਂ ਨੂੰ ਵੋਟ ਪਾਓ ਉਸ ਬਾਅਦ ਚੋਂ ਗੱਲ ਆ ਜਾਂਦੀ ਐ ਜਿਹੜੇ ਡਾਲਰ ਸਸਤੀ ਦੁੱਧ ਦੀ ਖੇਲਾਂ ਲੈਣ ਲਈ ਲਾਈਨਾਂ 'ਚ ਖੜੇ ਹੁੰਦੇ ਆ ਅਮਰੀਕਾ ਤੋਂ ਲੈ ਕੇ ਆਉਂਦੇ ਆ ਕੈਨੇਡਾ ਵਿੱਚ ਰਹਿੰਦੇ ਆ ਕੰਮ ਕਰਦੇ ਆ ਕੈਨੇਡਾ 'ਚ ਉਹ ਪੰਜਾਬ ਦੀ ਆਰਥਿਕ ਤਸ਼ੀਸ਼ ਦਾ ਤੁਰੇ ਆ ਉਹੜਾ ਮੜਾ ਮੋਟਾ ਕਲ ਨੂੰ ਹੱਥ ਮਾਰ ਕੇ ਚੱਲਿਓ ਐਵੇਂ ਕੰਬਲਿਆ ਉਹ ਮੀਚ ਕੇ ਨਾ ਤੇ ਐਂ ਕਹਣਾ ਸੀ ਤਰਵਾਜ਼ ਵੀਰੇ ਚਲੋ ਬਾਜੀ ਅਹ ਪਾਲ ਜੀ ਲਾਈਨ ਨੰਬਰ 3 ਤੁਹਾਨੂੰ ਸਤਿ ਸ਼੍ਰੀ ਅਕਾਲ ਸਤਿ ਜੀ ਅੰਜ ਭਾਈ ਅਖਲਾ ਕਰਦੇ ਸੀ ਇੰਨਾ ਅੱਗੇ ਦੇਖਿਆ ਆਪਣਾ ਵੀ ਦਾ ਗੁੱਸਾ ਦੇ ਗੁੱਸੇ ਪੇ ਡੀਐਸਪੀ ਦੇਖਿਆ ਗਿਆ ਉਹੀ ਉਹੀ ਜਿਹੜੀਆਂ ਫੋਰਸਸ ਹੈਗੀਆਂ ਜਿਹੜੀਆਂ ਇਹ ਥੀਸ ਦੇ ਵਿੱਚ ਸੀ ਹੋਇਆ ਸੀ ਤੇ ਹੁਣ ਵੀ ਜਿਹੜੀ ਬੇਅਦਵੀ ਹੋਈ ਹੈ ਉਹੀ ਆਪਣੀਆਂ ਸਰਸਾਂ ਪਾਰਟੀ ਆ ਉਹ ਕਿਸਾਨਾਂ ਵਾਸਤੇ ਵੀ ਸੋਸ਼ਲ ਫੈਮਿਲੀ ਖੜੀਆਂ ਕਰ ਰਹੀ ਹੈ ਤੇ ਉਹਨਾਂ ਨੂੰ ਵੀ ਆ ਜੀ ਵੀ ਉਹਨਾਂ ਨੂੰ ਲੋਕਾਂ ਨੂੰ ਪ੍ਰੂਫ ਕਰਨ ਵਾਸਤੇ ਵੀ ਇਹ ਨਾ ਕਿਸਾਨਾਂ ਨੂੰ ਜੀਏ ਕੋਈ ਕਿਸਾਨ ਜੀ ਨਾ ਹੈ ਧਰਮ ਬਾਕੀ ਕੋਰਟਾਂ ਵੀ ਹੁਣ ਜੋਰ ਲਾਇਆ ਕੋਰਟਾਂ ਵੀ ਕਹਿੰਦੇ ਸੋਸ਼ਲ ਸੈਂਸ ਦੀ ਗੱਲ ਨਹੀਂ ਕਰ ਸਕਦੇ ਉਹ ਵੀ ਤਾਲ ਕੋਰਟਾਂ ਦੇ ਵਿੱਚ ਵੀ ਉਹ ਵੱਡੀਆਂ ਵੱਡੀਆਂ ਤਾਲ ਇਹਨਾਂ ਨੂੰ ਖਤਮ ਕਰਨਾ ਚਾਹੀਦੀਆਂ ਜਿਹੜੀਆਂ ਪਾਰਟੀਆਂ ਨੇ ਬਖੀਰੋ ਤੇ ਪਹਿਨੀ ਸੀ ਗੱਲ ਕਰਦੇ ਸੀ ਬਾਦਲਾ ਦਾ ਬਿਜ਼ਨਸ ਹੈਗਾ ਤੇ ਬਹੁਤ ਬਿਜ਼ਨਸਾ ਹੋਰ ਵੀ ਹੋਣਗੇ ਭਗਵੰਤ ਮਾਨ ਦੀ ਪ੍ਰਾਪਰਟੀ ਦੇ ਲੋ ਵੀ ਉਹਨੇ ਕਿੰਨੇ ਸਾਲਾਂ ਦੀ ਕੀ ਲੱਭ ਕੇ ਭੇਜੋ ਮੈਨੂੰ ਅੰਕੜਾ ਕਿਹੜਾ ਮਹਿਲ ਬਣਾਇਆ ਤੇ ਕਿਹੜੀ ਬੱਸ ਚੱਲਦੀ ਹੈ ਤੇ ਕਿੰਨੀ ਜ਼ਮੀਨ ਖਰੀਦੀ ਹੈ ਫਿਰ ਆਪਾਂ ਗੱਲ ਕਰ ਲਾਂਗੇ ਯੋ ਹਾਂਜੀ ਹਾਂਜੀ ਤੁਸੀਂ ਦੇਖੋ ਦੀ ਕਿੰਨੀ ਪ੍ਰੋਪਰਟੀ ਸੀ ਅੱਜ ਜੋ ਅਸ਼ੋਕਾ ਹੋਟਲ ਤੇ ਬੈਠੇ ਉਥੇ ਆਪਣਾ ਲੋਕਾਂ ਦੀਆਂ ਗੱਲਾਂ ਕਰਦਾ ਵੀ ਅਸੀਂ ਕਰਦੇ ਆਂ ਜੀ ਲੱਭਦੇ ਆਂ ਓਕੇ ਪਤਾ ਕਰਦੇ ਰਾਜਾ ਸੰਸੀ ਅਵਤਾਰ ਸਿੰਘ ਜੀ ਲਾਈਨ ਨੰਬਰ 4 ਸਤਿਗੁਰਾਲ ਜੀ ਸਤਿ ਜੀ ਔਰ ਤੁਹਾਡਾ ਤੁਸੀਂ ਗੱਲਦਾ ਬੇਹ ਸੋਹਣੇ ਕਰਦੇ ਸਾਡੇ ਅਰਗਿਆ ਕਈ ਵਾਰੀ ਨਿਕੰਮਾ ਦਾ ਬੋਲ ਜਾਂਦੇ ਆ ਮੈਂ ਉਹ ਕਹਿੰਦਾ ਏਡਾ ਨਹੀਂ ਜੁੱਤੀ ਮਾਰਨੀ ਕਿਸੇ ਚੰਗੀ ਨਹੀਂ ਨਾਲ ਵੀ ਕਦੇ ਕਰਨੀ ਚਾਹੀਦੀ ਫਿਰ ਬੰਦਾ ਆਪ ਦੇਖ ਚਾਹੀਦਾ ਬੰਦੇ ਨੂੰ ਆਪਣੇ ਅਲ ਵਿੱਚ ਜਿਹੜੇ ਮੇਰੇ ਵਰਗੇ ਦਾ ਆਪਣਾ ਘਰ ਦੋ ਦੋ ਵਾਰੀ ਵਿਆਹ ਕੇ ਕਰਨਾ ਇੱਕ ਵੀ ਸਾਹਮ ਹੋਈ ਹੋਵੇ ਜੇ ਉਹ ਫਿਰ ਨਹੀਂ ਨਹੀਂ ਆਪਾਂ ਗੱਲ ਦੇ ਘਰ ਨਹੀਂ ਫਿਰ ਤਾਂ ਸਿਆਤ ਵਿੱਚ ਫਿਰ ਕੀ ਜਾ ਸਕਦਾ ਜੇ ਆਪਣਾ ਘਰ ਹੀ ਨਹੀਂ ਆਪਾਂ ਸਮਝਾਦੇ ਭਾਈ ਜੁੱਤੀ ਮਾਰਨ ਨੂੰ ਇਤਿਹਾਤ ਨਹੀਂ ਕਰਨਾ ਚਾਹੀਦਾ ਵੀ ਕਿਸੇ ਨਹੀਂ ਕਰਦੇ ਤੇ ਕਿਸੇ ਘਰ ਟੁੱਟਣ ਦਾ ਕਈਆਂ ਦਾ ਟੁੱਟਦੇਆਂ ਪਤਾ ਵੀ ਨਹੀਂ ਲੱਗਦਾ ਜਿਨ੍ਹਾਂ ਦੇ ਜੁੜੇ ਵੀ ਹੋਇਆ 90% ਘਾਟੋ ਕੋਲੇਸ਼ ਹੁੰਦਾ ਨਿਤ ਸਾਰਿਆਂ ਦੇ ਸੋ ਹੁਣ ਖੜੀ ਰਹਿੰਦੀ ਹੈ ਮੰਨੋ ਨਾ ਮੰਨੋ ਵਪਾਰਕ ਸੰਦੇਸ਼ ਅੱਜ ਕੇ 47 ਮਿੰਟ ਹੋਏ ਆ ਜੀ ਵਖਰੇਵੇਂ ਕੋਈ ਵੀ ਹੋ ਸਕਦਾ ਤੁਹਾਡੇ ਪਰ ਇਸ ਗੱਲ ਦੀ ਪ੍ਰੋੜਤਾ ਪਲੀਜ਼ ਨਾ ਕਰੋ ਤੁਸੀਂ ਇਹ ਜਿਹੜਾ ਹੱਥੋਂ ਪਾਈ ਆ ਜਾਂ ਡਲੇ ਜਾਂ ਜੀ ਜੁੱਤੀਆਂ ਉਮਰਾ ਦੇ ਤਕਾਜ਼ੇ ਸਾਡੀ ਸਭਿਆਦ ਦੇ ਵਿੱਚ ਇੱਜ਼ਤ ਦੇਣੀ ਫਰਜ਼ ਹੈ ਕੋਈ ਵੀ ਕਾਰਨ ਹੋ ਸਕਦਾ ਥੋੜਾ ਵਖਰੇਵਾ ਹੋਵੇ ਜੇ ਹੁਣ ਆਮ ਆਦਮੀ ਪਾਰਟੀ ਦੇ ਗੁੱਸੇ ਦੀ ਗੱਲ ਕੇਜਰੀਵਾਲ ਨੇ ਵੀ ਇਹੀ ਬਿਆਨ ਦਿੱਤਾ ਵੀ ਨਾ ਇਹ ਗੱਲ ਗਲਤ ਹੈ ਭਗਵੰਤ ਮਾਨ ਇੱਕ ਜਗ੍ਹਾ ਕਹਿ ਰਿਹਾ ਡਲੇ ਮੁੱਕ ਜਾਣੇ ਨੇ ਡਲੇ ਫੜੇ ਜਾਣੇ ਨੇ ਉਹ ਵੀ ਗੱਲ ਉੱਚੀ ਹੈ ਇਹ ਹੁਣ ਇਹ ਨਹੀਂ ਚਾਹੀਦੀ ਕਹਾਣੀ ਇਹ ਵਾ ਸਟੇਜ ਤੇ ਗੱਲ ਗੱਲ ਨਹੀਂ ਠੀਕ ਇਹ ਹੁੰਦੀ ਇਹ ਗੱਲ ਜਿਹੜੀ ਸਹੀ ਆ ਉਹ ਸਹੀ ਹੈ ਇੱਜ਼ਤ ਜਿਹੜੀ ਹੈ ਸਾਡੇ ਧਰਮ ਦੇ ਵਿੱਚ ਆਪਣੀ ਸੱਭਿਆਤਾ ਦੇ ਵਿੱਚ ਵੱਡੇ ਦੀ ਇੱਜ਼ਤ ਵਿਚਾਰਾਂ ਦਾ ਪਰਖੇਮ ਵੋਟਾਂ ਪਾ ਕੇ ਵਾਰ ਬਣਾਇਆ ਸੀਐਮ ਜਿਹੜੇ ਹੁਣ ਲੋਕੇ ਸੀ ਜੱਟ ਪਿੰਡਾਂ ਦੇ ਵੱਡੇ ਜਾਂਦੇ ਜੋ ਤੱਕੜੀ ਤੋਂ ਪੜਾ ਹੁੰਦੇ ਸੀ ਉਹ ਕਹਿੰਦੇ ਜਿਹੜੀ ਵੋਟ ਆ ਤੱਕੜੀ ਨੂੰ ਪਾਉ ਹਲੇ ਵੀ ਪਾਉਣਗੇ ਬਹੁਤ ਲੋਕ ਕਿਤੇ ਇਉਂ ਵੀ ਨਾਸ ਨਹੀਂ ਕਿਸੇ ਚੀਜ਼ ਦਾ ਹੋਣਾ ਠੀਕ ਹੈ ਵਰਗ ਗਰਮ ਹੈ ਪਰ ਇਸ ਗੱਲ ਨੂੰ ਉਤਸ਼ਾਹਤ ਨਾ ਕਰੋ ਪਲੀ ਗੁੱਸਾ ਜੇ ਕਿਉਂਕਿ ਜਦ ਤੇ ਤੇ ਆਪਣੇ ਤੇ ਹੱਥੋਂ ਪਾਈ ਫਿਰ ਬੰਦਾ ਇਸ ਤਰ੍ਹਾਂ ਨਹੀਂ ਸ਼ਰਦੇਰ ਸਿੰਘ ਜੀ ਲਾਈਨ ਨੰਬਰ 3 3 ਗੋਲ ਸਤੀਕਾਲ ਜੀ ਸਾਹਿਬ ਕਹਿੰਦੇ ਬਾਦਲ ਸਾਹਿਬ ਦੇ ਤੇ ਜਾਣ ਤੇ ਵੀ ਇਹ ਜੋ ਇਹਨਾਂ ਨੇ ਵੀ ਜਿਹਾ ਹੋਦਾ ਵੀ ਜਿਵੇਂ ਆਪਾਂ ਕਹਿ ਦਿੱਤਾ ਜੋ ਹੁੰਦਾ ਚੰਗਾ ਹੀ ਹੁੰਦਾ ਜੋ ਹੋਣਾ ਵਾ ਹੋ ਹੀ ਰਹਿਣਾ ਵਾ ਵੀ ਇਹ ਗੱਲ ਵੀ ਹੋ ਸਕਦੀ ਜੇ ਸਾਰੀ ਉਮਰ ਇਹਨਾਂ ਨੇ ਪੰਜਾਬ ਦੇ ਸੂਬੇ ਨਾਲ ਧੋਖਾ ਕੀਤਾ ਕੌਮ ਨਾਲ ਧੋਖਾ ਕੀਤਾ ਪਟੇ ਆ ਇਹਨਾਂ ਨੇ ਜਿਹਨਾਂ ਲੋਕਾਂ ਤੋਂ ਕੇ ਗੋਲੀਆਂ ਚਲਾਈਆਂ ਇਹਨਾਂ ਨੇ ਮੇਰੇ ਖਿਆਲ ਹੁੰਦਾ ਠੀਕ ਹੁੰਦਾ ਦੇਖੀ ਅੱਗੇ ਕੀ ਹੁੰਦਾ ਕਾਲ ਜੀ ਸਾਹਵਿੰਦਰ ਸਿੰਘ ਦੇ ਲਾਈਨ ਨੰਬਰ 4 ਸਤਿਆਪਾ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕਿਸੇ ਸਿਆਣੇ ਬਜ਼ੁਰਗ ਦੇ ਜੁੱਤੀ ਮਾਰਨੀ ਤਾਂ ਮਹਾਪਾਪ ਆ ਪਰ ਜਦੋਂ ਦਿੱਲੀ ਦੇ ਸੀ ਫਾਈਨੈਂਸ ਸਾਹਿਬ ਸਨਮਾਨਿਤ ਕਰਨ ਲਈ ਤਿਆਰ ਸੀ ਸ਼੍ਰੋਮੇ ਕਮੇਟੀ ਤਿਆਰ ਸਨਮਾਨਿਤ ਕਰਨ ਲਈ ਤਿਆਰ ਸੀ ਔਰ ਜਰਨੈਲ ਸਿੰਘ ਨੂੰ ਨੌਕਰੀ ਨੌਕਰੀ ਦੀ ਵੀ ਆਫਰ ਕੀਤੀ ਸੀ ਸੋ ਹੁਣ ਜੁੱਤੀ ਮਾੜੀ ਹੋ ਗਈ ਉਦੋਂ ਚੰਗੀ ਸੀ ਸਮਝ ਨਹੀਂ ਆਉਂਦੀ ਰਾਜਨੀਤੀ ਦੀ ਥੈਂਕ ਯੂ ਜੀ ਬਿਲਕੁਲ ਮੇਲਾ ਸਿੰਘ ਲਾਈਨ ਨੰਬਰ 5 ਮੇਲਾ ਸਿੰਘ ਜੀ ਹਾਂਜੀ ਭਾਈ ਜੀ ਜੀ ਬਾਈ ਜੀ ਪਹਿਲੇ ਮੈਂ ਮਾਲ ਸਾਬ ਦਾ ਪੂਰਾ ਵੱਡਾ ਹੂੰ ਹੂੰ ਮੈਂ ਜਿੰਨਾ ਜਿਹੜਾ ਨਾ ਵਾਰੀ ਰੇਡੀਓ ਤੇ ਮੇਰੀ ਬਾਤ ਸੁਣਦੇ ਤੁਹਾਨੂੰ ਜੀ ਹਲੋ ਬਿਲਕੁਲ ਸੁਣ ਰਹੀ ਆ ਜੀ ਅੱਛਾ ਜੀ ਉਹ ਬੀਨਤੀ ਹੈ ਕਈ ਵਾਰੀ ਨਾ ਇਹ ਜਿਹੜੇ ਕਹਿੰਦੇ ਹੁੰਦੇ ਆ ਡਾਂਡੀ ਸਾਹਿਬ ਆਪਣੇ ਜਿਹੜੇ ਕੁੜੀਆਂ ਮੁੰਡੇ ਬਾਹਰੋਂ ਆਉਂਦੇ ਆ ਬਈ ਆਉਣੇ ਨਹੀਂ ਚਾਹੀਦੇ ਫਰਾਂ ਇਹ ਗੱਲ ਮੈਨੂੰ ਬਹੁਤ ਗਲਤ ਦੂਜੀ ਗੱਲ ਟੈਕਸੀ ਵਾਲ ਮੈਂ ਟੈਕਸੀ ਚਲਾਉਣਾ ਜੇ ਸਾਨੂੰ ਵੀ ਮੈਨੂੰ ਬੜਾ ਸਵਾਦ ਆਉਂਦਾ ਪਰ ਜਿਹੜਾ ਬੱਚਿਆਂ ਬਾਰੇ ਬਾਹਰ ਜਿਹੜੇ ਆਉਂਦੇ ਆ ਹੋਰ ਭਰਾ ਕਈ ਕਹਿੰਦੇ ਹੁੰਦੇ ਆ ਕਿਉਂ ਆਉਂਦੇ ਬਹੁਤ ਮੁਲਕ ਪਿਆ ਹਜੇ ਇਹ ਉਹਨਾਂ ਨੂੰ ਉਹ ਵੀ ਭਾਈ ਕਰ ਤੁਹਾਡੀ ਗੱਲ ਸੁਣ ਲਈ ਜੀ ਗੱਲ ਤੁਹਾਡੀ ਸੁਣ ਲਈ ਧੰਨਵਾਦ ਤੇ ਅਗਲੀ ਜਿਹੜੀ ਕੱਲ ਪ੍ਰਾਪਰਟੀ ਅਸੈਸਮੈਂਟ ਦੀ ਗੱਲ ਹੋਈ ਸੀ ਸਿਟੀ ਅਫਸਰੀ ਦੇ ਵਿੱਚੋਂ ਕੋਸ਼ਿਸ਼ ਮੈਂ ਕੀਤੀ ਸੀ ਕਿ ਉਹਨਾਂ ਦਾ ਕੁਝ ਇਹਦੇ ਬਾਰੇ ਪਤਾ ਲੱਗ ਸਕੇ ਉਹਨਾਂ ਨੇ ਕਿਹਾ ਕਿ ਅਸੀਂ ਰੇਡੀਓ ਤੇ ਆ ਕੇ ਦੱਸਾਂਗੇ ਸਾਰਾ ਕੁਝ ਵੇਖਦੇ ਕਿਹੜੇ ਮੰਡੇ ਜਾਂ ਟਿਊਜ਼ਡੇ ਕਿਹਾ ਜਿਹਦੇ ਵਿੱਚ ਮੇਰ ਹੈਪਨਰ ਟੌਮ ਗੈਲ ਅਕੇ ਦੱਸਣਗੇ ਕਿ ਅਸੈਸਮੈਂਟ ਦਾ ਕਿਵੇਂ ਹੋ ਜਿਹੜੀ ਮੈਨੂੰ ਇਨਫੋਰਮੇਸ਼ਨ ਮਿਲੀ ਆ ਉਹ ਕਹਿੰਦੇ ਵੀ ਇਸ ਤਰ੍ਹਾਂ ਨਹੀਂ ਹੋਏਗਾ ਕਿ ਤੁਹਾਡੀ ਅਸੈਸਮੈਂਟ ਜਿੰਨੀ ਆਈ ਆ ਉਹਦੇ ਤੇ ਅਸੀਂ ਟੈਕਸ ਲਾਵਾਂਗੇ ਅਸੀਂ ਟੋਟਲ ਅਸੈਸਮੈਂਟ ਵੈਲਿਊ ਨੂੰ ਦੇਖ ਕੇ ਵੀ ਕਿੰਨੀਆਂ ਸਾਰੇ ਸ਼ਹਿਰ ਦੇ ਵਿੱਚ ਉਹਦੀ ਅਸੈਸਮੈਂਟ ਦੀ ਟੋਟਲ ਵੈਲਿਊ ਕਿੰਨੀ ਆ ਸਾਨੂੰ ਬਜਟ ਕਿੰਨਾ ਚਾਹੀਦਾ ਉਹਦੇ ਨਾਲ ਅਸੀਂ ਉਹਦੀ ਰੇਸ਼ਿਓ ਲਾਉਨੇ ਆ ਫਿਰ ਤੇ ਜਿਹੜਾ ਪਿਛਲੀ ਵਾਰ ਕੱਲ ਆਪਾਂ ਗੱਲ ਕੀਤੀ ਸੀ ਜਿਸ ਦੇ ਵਿੱਚ ਰੇਸ਼ਾ ਉਹਨਾਂ ਨੇ ਦੱਸਿਆ ਸੀ ਵੀ ਬਜਟ ਤਾਂ ਵਧਾ ਲੈਣਗੇ ਫਿਰ ਬਜਟ ਜੇ ਵੱਧ ਗਿਆ ਬਜਟ ਵਧਣ ਤੋਂ ਬਾਅਦ ਫਿਰ ਪੈਸੇ ਵਧ ਲੈਣਗੇ ਔਰ ਹਊਬਾ ਜ਼ਰੂਰ ਕੇ ਜਾਣਗੇ ਕਿਉਂਕਿ ਜਦ ਤੱਕ ਉਹਨਾਂ ਦਾ ਪਤਾ ਨਹੀਂ ਲੱਗਦਾ ਕਿੰਨਾ ਪਰਸੈਂਟ ਕਰ ਰਹੇ ਜਦ ਤੱਕ ਇਸ ਨੂੰ ਪਰ ਇੱਕ ਗੱਲ ਨਵੀਂ ਚੀਜ਼ ਅਸੈਸਮੈਂਟ ਵੈਲਿਊ ਦੇ ਵਿੱਚ ਸਮਝਾਈ ਹੈ ਜੇ ਤੁਹਾਡੇ ਕੋਲ ਤਿੰਨ ਚਾਰ ਸਾਲਾਂ ਦੇ ਪਿਛਲੇ ਨੋਟਿਸ ਪਏ ਆ ਕੀਮਤ ਜ਼ਮੀਨ ਦੀ ਤਾਂ ਵਧੀ ਹੋ ਸਕਦੀ ਹੈ 4 ਲੱਖਾਂ ਦੀ 5 ਦੀ ਹੋਗੀ 6 ਦੀ ਹੋਗੀ ਪਰ ਜਿਹੜੀ 2006 ਦੇ ਵਿੱਚ 7 ਚ 8 ਚ ਬਿਲਡਿੰਗ ਬਣੀ ਹੈ ਉਹ ਤਾਂ ਘਟਣੀ ਚਾਹੀਦੀ ਹੈ ਘਰ ਦੀਆਂ ਕੀਮਤ ਜਿਹੜੀ ਉਪਰ ਕੰਸਟਰਕਸ਼ਨ ਬਿਲਡਿੰਗ ਦੀ ਕੀਮਤ ਵੀ ਵਧਾਈ ਜਾਂਦੇ ਐਸੈਸਮੈਂਟ ਮੈਨੂੰ ਨਹੀਂ ਸਮਝ ਲੱਗਦੀ ਇਹ ਕਿੱਥੋਂ ਇਹ ਅਰਥ ਸ਼ਾਸਤਰੀ ਆਲੇ ਨੇ ਜਿਹੜੇ ਐਸੈਸਮੈਂਟ ਸਾਡੀ ਕਰਦੇ ਐ ਘਰ ਦੀ ਜਿਹੜੀ ਕੀਮਤ ਹੈ ਜਿਹੜਾ 10 ਸਾਲ ਪੁਰਾਣਾ ਘਰ ਆ ਉਹਦੀ ਬਿਲਡਿੰਗ ਦੀ ਕੀਮਤ ਘਟੂਗੀ ਜਿਹੜੀ ਜਾਂ ਉਹਦੀ ਵਧੂਗੀ ਬਿਲਡਿੰਗ ਦੀ ਕੀਮਤ ਵੀ ਵੱਧ ਰਹੀ ਹੈ ਮਿੱਟੀ ਦੇ ਨਾਲ ਨਾਲ ਜ਼ਮੀਨ ਦੀ ਲੋੜ 4 ਦੀ ਜਗਾ 6 ਦੀ ਹੋਗੀ ਪਰ ਹੁਣ ਜ਼ਮੀਨ ਤਾਂ ਠੀਕ ਹੈ ਪਰ ਜਿਹੜਾ ਘਰ 2010 ਚ ਬਣਿਆ 2016 17 ਦੇ ਵਿੱਚੋਂ ਸਸਤਾ ਹੋਣਾ ਚਾਹੀਦਾ ਜਾਂ ਬਿਲਡਿੰਗ ਦੀ ਵੀ ਕੀਮਤ बढਣੀ ਚਾਹੀਦੀ ਹੈ ਅਸੈਸਮੈਂਟ ਚ ਬਿਲਡਿੰਗ ਦੀ ਵੀ ਕੀਮਤ ਨਾਲੇ ਵਧਾਈ ਪਈ ਹੈ ਖੋਲ ਕੇ ਵੇਖਿਓ ਪਿਛਲੇ 4 ਸਾਲ 5 ਸਾਲ ਦੀ ਅਸੈਸਮੈਂਟਾਂ ਕੱਢਿਓ ਤੇ ਫਿਰ ਉਹਨੂੰ ਵੇਖਿਓ ਫਰਾਨੀ ਹੋਗੀ ਬੈਸ ਨਿਊਟਨ ਦੇ ਵਿੱਚੋਂ ਚੀਨ ਦੇ ਵਿੱਚ ਕਪਲਾ ਕਰਕੇ ਆਏ 10 ਮਿਲੀਅਨ ਡਾਲਰ ਲਿਆ ਕੇ ਇੱਕ ਚਾਈਨੀਜ਼ ਨੇ ਚਾਰ ਘਰ ਲੈ ਕੈਸ਼ ਉਹਦੇ ਪਿੱਛੇ ਚਾਈਨਾ ਸਰਕਾਰ ਬਣੀ ਲੱਖ ਦੇ 13-13 ਲੱਖ ਦੇ ਘਰਾਂ ਦੀ ਅਸੈਸਮੈਂਟ ਆ ਗਈ ਪਹਿਲਾਂ ਉਹ ਜਿਹੜਾ 14-15 ਲੱਖ ਦਾ ਘਰ ਸੀ ਉਹ 22 ਲੱਖ ਦਾ ਕਰਤਾ ਪੰਜ-ਛਤ ਉਹ ਏਰੀਏ ਦੀਆਂ ਪਰ ਇਹ ਕੌਣ ਕਰੂ ਇਹ ਸੂਬਾ ਕਿਵੇਂ ਸੋਚੂ ਹੁਣ ਤਾਂ ਲਾਤਾ 15% ਟੈਕਸ ਹੈ ਪਹਿਲਾਂ ਜਿਹੜੀ ਇੱਕ ਬਿੰਦ ਦੇ ਵਿੱਚ 10-10 ਆਫਰਸ ਆਉਂਦੀਆਂ ਸੀ ਉਹਦੇ ਬਾਰੇ ਸੂਬੇ ਨੂੰ ਨਹੀਂ ਪਤਾ ਜਦ ਤੱਕ ਆਪਣੇ ਚਹੇਤਿਆਂ ਦੇ ਕਾਂਡੋ ਨਹੀਂ ਵਿਕੇ ਜਦ ਤੱਕ 15% ਲੱਗਿਆ ਨੀ ਤੇ ਫਿਰ ਰਾਤੋਂ ਰਾਤ ਲਾ ਦਿੱਤਾ ਤੇ ਆਪ ਜਾ ਕੇ ਉੱਥੇ ਜਾ ਕੇ ਲੋਕਾਂ ਨੂੰ ਸੱਦ ਕੇ ਲਿਆਉਣੇ ਹੋ ਪਰ ਉਹ ਜਿਹੜੀ ਬਲੈਕ ਮਨੀ ਆ ਰਹੀ ਹੈ ਉਹਦੀ ਪੈੜ ਕੌਣ ਲੱਪੂਗਾ ਇਸ ਬਾਰੇ ਕੀ ਅਸੈਸਮੈਂਟ ਕਿੰਨੀ ਹੈ ਜਿਹੜਾ ਦੱਸਿਆ ਕਿਸੇ ਨੇ ਸਿਟੀ ਅਫੀਸ਼ੀਅਲਸ ਦੇ ਵਿੱਚੋਂ ਪਤਾ ਲੱਗਿਆ ਸੀ ਕਿ ਇਸ ਤਰ੍ਹਾਂ ਨਹੀਂ ਹੋਏਗੀ ਵੀ ਤੁਹਾਡਾ 6 ਲੱਖ ਦਾ ਘਰ 9 ਲੱਖ ਦਾ ਹੋਊਗਾ ਤੇ ਸੇਮ ਰੇਸ਼ਿਓ ਤੇ ਅਸੀਂ ਤੁਹਾਡਾ ਜਿਹੜਾ ਪਿਛਲੇ ਸਾਲ ਦਾ ਮੰਨ ਲਓ 2000 ਆਇਆ ਤੇ ਉਹਨੂੰ ਡੇਡਾ ਕਰਕੇ ਹੁਣ ਉਹਨੂੰ ਜੀ 3000 ਕਰਦੀਏ ਕਹਿੰਦੇ ਇਸ ਤਰ੍ਹਾਂ ਹੀ ਹੋਊਗਾ ਅਸੀਂ ਟੋਟਲ ਵੈਲਿਊਜ਼ ਅਸੈਸਡ ਵੈਲਿਊ ਜਿਹੜੀ ਆਈਆਂ ਨੇ ਉਹਨਾਂ ਨੂੰ ਜੋੜਾਂਗੇ ਜੋੜਨ ਤੋਂ ਬਾਅਦ ਸਾਡਾ ਕਿੰਨਾ ਬਜਟ ਹੈ ਉਹ ਪਰਸੈਂਟੇਜ ਲਾਵਾਂਗੇ ਮਿਲ ਰੇਟ ਕਹਿੰਦੇ ਸੀ ਉਸ ਸ਼ਾਇਦ ਫਿਰ ਵੀ ਪਤਾ ਕਰਾਂਗੇ ਜਿਆਦਾ ਆਉਣਗੇ ਕੋਲ ਬੈਠਣਗੇ ਤੇ ਫਿਰ ਉਹਨਾਂ ਤੋ ਸਾਰੇ ਚੀਜ਼ਾਂ ਪੁੱਛਾਂਗੇ ਕਿ ਆਹਾ ਹਾ ਮੁਸ਼ਕਲਾਂ ਇਹਨਾਂ ਦੇ ਜਵਾਬ ਦਬੋ ਵਪਾਰਕ ਸੰਦੇਸ਼ ਬੀਸੀ ਅਸੈਸਮੈਂਟ ਦੇ ਬਾਰੇ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਉਸ ਨੇ ਉਸ ਧਮਕ ਹੈ ਵਿਕਟੋਰੀਆ ਵੀ ਪੈ ਰਹੀ ਹੈ ਪਰ ਗੱਲ ਬਹੁਤ ਵਧੀਆ ਹੈ ਕੱਲ ਕਾਲਰ ਦੱਸ ਕੇ ਗਏ ਸੀ ਲੋਕਲ ਆਪਣੇ ਐਮਐਲ ਨੂੰ ਕੰਟੈਕਟ ਕਰੋ ਤੁਹਾਡਾ ਜੇ ਮਸਲਾ ਉੱਪਰ ਨਹੀਂ ਜਾਂਦਾ ਤੇ ਮਈ ਦੇ ਵਿੱਚ ਵੋਟਾਂ ਆਉਂਦੀਆਂ ਜਿਹੜੇ ਵਧੀਆ ਨੇ ਮਨਿਸਟਰ ਕੇ ਅੰਗਰੇਜ਼ੀ ਬੋਲਦਾ ਉਸ ਨੂੰ ਸੁਣਿਓ ਇਹ ਮਲਮਾ ਚੜੀਆਂ ਗੱਲਾਂ ਸੋਨਾ ਪਿੱਤਲ ਸੋਨੇ ਚ ਲੁਕਿਆ ਗੱਲਾਂ ਨਹੀਂ ਚੱਲਣੀਆਂ ਹੁਣ ਬਿਲਕੁਲ ਐਂਡੀਪੀ ਵਾਲਿਆਂ ਦਾ ਵੀ ਕੰਮ ਸਹੀ ਨਹੀਂ ਹੈ ਇਹਨਾਂ ਨੇ ਵੀ ਪਾਰਦਰਸ਼ੀ ਖਤਮ ਹੋ ਗਈ ਗ੍ਰੀਨ ਟੈਂਪਰ ਤੁਸੀਂ ਵੇਖ ਰਿਹਾ ਨਾਮੀਨੇਸ਼ਨ ਚ ਇਹ ਕਿਹੜਾ ਚੰਦ ਚਾੜਨ ਲੱਗੇ ਹੋਇਆ ਪਹਿਲਾਂ ਆਪਣੀਆਂ ਬਣਵਾ ਕੇ ਵੋਟਾਂ ਹੁਣ ਲੋਕਾਂ ਲਈ ਨਹੀਂ ਓਪਨ ਹੋਣਾ ਜੇ ਜਿਵੇਂ ਮੈਨੂੰ ਦੱਸਿਆ ਗਿਆ ਕਿ 90 ਦਿਨਾਂ ਦਾ ਸਮਾਂ ਚਾਹੀਦਾ ਫਿਰ ਨਾਮਿਨੇਸ਼ਨ ਅਪ੍ਰੈਲ ਕੇ ਫੇਰ ਨੂੰ ਪਵਾ ਕੇ ਸੂ ਨੂੰ ਐਂ ਤੇ ਉਹ ਕਰਦੀ ਆ ਤੁਹਾਡਾ ਧੰਨਵਾਦ ਜੀ ਤੁਹਾਡਾ ਗੁਤਾ ਸਿੰਘ ਸ਼ਾਹ ਉਹਨਾਂ ਦੀ ਉਹ ਗਰਾਮ ਸਿਆ ਤੈਨੂੰ ਉਹ ਤੈਨੂੰ ਰੱਬ ਚੱਕ ਲੈ ਓਠੋ ਓਠੋ ਡੂਮਦਿਆ ਟਬਰਾ ਬਾਹਰ ਜਾ ਕੇ ਬੈਠੋ ਦੇਖੋ ਜਾ ਕੇ ਆ ਗਏ ਸ਼ਾਮ ਸਿੰਘ ਨੇ ਜਿਹਨੂੰ ਗੁਲਾਬਾ ਵੀ ਪਿੰਡ ਚ ਤੇ ਹੱਥੜ ਮਾਰੀ ਭਰਥੂ ਪਾਤਾ ਕੰਧਾਂ ਚ ਵੱਜਦਾ ਫਿਰੇ ਹਾਲੇ ਦਿਨ ਦੀ ਲੋ ਵੀ ਨਹੀਂ ਸੀ ਲੱਗੀ ਠੜੀਆਂ ਗਲੀਆਂ ਕੰਧਾਂ ਨਾਲ ਉਸ ਦੀ ਬੂਤ ਹਾਈ ਟਕਰਾ ਕੇ ਉੱਪਰ ਉੱਠ ਰਹੀ ਸੀ ਗਲੀਆਂ ਚ ਹਾਲੀ ਤਾਵਾ ਟਾਵਾ ਹੀ ਬੰਦਾ ਦੇਖਦਾ ਸੀ ਨਾੜੀਆਂ ਪਾ ਕੇ ਲੋ ਖੇਤਾਂ ਨੂੰ ਜਾਦੇ ਪਛੇਤੇ ਜਾਂ ਗੁਰੂ ਸਵਾਰੇ ਕਣਕ ਦੀ ਬਜਾਈ ਕਰਿਓ ਉੱਠ ਖੜਾ ਮਰ ਗਏ ਓ ਤੁਸੀਂ ਮਰਾਸੀਆਂ ਦੇ ਆ ਟੱਬਰਾ ਓਏ ਖੜੋ ਉੱਠ ਨੇ ਚੋਰ ਝਾਤ ਗਬਲੀ ਕੰਨ ਕਰਦਾ ਕੀ ਆ ਬਾਹਗਰੂ ਬਾਹਗਰੂ ਜਮਾ ਹੀ ਰਹਿ ਆਈ ਕੱਖ ਨਹੀਂ ਦਮਰੂ ਵਾਂਗੂ ਸਿਰ ਹਿਲ ਰਿਹਾ ਸੀ ਹੱਥ ਦੇ ਵਿੱਚ ਸੋਟੀ ਸੀ ਗੁੱਸੇ ਨਾਲ ਚੀਕਦਾ ਆਪਣੀ ਘਰ ਵਾਲੀ ਦੇ ਮੱਜੇ ਵਾਲਾ ਓਲਿਆ ਨਹੀਂ ਕਰਤਾਰੋ ਇਹ ਕਰਤਾਰੋ ਗੋ ਸਵਾਰਿਆ ਚਬਰਾ ਉੱਠ ਦੇਖੋ ਬਾਉੜੀ ਮੈਂ ਕਲਪਦਾ ਫਿਰਦਾ ਕੰਜਰ ਪਾਸਾ ਦੀ ਸੋਟੀ ਨਾਲ ਜੀ ਕਰੇ ਮੱਥੇ 'ਚ ਮੁੜ ਦੇ ਕਿਣਕੇ ਫੋਟੋਸ ਦੀਆਂ ਸਰੀਰ ਗਮ ਦੇ ਦੁੱਖ ਨਾਲ ਹੋਰ ਝੁਕ ਰਿਹਾ ਸੀ ਦੋਵੇਂ ਹੱਥ ਸੋਟੀ ਦੇ ਨੁਗਗੇ ਨੂੰ ਜਿਗਾ ਕੇ ਸਾਹ ਕੱਢਦਾ ਜਿਵੇਂ ਝੂਕਣਾਂ ਟੁੱਟਿਆ ਹੋਵੇ ਗਰਨਾਮ ਤੇ ਉਹਦੀ ماں ਕਰਤਾ ਰੋਂਦਸ ਕਿਉ ਪਿੰਡ ਨੂੰ ਚੜ ਗਿਆ ਉਹ ਠਰੀਆਂ ਗਲੀਆਂ ਚ ਖੌਰੂ ਪੋਈ ਫਿਰਦਾ ਇਹ ਟੁੱਟੇ ਛਤਰਾਂ ਗਲੀਆਂ ਚ ਧੂੜ ੜਾਤੀ ਸਾਰੇ ਤੁਰਦੇ ਘਰ ਚ ਅੱਖਾਂ ਦੇ ਫਲਕਾਰੇ ਚ ਫਿਰ ਗਿਆ ਬੇਲੀ ਵਾਂਗੂ ਨੂੰ ਹੌਂਕੜੀ ਚ ਗਈ ਸੀ ਆਜੋ ਸਾਥ ਚ ਆਜੋ ਮੈਂ ਤਾਂ ਪੱਟਿਆ ਗਿਆ ਤੁਸੀਂ ਨਾ ਪੱਟੇ ਜਾਓ ਪਹੁੰਚੋ ਸਾਥ ਚ ਮੈਂ ਹੁਣ ਆਇਆ ਖੇਤੋਂ ਸਿਕਰੀਆਂ ਹੀ ਰਹਿੰਦੀਆਂ ਨਰਮਾ ਚੋਕੇ ਲੈ ਗਿਆ ਰਾਤ ਕੋਈ ਮੈਂ ਤਾਂ ਗਰੀਬ ਪੱਟਿਆ ਗਿਆ ਉਹ ਤੁਸੀਂ ਨਾ ਪਿੰਡੋਂ ਪੱਟਿਆ ਜਾਓ ਓਏ ਆਜੋ ਓਏ ਲੋਕੋ ਆਜੋ ਹਰੇਕ ਨੂੰ ਕਹਿੰਦਾ ਸਾਰਾ ਫਿਰ ਸੱਤ ਇਕੱਠਾ ਕਰ ਲਿਆ ਸਿਆਲ ਮਾਰੋ ਮਾਰ ਕਰਦਾ ਸੀ ਠਾਰੀ ਦਿਨ ਵੱਧ ਸੀ ਨਰਮੇ ਦੀ ਕਮਜ਼ੋਰ ਜੀ ਪਹਿਲੀ ਚੋਣੀ ਨਰਮੇ ਕਪਾਹ ਚੁੰਣੀ ਦੂਜੇ ਦੀ ਪਿਆਰੀ ਸੀ ਖੇਤਾਂ ਦੇ ਖੇਤ ਹੱਸ ਰਹੇ ਸੀ ਸਾਰਿਆਂ ਭਰੀ ਰਾਤ ਚੰਦ ਦੀ ਪਿਆਰੀ ਚਾਨਣੀ ਚ ਬੱਗੇ ਬੱਗੇ ਖੇਤ ਬਹੁਤ ਸੁੱਚਾ ਨਜ਼ਾਰਾ ਦੇ ਰਹੇ ਸੀ ਖੇਤਾਂ ਜੇਕ ਸੰਗੀਤ ਲਹਿਰ ਤੇ ਮਸਤੀ ਸੀ ਗਲਾਬੀ ਠੰਡ ਦੇ ਨਸ਼ੇ ਚ ਮਸਤ ਅਸਾਂ ਲੱਦੀ ਖੁਸ਼ਬੂ ਨਾਲ ਮਹਿਕੀ ਮਸਤ ਖੇਤ یوں ਲੱਗਦੇ ਜਿਵੇਂ ਕੋ ਕਾਫ ਦੀਆਂ ਪਹਾੜੀਆਂ ਹੁਣ ਕੋਠਿਆਂ ਤੇ ਚੜ ਕੇ ਲੋਕ ਨਰਤਮੇਨ ਜਾ ਵੇਖਦੇ یوں ਲੱਗਦਾ ਵੀ ਚੰਦ ਧਰਤੀ ਤੇ ਉੱਤ ਕੇ ਜਫੀਆਂ ਪਾਰਿ ਪਿਛਲੇ ਸਾਲ ਸਰਪੰਚ ਨੇ ਹਿੰਮਤ ਕਰਕੇ ਨਰਮੇ ਖਿੰਡੇ ਸ਼ੁਰੂ ਚ ਨਰਮੇ ਦਾ ਚੋਰ ਡੱਕ ਦਿੱਤਾ ਵੇੜਾ ਹੰਕਾਰਿਆ ਮੁੰਡਾ ਸੀ ਸਾਲਾਂ ਤੋਂ ਤੜੀ ਨਾਲ ਨਰਮਾ ਚੁਗਦਾ ਹੱਥ ਸੱਤ ਹੱਥੀ ਡਾਂਗਦੇ ਤੇ ਸੱਲਾ ਉਹਨੇ ਸੀ ਜਦ ਪਰਦਾ ਕੋਈ ਉਹਨੂੰ ਹੱਥ ਪਾਉਂਦਾ ਮਿਰਗਾ ਵਾਂਗੂ ਚੁੰਗੀਆਂ ਭਰਦਾ ਨਰਵੇਂ ਦੇ ਖੇਤਾਂ ਦੀ ਲਾਟ ਵਾਂਗੂ ਨਿਕਲ ਜਾਂਦਾ ਸਰਪੰਚ ਨੇ ਹਿੰਮਤ ਕਰਕੇ ਉਹਦਾ ਸਦਾ ਵਾਸਤੇ ਘੋਗਾ ਚਿੱਟ ਕਰਤਾ ਮਾਰਤਾ ਕੇਸ ਨਾ ਬਣਤਾ ਬੇੜੇ ਦੇ ਕੁਝ ਬੰਦਿਆਂ ਨੇ ਕੇਸ ਚੁੱਕਿਆ ਉਹ ਵੀ ਕਹਿੰਦੇ ਸੀ ਸਰਪੰਚ ਨੇ ਤਾਂ ਮਾਰਿਆ ਕਿਉਂਕਿ ਚੋਣਾ ਚ ਸਰਪੰਚ ਦੀ ਡਟਕੇ ਨੇ ਵਿਰੋਧਤਾ ਕੀਤੀ ਹੈ ਉਹ ਐਵੇਂ ਨਹੀਂ ਮਾਰਿਆ ਵੋਟਾਂ ਪਾਉਂ ਖੜਦਾ ਸੀ ਬਰਾਬਰ ਸਰਪੰਚ ਨੂੰ ਆਇਆ ਸੀ ਵੀ ਮੱਝ ਵੀ ਤੇ ਮੇਰੇ ਬਰਾਬਰ ਤਾਂ ਮਾਰਿਆ ਤੇ ਤਾਹੀਨੀ ਕੇਸ ਬਣਿਆ ਗਾਹੇ ਨਹੀਂ ਉਹਨੂੰ ਮੁਸ਼ਕਾਂ ਦੇ ਕੇ ਮੂੰਹ ਉਹਦਾ ਬੰਨ ਕੇ ਘਰੋਂ ਚੁੱਕਿਆ ਤੇ ਖੇਤਾਂ 'ਚ ਮਾਰ ਕੇ ਸੜਤਾ ਕਾਹ ਨੂੰ ਚੋਗਦਾ ਸੀ ਉਹ ਖੇਤ ਪਿੰਡਾਂ 'ਚ ਗੱਲਾਂ ਹੁੰਦੀਆਂ ਲੋਕਾਂ ਦਾ ਕਿਹੜਾ ਮੂੰਹ ਫੜਨ ਪਿਛਲੇ ਸਾਲ ਕੋਈ ਚੋਰੀ ਨਾ ਹੋਈ ਕਿਸਦਾ ਖੇਤ ਨਾ ਚੁਣਿਆ ਲੋਕ ਫੁੱਟੀ ਫੁੱਟੀ ਚੁਣ ਕੇ ਘਰੇ ਲਿਆਏ ਲੋਕ ਸਰਪੰਚ ਦੇ ਗੁਣ ਗੌਦਨਾ ਸਰਪੰਚ ਰੱਬ ਦਾ ਰੂਪ ਹੈ ਦਰਵਾਜ਼ੇ ਬੈਠੇ ਕਈ ਕਰਦੇ ਜਿਹੜੇ ਚੰਗਾ ਵੇਚ ਕੇ ਆ ਕੇ ਆਰਤੀ ਦੇਉਂ ਨਵੇਂ ਪ੍ਰਾਣੇ ਕਾਗਜ਼ ਕਰਕੇ ਅਧਿਆ ਲੈ ਕੇ ਆ ਕੇ ਹੈ ਬਈ ਰੱਬ ਇਹ ਹੋਇਆ ਬੈਠਾ ਆ ਜਾ ਮੇਰੇ ਵਾਲੇ ਪਾਸੇ ਆ ਜਾ ਆਪਣੇ ਵਾਲੇ ਛਤੜੇ ਦੇ ਥੱਲੇ ਚਲਦੇ ਆ ਉਹ ਜੀ ਕੱਪ ਚ ਪਾਈ ਵੀ ਹੈ ਲੀਕ ਕਰਦੀ ਹੈ ਜਦ ਮੂਹ ਤੋਂ ਜਾਂਦੀ ਹੈ ਸੌ ਖਾਲਾ ਇਹ ਕੀ ਰਾਤ ਬਣਾਈਆ ਰਾਤ ਇੱਧਰ ਨੂੰ ਆ ਜਾ ਕਰਤਾਰ ਹੋ ਗੁੱਸੇ ਹੋ ਮੈਂ ਦਾ ਵੇ ਹੁਣ ਘਰ ਨੂੰ ਜਾਣਾ ਪੈਸਾ ਬਹੁਤਾ ਰਗਮ ਆ ਜਾ ਕੇ ਕਰੇ ਇਹ ਜੀਆਂ ਗੱਲਾਂ ਹੁੰਦੀਆਂ ਪਰ ਇਸ ਸਾਲੇ ਬਿਮਾਰੀ ਹਿਲਪੀ ਖਾਨਦਾਰ ਬਹੁਤ ਸਖਤ ਰਾਤਾਂ ਨੂੰ ਢੇੜੇ ਮਾਰਦਾ ਉਹਦੀ ਹਿੰਮਤ ਕਰਕੇ ਪਿੰਡ ਚ ਆਉਣਾ ਚਾਹੇ ਇਸ ਪਿੰਡ ਚ ਹਿਲਜੁਲ ਸੀ ਜਿੱਦਣ ਦਾ ਸਰਪੰਚ ਹਜੂਰ ਸਾਹਿਬ ਨੂੰ ਗਿਆ ਉਦੋਂ ਦੇ ਚੋਰ ਪਿੰਡ ਚ ਆ ਬੜੇ ਜਾਨ ਬੜੇ ਚੱਕਰ ਤੱਕਾਂ ਕਰਦਾ ਰਿਹਾ ਪਰ ਚੱਕਰ ਤੱਕਾਂ ਕਰਕੇ ਕਈ ਸਾਲ ਕੱਢ ਤੇ ਸੁੱਖ ਉਹਦੇ ਲੋਹਣੀ ਸੀ ਮਗਰਲੇ ਕਤਲ ਦੀ ਪਿੰਡ ਦੇ ਪੈਂਚਿਆਂ ਨੂੰ ਇਕੱਠਿਆਂ ਕਹਿੰਦਾ ਮੈਂ ਚੱਲਿਆ ਜੂਰ ਸਾਹਿਬ ਸਨਾਨ ਕਰਨਾ ਤੇ ਛੋ ਪਿੰਡ ਤੁਹਾਡੇ ਜਿੰਮੇ ਆ ਖਬਰਦਾਰ ਹੋ ਜਿਓ ਰਫਨਾ ਆਪਣੀਆਂ ਫੁੱਲ ਫੇਰ ਕੇ ਰੱਖਿਓ ਚੋਰ ਨਾ ਕਿਤੇ ਪੈ ਜਾਣ ਪਿੱਛੇ ਮੇਰੀ ਕੀਤੀ ਕਰਾਈ ਖੂਹ ਚ ਪਾ ਦੂੰ ਦੋ ਸਾਲ ਨੂੰ ਇਲੈਕਸ਼ਨ ਆ ਕਿਤੇ ਮੇਰਾ ਖਰਾਬ ਕਰਦੇ ਹੂੰ ਕੰਮ ਸਵੇਰੇ ਚਾਹ ਦੇ ਨਾਲ ਟਾਂਕ ਕੇ ਸਰਪੰਚ ਪਿਆਰ ਹੋਇਆ ਬੈਠਾ ਸੀ ਪੂਰਾ ਗੱਲ ਸੁਣ ਲਿਓ ਨਾਲੇ ਐਵੇਂ ਨਾ ਬਰਾਨ ਕਰਦੇ ਹੋ ਪਿੱਛੋਂ ਤੂੰ ਗੱਲ ਸੁਣੋ ਪਖਰਾ ਦਾ ਪੈਂਚ ਸੀ ਜਿਹਨੂੰ ਥਾਣੇ ਭੇਜਦਾ ਖਿਆਲ ਰੱਖੀ ਪਿੱਛੋਂ ਇਹ ਆ ਨਵੀਂ ਹੋਈ ਕੋਈ ਰੌਲਾ ਨਾ ਪਾਈ ਅੱਛਾ ਦੱਬੀ ਦੀ ਹੁੰਦੀ ਆ ਗੱਲ ਮੈਂ ਤਾਂ ਹੋਰ 4 ਸਾਲ ਐ ਮੇਰੇ ਤੋਂ ਬਾਅਦ ਸਰਪੰਚ ਤੂੰ ਹੀ ਐ ਨਹੀਂ ਨਹੀਂ ਨਹੀਂ ਭਾਈ ਸਰਪੰਚ ਤੂੰ ਹੀ ਰਹਿਣਾ ਮੇਰਾ ਸਾਡਾ ਹੈ ਬਈ ਮੇਰਾ ਨਹੀਂ ਹਿਲਾ ਇਹ ਜਾ ਕੋਈ ਸਰਪੰਚ ਤੈਨੂੰ ਹੀ ਰੱਖਾਂਗੇ ਮੈਂ ਖਾ ਸ਼ਾ ਰੱਖੂ ਪੂਰੀ ਤੱਪ ਤੱਪ ਕਰਦਾ ਹੱਥ ਪਾਖਰਨੇ ਆਪਣੀ ਛਾਤੀ 'ਚ ਮਾਰਿਆ ਸਰਪੰਚ ਚਲੇ ਗਿਆ ਪਿੰਡ ਦੇ ਮੋਰੀ ਜਿਹੜੇ ਸ਼ਾਮ ਨੂੰ ਸੱਦੇ ਸੀ ਸਾਰੇ ਬੁੱਕਲਾ ਮਾਰ ਕੇ ਸੱਤ 'ਚ ਪਹੁੰਚ ਗਏ ਗੁਲਾਬੇ ਦਾ ਦਿਮਾਗ ਫੇਲ ਹੋਇਆ ਪਿਆ ਸ਼ਾਮੇ ਨੂੰ ਗੁਲਾਬਾ ਵੀ ਕਹਿੰਦੇ ਉਹਦੇ ਕੰਨਾਂ 'ਚ ਵੱਡੇ ਵੱਡੇ ਗੋਂਦੇ ਲੱਗੇ ਅੱਖਾਂ ਧਰਤੀ ਦੇ ਅੱਖਾਂ ਦੇ ਮੂਰੇ ਧਰਤੀ ਘੁੰਮੇ ਸੋਤੀ ਦੇ ਆਸਰੇ ਓਕੜੀ ਹੋਇਆ ਖੜਾ ਵਰਲੇ ਤੇ ਦੇ ਕਸੀਰਾ ਵਰਗੇ ਬਾਲਾਂ ਵਾਲੀ ਕਰਨ ਬੜਾ ਧਾੜੀ ਅੱਖਾਂ ਤੇ ਸਵੇਰ ਦੀਆਂ ਠਰੀਆਂ ਕਰ ਨਾਲ ਕੰਮ ਕਰਿਆ ਸੀ ਅਚੰਭਾ ਸੀ ਖਸਾਈਆਂ ਦਾ ਮਾਲ ਬੱਕਰੇ ਖਾਣ ਸਰਪੰਚ ਦੀ ਪਾਰਟੀ ਦਾ ਮੈਂ ਪੰਦਾ ਹੀ ਨੁਕਸਾਨ ਹੋ ਜੇ ਮੈਂ ਤਾਂ ਲੁਕਿਆ ਗਿਆ ਜਮਾਂਈ ਬਈ ਸਰਪੰਚ ਸਭ ਹੈ ਨਹੀਂ ਮੈਂ ਖੇੜੇ ਖੂਹ ਚ ਡਿਗਾ ਹੋਣਾ ਉਹਨੇ ਰੋਂਦੂ ਆਵਾਜ਼ ਚ ਗਿਆ ਜਿਹੜਾ ਸਰਦ ਰੰਗਾਂ ਮਾੜਾ ਹੋ ਗਿਆ ਚਾਰੇ ਪਾਸੇ ਚੁੱਪ ਲੋਕ ਨੀਮਿਆਂ ਕਿਉਂ ਲੱਗਿਆ ਪਤਾ ਹੁਣ ਨੁਕਸਾਨ ਕੀ ਹੁੰਦਾ ਹੈ ਕਰਮਸਿਉ ਨੇ ਕਰੋੜ ਤੇ ਗੱਲ ਰਗੜਾਈ ਉਸ ਵੇ ਬਜ਼ੁਰਗ ਦੇ ਚਿਹਰੇ ਨੂੰ ਦੇਖਿਆ ਤੈਨੂੰ ਕਰੋੜਾਂ ਆਉਂਦੀਆਂ ਮੈਂ ਮਰਿਆ ਪਿਆ ਤੇ ਉਦੋਂ ਦਾ ਆਇਆ ਸੱਦਿਆ ਖੇਤ ਚੁਗੇ ਸੀ ਉਦੋਂ ਦਾ ਸਰਪੰਚ ਵਾਲੇ ਪਾਸੇ ਗੱਲ ਸਿੱਧਾ ਹੀ ਡੱਕਾ ਹੁਣ ਕਰਮਸਿਉ ਦਾ ਵੱਡਾ ਲਾਣਾ ਸੀ ਗੁਜ਼ਾਰੇ ਪੱਖੋਂ ਪਿੰਡ 'ਚ ਸਾਰੇ ਸਾਰੇ ਉਹਦੇ ਘਰ ਸਰਪੰਚ ਦੇ ਉਲਟ ਪੈਸੇ ਤੇ ਬੰਦੇ ਪੂਰੇ ਸੀ ਥੋੜੇ ਦਿਨ ਪਹਿਲਾਂ ਉਹਦੇ दो ਖੇਡ ਵਿੱਚ ਝੋਗਲੇ ਰਾਖੀ ਪੈ ਸੀਰੀਆਂ ਨੂੰ ਪੱਗਾਂ ਨਾਲ ਬੰਨ੍ਹ ਕੇ ਮੁਸ਼ਕਾਂ ਦੇ ਕਿ ਨਰਮੇ ਦੀ ਤਾਲੀ ਨਾਲ ਖੱਬੇ ਖੜੀ ਤਾਲੀ ਨਾਲ ਬੰਨਤਾ ਸਾਰਾ ਪਿੰਡ ਜਾ ਕੇ ਵੇਖਿਆ ਉਸ ਨੂੰ ਖੋਲਿਆ ਸੀਰੀ ਤਾਂ ਉਸ ਦਿਨ ਦਾ ਉੱਠਿਆ ਨਹੀਂ ਉਹ ਤਾਂ ਚੋਰ ਨੂੰ ਵੇਖ ਕੇ ਦਹਿਲ ਉਹ ਸੀਰੀਓ ਨੇ ਹੱਥਾਂ ਨਾਲ ਬਧੋਤੇ ਨਰਮ ਦਾ ਸਾਰਾ ਖੇਤ ਦੂਰ ਤੱਕ ਖਿਲਦਾ ਨਜ਼ਰ ਆਉਂਦਾ ਕਰਮ ਸਿੰਘ ਬਾਕੀਆਂ ਨੇ ਚਾਚੇ ਕਰੋ ਫਿਰ ਨਾ ਆਉਣਾ ਸਰਪੰਚ ਨੇ ਸਰਪੰਚ ਤਾਂ ਹੈ ਹੀ ਨਹੀਂ ਇੱਥੇ ਥਾਣੇਦਾਰ ਦੀ ਆੜੀ ਆ ਸਰਪੰਚ ਨਾਲ ਚੱਕੋ ਫਿਰ ਅਸਲਾ ਇਉਂ ਨਹੀਂ ਕਹਾਣੀ ਚਾਚੇ ਤਾਏ ਦੇ ਪੁੱਤ 11 ਭਾਈ ਰਸਨਾ ਲੈ ਕੇ ਮੋਟਰ ਦੇ ਕੋਠਿਆਂ ਤੇ ਚੜ੍ਹ ਕੇ ਜਾ ਕੇ ਟਿੱਗੀ ਰਾਤ ਜਦ ਤੀਰੀ ਬੋਲੀ ਤੀਂ ਕਰਦੀ ਜਦ ਬੈਂਤਲ ਚੜ੍ਹੀ ਅਸਮਾਨ ਖੇਤਾਂ ਤਾਂ ਨਾ ਕੋਈ ਗਿਆ ਅੱਜ ਗਲਾਬੇ ਕਾਲ ਉੱਠ ਲਿਆ ਕਰਨੂ ਸਿਆਂ ਹੁਣ ਮੌਣੋ ਮੇਣੀ ਹੋਣ ਦਾ ਨਹੀਂ ਭਾਈ ਇਹਦਾ ਬੰਦੋਬਸਤ ਕਰੋ ਇਉਂ ਤਾਂ ਘਰੇ ਫੁੱਟੀ ਕੌਡੀ ਨਹੀਂ ਆਉਣੀ ਇੱਕ ਬਜ਼ੁਰਗ ਬੋਲਿਆ ਮੈਂ ਤਾਂ ਪਹਿਲਾਂ ਹੀ ਪਿੱਟੀ ਜਾਣਾ ਕੋਈ ਬੰਦੋਬਸਤ ਕਰੇ ਤਾਂ ਸਹੀ ਪਿੰਡ ਚਾਹੇ ਤਾਕੀ ਨਹੀਂ ਹੋ ਸਕਦਾ ਇੱਕ ਗੱਭਰੂ ਨੇ ਪਿੱਛੋਂ ਥੁੱਕ ਲਾ ਕੇ ਮੁੱਛ ਜੜੀ ਹੋੜੀ ਹੋਊਗਾ ਫਿਰ ਕਾਇਮ ਐਂ ਕਿਵੇਂ ਗੱਲ ਬਣਨੀ ਆ ਪਿੰਡ ਤਾਂ ਚਾਹੇ ਜਾਂ ਤਾਂ ਚਫਾਰੇ ਚੱਕੋ ਤੇ ਰਫਲਾ ਲੈ ਇਹ ਕਰੋ ਰਾਖੀ ਤੇ ਨਹੀਂ ਤਾਂ ਘਰੇ ਬਹਿ ਜਾਓ ਫਿਰ ਰਫਲਾ ਦੀ ਕਿ ਲੋੜ ਐ ਉਨੀ ਕੁਝ ਹੁੰਦਾ ਸਾਮ ਸਿੰਘ ਵਿੱਚ ਜੁੜੀਆਂ ਬਾਚੀਆਂ ਕਿੰਨੇ ਚ ਰਫਲਾ ਬਿਨਾ ਹੁਣਾ ਲੰਬੇ ਸੂਤ ਲੰਬੇ ਹੱਥਾਂ ਵਾਲੇ ਸੂਤ ਨਹੀਂ ਆਉਂਦੇ ਬਾਕੀ ਜਿਹੜੇ ਮਗਰ ਭਰੀ ਖੜੇ ਹੁੰਦੇ ਆ ਉਹ ਸੋਟੀਆਂ ਦੇ ਨਾਲ ਡਕਰੇ ਨੇ ਉਹ ਵੀ ਖੜ ਜਾਣਗੇ ਸੋਟੀਆਂ ਨਾਲ ਨਹੀਂ ਉਹ ਭੱਜਣ ਲੱਗੇ ਜੇ ਤੁਸੀਂ ਫਿਰਦੇ ਹੋ ਇਹ ਤਾਂ ਜਦ ਤੱਕ ਨਰਿਆਂ ਚ ਨਹੀਂ ਪੈਂਦੀ ਕੋਈ 12 ਬੋਰ ਚੱਲ ਜੀ ਦਾ ਪਾਕਿਸਤਾਨ ਮਾਰਨ ਵਾਲਾ ਨਾਂ ਮਾਰਿਆ ਦੋ ਵਰਗਾ ਬੰਦਾ ਸਿੱਟਣਾ ਹੋਵੋ ਜੇ ਹੋਣਾ ਸ਼ਾਮ ਸੇਉ ਗਲਾਬਾ ਜਿਹੜਾ ਉਹ ਸਰਪੰਚ ਦੀ ਪਾਰਟੀ ਦਾ ਬੰਦਾ ਸੀ ਉਹਨੂੰ ਐ ਲੱਗੇ ਕਿ ਔਖਾ ਨਾਲ ਉਹ ਚਲੋ ਖੇਤ ਜਾ ਕੇ ਯਾਰ ਪੈੜ ਤਾਂ ਵੇਖੋ ਪਹਿਲਾਂ ਤੁਸੀਂ ਪੈੜ ਵੀ ਨਹੀਂ ਵੇਖਦੇ ਪਹਿਲਾਂ ਖੇਤ ਨੂੰ ਚਲੋ ਖੇਤ ਫੰਦੇ ਦਾ ਸਾਰੇ ਤੁਰਪੇ ਖੇਤ ਸਾਰਾ ਇੱਕ ਵੱਢਿਓ ਚੁਣਿਆ ਪਿਆ ਖੁਰ ਵੱਢ ਕੀਤੀ ਪਈ ਜਿਵੇਂ ਸਾਂਹ ਪਿਰਦੇ ਹੋਣ ਮੋٹے ਫੁੱਟ ਚੋਗਲੇ ਬਰੀਕ ਖੰਬੇ ਲਟਕਣ ਗਰਨਾਮ ਗਰਨਾਮ ਤੇ ਉਹਦੀ ਮਾਂ ਪਹਿਲਾਂ ਖਾਲੀ ਕੰਡੀਆਂ ਨੂੰ ਖੜਕਦਿਆਂ ਸਿਕਰੀਆਂ ਨੂੰ ਵੇਖਦੇ ਸੀ ਗਰਨਾਮ ਦੇ ਜਵਾਨ ਚਿਹਰੇ ਦੇ ਅਦਾਸੀ ਦਾ ਪਰਛਾਵਾਂ ਖੁੱਬਿਆ ਖੜਕਦੀ ਮਾਂ ਪਿਟਰੇ ਦੀ ਉਹਦੇ ਅੱਖਾਂ ਦਾ ਪਾਣੀ ਮੁੱਕ ਰੋਂਦੀ ਗਾਲਾਂ ਕੱਢਦੀ ਦਾ ਸੰਗ ਬਹਿ ਗਿਆ ਬੇੜਾ ਬਹਿ ਜੇ ਜਿਹੜਾ ਮਰ ਗਿਆ ਮੈਂ ਤਾਂ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ ਵੇ ਤੇਰਾ ਕੱਖ ਨਾ ਰਹ ਗਰਨਾਮ ਦਾ ਬੇਬੇ ਬਸ ਕਰ ਹੋਣਾ ਕੋਈ ਗੱਲ ਨਹੀਂ ਕਰਦੇ ਆ ਹੀ ਲਾ ਕੋਈ ਆਹ ਬੰਦੇ ਦੀ ਪੈੜ ਐ ਕਿਸੇ ਦੀ ਹਾਂ ਇਹ ਹੀ ਬੰਦੇ ਦੀ ਪੈੜ ਐ ਕਰਮਸੇ ਉਹਨੇ ਕਿਹਾ ਇਹ ਉਹੀ ਬੰਦਾ ਹੈ ਉਹ ਕੌਣ ਸ਼ਾਮ ਦੇ ਮੂੰਹੋਂ ਕਾਲ ਨਾ ਨਿਕਰਾ ਦੱਸਾਂ ਕਿਉਂ ਦੱਸਣਾਂ ਨਹੀਂ ਰਹਿਣ ਦੇ ਰਹਿਣ ਦੇ ਸੁਣ ਕੇ ਲੇਰਾ ਨਿਕਲਣ ਗਈਆਂ ਮੁੜ ਕੇ ਮੰਜੀ ਤੋਂ ਨਹੀਂ ਉੱਠੋਣਾ ਅਜ 10 ਤੱਕ ਇਹ ਜਾਂਦੀ ਐ ਖੇਤਾਂ 'ਚ ਫਿਰ ਕੇ ਜਦੋਂ ਸਾਰੇ ਵਟੇ ਆਗੇ ਤਾਂ ਇੱਕ ਨੇ ਕਿਹਾ ਸਰਪੰਚ ਸਾਹਿਬ ਆਏ ਬਗੈਰ ਕੁਛ ਨਹੀਂ ਹੋਣਾ ਆਹਾਂ ਹੋ ਡੀਕ ਲੋ ਚਾਰ ਦਿਨ ਮਗਰੋਂ ਸਿਕਰੀਆਂ ਦੀ ਰਾਖੀ ਕਰ ਲਿਓ ਉਹਦੇ ਨਾਲ ਰਲ ਕੇ ਕਰਮ ਸਿੰਘ ਨੇ ਕਿਹਾ ਕਰਮ ਸਿੰਘ ਦੀ ਗੱਲ ਲੋਕ ਸੁਣਦੇ ਤੂੰ ਕਰਮ ਸਿੰਘ ਹਰ ਵੇਲੇ ਘਰੋੜ ਕੇ ਗੱਲ ਕਰਦਾ ਸਰਪੰਚ ਨੇ ਪਰ ਜਹੂਰ ਸਾਹਿਬ ਗਏ ਰਹਿ ਜਾਣਾ ਆਇਆ ਲੈ ਭੜਕ ਹੈ ਬਾਈ ਸਰਪੰਚ ਤਾਂ ਆ ਵੀ ਗਿਆ ਰਾਤ ਸੁਣਿਆ ਦੀ ਤੁਹਾਨੂੰ ਅਬਲੀ ਦੇ ਮੂੰਹ ਤੋਂ ਖੇਸੀ ਦੇ ਨਾਲ ਮੂੰਹ ਲਕੋ ਕੇ ਕਿਹਾ ਸਾਰੇ ਉਹਦੇ ਆਹੋ ਅੱਜ ਮੈਂ ਮੈਦਾਨ ਮਾਰਨ ਗਿਆ ਮੈਂ ਸਰਪੰਚ ਦੇ ਮੱਥੇ ਲੱਗੇ ਆ ਮੈਂ ਫਤੇ ਬਲਾਈਆ ਨਾਲੇ ਕਿਹਾ ਕਰਿਆ ਐ ਇਸ਼ਨਾਨ ਸਰਪੰਚ ਬੋਲਿਆ ਨਹੀਂ ਪੜ ਮੈਨੂੰ ਲੱਗਦਾ ਢਿੱਲਾ ਆਹੋ ਹਜੂਰ ਸਾਹਿਬ ਜਾ ਕੇ ਖਾ ਪੀ ਲੈਂਦੇ ਨੇ ਆਂਦੇ ਸਮਾਨ ਬਹੁਤ ਮਿਲਦਾ ਕਈ ਵਾਰ ਬੰਦਾ ਢਿੱਲਾ ਹੋ ਜਾਂਦਾ ਮੈਨੂੰ ਵੀ ਹਜੂਰ ਸਾਹਿਬ ਵਰਦਾ ਕਰੋ ਯਾਰ ਅਮਲੀਆ ਆਪਣਾ ਰੋਲਾ ਪਾ ਰਿਹਾ ਸੀ। ਅੱਛਾ ਸਰਪੰਚ ਆ ਗਿਆ ਤੇ ਪਿੰਡ ਚ ਤਾਂ ਪਤਾ ਹੀ ਨਹੀਂ। ਜੇ ਸਰਪੰਚ ਆ ਗਿਆ ਤਾਂ ਗੱਲ ਬਣੂ ਉਹ ਤਾਂ ਮੈਂਡਿਟਿਥਾਨਾ ਛੜਾ ਲਿਆ ਉਹ ਸਾਈ ਲੋਕ ਦਾ ਸਿੱਧਾ ਸਬਡੈਂਟ ਤੱਕ ਪੈਂਦਾ ਸ਼ਾਮਾ ਖੁਸ਼ ਹੋ ਗਿਆ ਵੀ ਮੇਰਾ ਬੰਦਾ ਆ ਗਿਆ। ਰਾਤ ਥਾਣੇਦਾਰ ਵੀ ਆਇਆ ਸੀ ਵੱਡੀ ਰਾਤ ਉਹਦੇ ਕੋਈ ਸਿਪਾਹੀ ਸਰਪੰਚ ਦੀ ਬੈਠਕ ਚੋਂ ਨਿਕਲੇ ਸੀ ਇੱਕ ਚਾਊ ਜੇ ਨੇ ਹੌਲੀ ਦੇ ਕੇ ਹੋਰ ਕਿਹਾ ਉਹਨੇ ਸਿਰ ਨਾ ਚੱਕਿਆ ਸ਼ਾਮ ਦੇ ਗਲਾਪਤ ਦਿਲ ਦੇ ਹੌਸਲਾ ਆ ਗਿਆ। ਉਹਨੂੰ ਐ ਲੱਗੇ ਜਿਵੇਂ ਨਰਮਾ ਜਿਹੜਾ ਚੁਗਿਆ ਹੋਇਆ ਮੁੜ ਆ ਗਿਆ ਉਹਨੂੰ ਪੂਰਾ ਪ੍ਰੋਸੈ ਸਰਪੰਚ ਉਹਦਾ ਆਪਣਾ ਬੰਦਾ ਹੈ ਉਹਦਾ ਨਰਮਾ ਦਾ ਸੱਚੇ ਦਿਲੋਂ ਆ ਗਲਾਬੇ ਦੀ ਪਰ ਗਲਾਬੇ ਦਾ ਮੁੱਢਾ ਘਰਨਾਮਾ ਜਿਹੜਾ ਹੈ ਉਹ ਕਰਮਸ਼ਿਓਂ ਦੇ ਹੱਕ 'ਚ ਬੋਲਦਾ ਸਿੱਧੋਂ ਬਣੇ ਬਣਾਏ ਬੰਦੇ ਸਰਪੰਚ ਦੇ ਘਰੇ ਉਹਦੇ ਘਰ ਖੇਤਾਂ ਵਾਲੇ ਵਾਲੇ ਬਾਰੋਂ ਅੰਦਰੋਂ ਬੜੇ ਸਰਪੰਚ ਸਾਹਿਬ ਸਰਪੰਚ ਜੀ ਕਸਰੀ ਕਾ ਸਰਪੰਚ ਸਾਹਿਬ ਸ਼ਾਮ ਜੋਦ ਲਾ ਕੇ ਕਹਿ ਰਹੇ ਸੋਟੀ ਨੂੰ ਠੋਡੀ ਦਾਲ ਆਰਾਮ ਨਾਲ ਲੱਤਾਂ ਚੌੜੀਆਂ ਕਰਕੇ ਖੜ ਗਿਆ ਅੰਦਰ ਇਸ ਆਵਾਜ਼ 'ਚ ਥੋੜਾ ਜਿਹਾ ਕੋਈ ਅਪਰਾਧਨਾ ਆਇਆ ਉਹਨੇ ਨਿਗਾਹ ਸਰਪੰਚ ਦੇ ਬਰਾਂਡਿਆਂ ਵੱਲੋਂ ਹਟਦੀ ਘੂਕ ਦੀ ਤੂੜੀ ਵਾਲੀ ਸਵਾਸ 'ਚ ਜਾਚ ਸੀਗੀ ਉਹਦੀਆਂ ਅੱਖਾਂ ਨੇ ਮੂਰੇ ਭੰਬੂ ਤਾਰੇ ਆ ਗਏ ਕੰਨ ਬੰਦ ਪੈਰਾ ਥਲੋਂ ਧਰਤੀ ਰਿਸ ਕੇ ਉਹ ਲੱਗਿਆ ਜਿਵੇਂ ਲੱਤਾਂ ਤੋਂ ਫੜ ਕੇ ਕਿਸ ਨੇ ਵੰਜ ਕੱਟਤਾ ਹੋ ਸਵਾਤ ਚਕੂਠ ਜਿੱਡਾ ਕਾਲੀ ਪੱਗ ਕਾਲੇ ਚਾਦਰ ਲੱਗਦਾ 9 ਗਜਾ ਲੰਬਾ ਸ਼ਾਮੇ ਬਾਬੇ ਦੀ ਠੋਡੀ ਏਡ 베ਰੀ ਦੀ ਸੋਟੀ ਘੁਕਣ ਲੱਗੀ ਉਹਦੀਆਂ ਅੱਖਾਂ ਪੱਥਰ ਬਣ ਗਈਆਂ ਉਹਦੀ ਧੜਕਣ ਲਬਜ਼ਾਂ ਬੰਦ ਹੋ ਗਈਆਂ ਉਹ ਤਾਂ ਹਜੂਰ ਸਾਹਿਬ ਦਰਸ਼ਨ ਕਰਨ ਗਏ ਆ ਦੇ ਨੇੜੇ ਸਰਪੰਚ ਦੀ ਘਰ ਵਾਲੀ ਨੇ ਕਿਹਾ ਸ਼ਾਮ ਮੇਰੀਆਂ ਪਵਤਰੀਆਂ ਅੱਖਾਂ ਵੇੜੇ ਚਾਰੇ ਪਾਸੇ ਘੁੰਮੀਆਂ ਕੱਲਾ ਹੀ ਵੇੜੇ ਚ ਖੜਾ ਸੀ ਜਦੋਂ ਸਰਪੰਚ ਦੇ ਬਾਹਰੋਂ ਨਿਕਲਦਾ ਅੱਗੇ ਹੋ ਕੇ ਭਰਦੀ ਆਉਂਦੀ ਕਰਤਾਰੋਂ ਮਿਲੀ ਮੁਰਚਾਲਾ ਮੁਰਚਲ ਕੰਬਲੀਏ ਇੱਥੇ ਕੁਛ ਹਾਰੀ ਹੁੱਟੀ ਆਵਾਜ਼ ਤੁਰਦਿਆਂ ਕਰਤਾਰੋਂ ਵੀ ਪਮਤਰ ਗਈ ਸਵਾਲ ਬਹੁਤ ਸੀ ਗਿੱਲੀਆਂ ਅੱਖਾਂ ਨਾਲ ਦੇਖ ਰਹੀ ਸੀ ਗਲਾਬਾ ਕੋ ਬੋਲਦਾ ਨਹੀਂ ਕਿਸੇ ਨੂੰ ਗੱਲ ਸਮਝ ਨਹੀਂ ਸੀ ਆ ਰਹੀ ਪਰ ਗਲਾਬੇ ਦਾ ਜਿਹੜਾ ਸਿਰ ਤੇ ਮੁਰਮੁਰ ਕੇ ਹਿੱਲ ਰਿਹਾ ਸੀ ਕਰਦੇ ਨੂੰ ਜਾਂਦੂ ਜਲਾਦ ਵਰਗਾ ਬੰਦਾ ਉਨੂੰ ਉਹੀ ਬੰਦਾ ਲੱਗ ਰਿਹਾ ਸੀ ਜਿਹਦੀ ਪੈੜ ਉਹ ਦੇ ਚ ਸੀ ਵਪਾਰਕ ਦੀ ਕਹਾਣੀ ਤੁਸੀਂ ਸੁਣ ਰਹੇ ਸੀ ਜਲਾਦ ਨੌਂ ਗਜਾ ਬੰਦਾ ਜਰ ਬਾਬੇ ਸ਼ਾਮੇ ਨੇ ਦੇਖਿਆ ਉਹ ਖੜਾ ਤੂੜੀ ਵਾਲੇ ਤੱਕੀ ਬਣਿਆ ਹੋ ਇਹ ਹਜੂਰ ਸਾਹਿਬ ਸਰਪੰਚ ਕਹਿ ਗਿਆ ਹਜੂਰ ਸਾਹਿਬ ਗਿਆ ਨਹੀਂ ਅਮਲੀ ਨੇ ਮੂੰਹ ਤਾਂ ਖੇ ਦੇ ਕੇ ਦਾਸਤਾ ਹੋਲੀ ਦੇ ਕੇ ਕਹਿੰਦਾ ਮੈਂ ਤਾਂ ਸਵੇਰੇ ਜੰਗਲ ਪਾਣੀ ਗਿਆ ਮੈਨੂੰ ਮੱਥੇ ਲੱਗਿਆ ਉਹ ਪਾਪਾ ਨੇ ਮੈਂ ਆਵਾਜ਼ ਮਾਰੀ ਸਸਤੀ ਕਾਲ ਕਿਹਾ ਉਹ ਬੋਲਿਆ ਨਹੀਂ ਢਿੱਲਾ ਹੋਣਾ ਚੋਰ ਘਰੇ ਬੈਠਾ ਉਹ ਬਾਬੇ ਨੇ ਕਿਵੇਂ ਦੇਖਿਆ ਉਹ ਪੈਰ ਹੱਥੋਂ ਘੁੰਮ ਗਏ ਮਾਲਵੇ ਦੀ ਬੈਲਟ ਦੇ ਵਿੱਚ ਏ ਚੋਰਾ ਨੇ ਨਰਮੇ ਚੋਰੀ ਬਹੁਤ ਚੁਗਦੇ ਸਰਾ ਨੇ ਇਸ ਨੂੰ ਵਧੀਆ ਚਿਤਪਿਆ ਤੇ ਪਿੰਡ ਦੇ ਵਿੱਚ ਅਕਸਰ ਇਹ ਜੀਆਂ ਹੁੰਦੀਆਂ ਕਿਸੇ ਵੀ ਵਿਸ਼ੇ ਤੇ ਹੁਣ ਤੁਸੀਂ ਗੱਲਬਾਤ ਤੁਸੀਂ ਸੁਣਾ ਸਕਦੇ ਹੋ ਜੀ ਕੋਈ ਵੀ ਗੱਲ ਵਿਨਿੰਗ ਸਾਹਿਬ ਰੌਣ ਬਿਲਿੰਗ ਉਹਨਾਂ ਦਾ ਧੰਨਵਾਦ ਹੈ ਪੰਜਾਬ ਗਏ ਹੋਏ ਨੇ ਫਗਵਾੜੇ ਦੇ ਨੇੜੇ ਜੰਡਾਲੀ ਪਿੰਡ ਹੈ ਉੱਥੇ ਸੁਣ ਰਹੇ ਸਿੰਘ ਜੀ ਬਦੇਸ਼ਾਲਾ ਨੰਬਰ 2 ਸਦਾਲ ਸਿੰਘ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਪਹਿਲਾਂ ਜੀ ਦਾ ਖਾਲਸਾ ਫਤਿਹ ਦੀ ਫਤਿਹ ਜੀ ਕਹਾਣੀ ਤੁਸੀਂ ਵਧੀਆ ਲਿਆਉਣੀ ਹੈ ਪਰ ਤੁਹਾਡਾ ਜਿਹੜਾ ਸੁਣਾਉਣ ਜਾਨ ਪਾ ਦਿੰਦਾ ਡਿਪੈਂਡ ਕਰਦਾ ਆ ਧੰਨਵਾਦ ਤੁਹਾਡਾ ਜੀ ਮੈਂ ਥੋੜੀ ਜੀ ਹਕੇ ਗੱਲ ਦੀ ਮੈਂ ਸਿੱਟੀਵ ਫਰੀ ਦਾ ਰੈਜ਼ੀਡੈਂਟਾਂ ਦੀ ਮੈਂ ਉਹਦੇ ਤੇ ਬੇਸਡ ਗੱਲ ਕਰੂੰਗਾ ਪਰ ਕਰੋ ਸਾਰੇ ਸਰੋਤਿਆਂ ਨੂੰ ਬੇਨਤੀ ਕਰਦਾ ਵੀ ਸੈਸਮੈਂਟ ਤਕਰੀਬਨ ਸਾਰੇ ਲੋਅਰ ਘਰਾਂ ਦੇ ਓਨਰ ਆ ਸਾਰੇ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਇਸ ਚੀਜ਼ ਤੇ ਧਿਆਨ ਦੇਣ ਜਿਹੜਾ ਵੀ ਕੀਤਾ ਜੀ ਵੀ 1.6 ਮਿਲੀਅਨ ਥ੍ਰੈਸ਼ਹੋਲਡ ਕਰ ਦਿੱਤੀ 213 ਤੋਂ ਲੈ ਕੇ 2100 14 ਤੱਕ ਸਦਾਜੀਤ ਸਿੰਘ ਜੀ तकरीबन ਪ੍ਰਾਪਰਟੀਆਂ ਦੀ ਜਿਹੜਾ ਅਸੈਸਮੈਂਟ ਤੇ ਵਿੱਚ 71% ਤੱਕ ਦਾ ਵਾਅਦਾ ਹੋ ਗਿਆ ਹੈ ਕਈ ਘਰਾਂ ਦੇ ਵਿੱਚ ਮੋਸਟਲੀ 50 ਤੋਂ ਲੈ ਕੇ 71% ਤੱਕ 231 ਤੋਂ ਲੈ ਕੇ 317 ਤੱਕ ਨਾਲ ਸਾਡੇ ਟੈਕਸ ਵੱਧ ਰਿਹਾ ਜੀ ਇੱਕ ਟੈਕਸ ਨਹੀਂ ਜਾਂਦਾ ਪ੍ਰਾਪਰਟੀ ਟੈਕਸ ਨੂੰ ਉੱਤੇ ਫਰੀ ਦੇ ਸਕੂਲਾਂ ਦਾ ਟੈਕਸ ਸਕੂਲ ਟੈਕਸ ਆ ਉਹਦੇ ਟੈਕਸ ਆ ਉਹਦੇ ਤੇ ਬੀ ਸੀ ਅਸੈਸਮੈਂਟ ਵੀ ਪੈਸੇ ਜਾਂਦੇ ਆ ਔਰ ਬੜੀਆਂ ਚੀਜ਼ਾਂ ਦੇ ਪੈਸੇ ਆ ਜੋ ਕਿ ਇੱਕ ਚੀਜ਼ ਜਾ ਰਿਹਾ ਤੇ ਸਾਨੂੰ ਉਹ ਸਾਥ ਮਿਲ ਰਹੀ ਆ 213 ਤੋਂ ਲੈ ਕੇ 217 ਤੱਕ 19.71% ਮਿਲ ਰਹੀ। ਦੂਸਰੀ ਜਿਹੜੀ ਗੱਲ ਆ ਜੀ ਵੀ 500 ਤੋਂ 500 ਕੁ ਡਾਲਰ ਬੇਸਿਕ ਹੋਮ ਆਨਰ ਕਰਾਟ ਆ ਤੇ 800 ਕੁ ਡਾਲਰ ਡਾਲਰ ਸੀਨੀਅਰ ਹੋਮ ਆਨਰ ਕਰਾਟ ਮਿਲਦੀ ਹਨ। ਜਿਹੜੀ ਤਰ੍ਹਾਂ ਉਹਦੇ ਵਿੱਚ ਉਸੇ ਰੇਸ਼ਿਓ ਦੇ ਨਾਲ ਬੀਸੀ ਸਰਕਾਰ ਨੇ ਕਿਉਂ ਨਹੀਂ ਵਾਅਦਾ ਕੀਤਾ ਜੀ ਬੀਸੀ 213 ਤੋਂ ਲੈ ਕੇ 217 ਤੱਕ ਹੂੰ ਤੀਸਰਾ ਫੈਕਟਰ ਦੀ ਪ੍ਰਾਈਸ ਵਧਾਤੀ ਜਾਂਦੀ ਹੈ ਜੀ ਇਹ ਕਿਹੜਾ ਕ੍ਰਾਈਟੇਰੀਆ ਹੋਇਆ ਜੀ 5 ਜਿਹੜੇ ਕੋਲ ਕਈ ਤੀ ਕੋਲ ਬਲੈਕ ਮਨੀ ਆ ਜਾਂ ਕਈ ਬੰਦੇ ਆ ਜਿਵੇਂ ਸਟੋਰੀ ਆਈ ਆ ਬੰਦੇ ਨੇ ਫਰਾਡ ਕਰਕੇ ਦੂਸਰੇ ਕੰਟਰੀ ਕੇ ਕੈਸ਼ ਖਰੀਦਿਆ ਸਰੀ ਦੇ ਵਿੱਚ ਸੋ ਸਾਰੇ ਵਾਲੇ ਦੋਲਿਆਂ ਦੀ ਅਸੈਸਮੈਂਟ ਆ ਇਹ ਕੋਈ ਸਿਸਟਮ ਨਹੀਂ ਗਾ ਜੀ ਜਿਹੜੀ ਤੁਸੀਂ ਬਜਟ ਆ ਪਰ ਇਹ ਕਰਦੇ ਆਨ ਦਸੰਬਰ ਦੇ ਵਿੱਚ ਇਹਨਾਂ ਨੂੰ ਅਸੈਸਮੈਂਟ ਪਤਾ ਲੱਗ ਜਾਂਦੀ ਵੈਲਿਊ ਜਦੋਂ ਤੱਕ ਬੀਸੀ ਅਸੈਸਮੈਂਟ ਰਿਲੀਜ਼ ਨਹੀਂ ਕਰਦੀ ਜੀ ਬੀਸੀ ਅਸੈਸਮੈਂਟ ਰਿਲੀਜ਼ ਕਰਦੀ ਆ ਬਾਅਦ ਜਾਂ ਤਾਂ ਇਹਨਾਂ ਨੂੰ ਅੰਦਰੋਂ ਅੰਦਰ ਹੀ ਪਹਿਲਾਂ ਦੱਸ ਦੇ ਆ ਉਹ ਇਹ ਐਕਸੈਪਟ ਕਰਨ ਇਹ ਜੇ ਨਹੀਂ ਦੱਸਦੇ ਤਾਂ ਫੇਰ ਇਹ ਬਜਟ ਕਿਵੇਂ ਬਣਾਉਂਦੇ ਆ ਦੇ ਵਿੱਚ ਬਣਾਉਂਦੇ ਇਹਦਾ ਮਤਲਬ ਪਿਛਲੇ ਸਾਲ ਵਾਲੀ ਫਿੱਗਰ ਤੇ ਬੇਸਡ ਬਣਾਉਂਦੇ ਆ ਵੀ ਪਿਛਲੇ ਸਾਲ ਸਾਡੀ ਇਨਕਮ ਸੀਗੀ ਸਾਨੂੰ ਅਗਲੇ ਸਾਲ ਇੰਨੇ ਪੈਸੇ ਚਾਹੀਦੇ ਆ ਹੁਣ ਇਹਨਾਂ ਨੇ ਉਹ ਤੇ ਬੇਸਡ ਬਣਾ ਲਿਆ ਜੇ ਮੇਰੇ ਘਰ ਦਾ ਟੈਕਸ 4000 ਸੀ ਮੰਨ ਲਓ ਇਹ ਕਹਿੰਦੇ ਵੀ ਅਸੀਂ 2% ਵਧਾਉਣਾ ਜੀ ਉਸ ਹਾਵਨਾ ਵਧਾਉਣ ਨਾਲ ਕਿ ਮੇਰਾ ਕੇ 30 ਤੋਂ ਦੀ ਬਹੁਤ ਤਕੜੀ ਟੀਮ ਆ ਬਹੁਤ ਇਹਨਾਂ ਦੇ ਕੋਲ ਸੌਆਂ ਕਰਕੇ ਗੱਲਾਂ ਲੈ ਕੇ ਆਉਣੀਆਂ ਜੀ ਪਾਲਿਸ਼ਡ ਕਰਕੇ ਲੋਕਾਂ ਨੂੰ ਆਨਸਰ ਦੇਣੇ ਆ ਸਾਰਾ ਕੁਝ ਪ੍ਰੀ ਪਲਾਨਡ ਇਹਨਾਂ ਦੇ ਖੜਾ ਦੇਣਾ ਸਾਨੂੰ ਜੀ ਅਸੀਂ ਇਹ ਸਿਟੀ ਦੀ ਆ ਇੱਧਰ ਬਣਾ ਰਹੇ ਉਹ ਬਣਾ ਰਹੇ ਜੇ ਬਣਾ ਰਹੇ ਪਰ ਬਸ ਨਿਊਟਨ ਦੇ ਵਿੱਚ ਜਿਹੜੇ ਬੰਦੇ ਰਹਿੰਦੇ ਆ ਨਿਊਟਨ ਏਰੀਏ ਦੇ ਵਿੱਚ ਦੋਨਾਂ ਦੇ ਵਿੱਚ ਉਹ ਤੁਸੀਂ ਆਪਣੇ ਆਲੇ ਦੁਆਲੇ ਧਿਆਨ ਮਾਰੋ ਵੀ ਤੁਹਾਨੂੰ ਉਹ ਫੈਸਿਲਟੀਆਂ ਮਿਲ ਰਹੀਆਂ ਜਿਹੜੀਆਂ ਬਾਕੀ ਸ਼ਹਿਰ ਦੇ ਪੁਸ਼ਤਸਿਆਂ ਦੇ ਵਿੱਚ ਨਵੀਆਂ ਭਟੀਆਂ ਵੱਡੀਆਂ ਬਣ ਰਹੀਆਂ ਤੁਹਾਨੂੰ ਉਹ ਫੈਸਿਲਟੀਆਂ ਨਹੀਂ ਮਿਲਦੀਆਂ ਸਾਡੇ ਸਕੂਲਾਂ ਦੇ ਵਿੱਚ ਜਾ ਕੇ ਦੇਖੋ ਜੀ ਸਾਰੇ ਜਣੇ ਆਪਣੇ ਆਪਣੇ ਨਿਆਣੇ ਛੱਡਣ ਜਾਂਦੇ ਰੇ ਸਨੋ ਕਿਸੇ ਸਕੂਲ ਚੋਂ ਹਟਾਈ ਸੀਗੀ ਇਨਾਂ ਦੇ ਕੋਲ ਸਕੂਲ ਦਾ ਸਕੂਲਾਂ ਨੂੰ ਵੀ ਮੇਰੇ ਮੈਂ ਆਪਣੇ ਨੋਟਸ ਦੇ ਉੱਤੇ ਦੇਖਿਆ ਜੀ 2014 ਤੋਂ ਲੈ ਕੇ 2016 ਤੱਕ 200 ਕੁਝ ਡਾਲਰ ਸਕੂਲ ਟੈਕਸ ਤੇ ਮੈਨੂੰ ਵੱਧ ਗਏ ਉਹ ਪੈਸਾ ਕਿੱਥੇ ਗਿਆ ਜੀ ਉਹ ਪੈਸਾ ਕਿੱਥੇ ਜਾ ਰਿਹਾ ਟੀਚਰਾਂ ਨੂੰ ਤਾਂ ਕੋਈ ਤਨਖਾਹ ਵਧ ਨਹੀਂ ਦੇ ਰਹੀ ਗਵਰਨਮੈਂਟ ਉਹਨਾਂ ਦਾ ਆਪਣਾ ਰੋਲਾ ਪਿਆ ਹੋਇਆ ਸਕੂਲਾਂ ਦੇ ਵਿੱਚ ਜਾ ਕੇ ਪ੍ਰਿੰਸੀਪਲਾਂ ਨਾਲ ਗੱਲ ਕਰੋ ਕਹਿੰਦੇ ਸਾਡੇ ਕੋਲ ਪੈਸੇ ਹੈ ਨਹੀਂ ਇਹ ਸਾਰਾ ਕੁਝ ਕਾਲਾ ਮਾਲਾ ਹੋ ਰਿਹਾ ਜੀ ਇਹ ਦੇਖੋ ਇਹਨਾਂ ਨੇ ਬਜਟ ਕੀਤਾ ਇਹਨਾਂ ਦਾ ਬਜਟ ਵੀ 71% ਵਧਦਾ ਹੋਇਆ ਦਿੱਤੀ ਉਹ ਫਿਰ ਇਹਦਾ ਆ ਕੇ ਦੱਸਣ ਵੀ ਕਿਉਂ ਹੋਇਆ ਇਹ ਸਿਟੀ ਦਾ ਬਜਟ ਨੂੰ ਕੰਟਰੋਲ ਕਿਉਂ ਨਹੀਂ ਕਰ ਰਿਹਾ ਪੁਲਿਸ ਆਫੀਸਰ ਲਾਉਣੇ ਸੀ ਇਹਨਾਂ ਨੇ ਸਾਡੇ ਤੋਂ ਵਾਧੂ ਪੈਸੇ ਟੈਕਸ ਲਾਤੇ 100-100 ਡਾਲਰ ਸਾਡੇ ਤੇ ਉਹ ਜੋ ਵੀ ਇਹਨਾਂ ਦੀ ਅਮਾਉਂਟ ਸੀਗੀ 100 ਸੀ ਜਾਂ ਕਿੰਨੀ ਸੀ ਉਹ ਸਾਡੇ ਤੇ ਲਾਤੀ ਹੁਣ ਇਹ ਹਰੇਕ ਚੀਜ਼ ਬਣਾ ਕੇ ਲਿਉਣਗੇ ਅਸੀਂ ਚਾਹੁੰਦੇ ਵੀ ਆਉਣ ਪਬਲਿਕ ਦੇ ਨਾਲ ਓਪਨ ਲਾਈਨ ਗੱਲ ਕਰਨ ਸਾਨੂੰ ਦੱਸਣ ਵੀ ਸਾਨੂੰ ਇਹ ਟੈਕਸ ਪਿਛਲੇ ਸਾਲ ਦੀ ਅਸੈਸਮੈਂਟ ਤੇ ਬੇਸਡ ਨਹੀਂ ਬਜਟ ਬਤਾਇਆ ਜਾ ਇਹਨਾਂ ਨੂੰ ਪਹਿਲੇ ਪਤਾ ਸੀਗਾ ਵੀ ਆਹ ਅਸੈਸਮੈਂਟ ਆ ਰਹੀ ਆ ਤੇ ਉਹਦੇ ਉੱਤੇ ਹੋਰ ਫਿਗਰ ਅਸੀਂ ਐਡ ਕਰਨੀਆਂ ਆ ਇਹ ਗੱਲਾਂ ਸਾਨੂੰ ਇਹ ਗੱਲਾਂ ਸਾਨੂੰ ਪੁੱਛਣੀਆਂ ਚਾਹੀਦੀਆਂ ਇਹਨਾਂ ਨੂੰ ਅਸੀਂ ਇਹਨਾਂ ਨੂੰ ਵੋਟਾਂ ਪਾਉਣੇ ਆ ਵੋਟਾਂ ਪਾਉਣ ਵਾਲਿਆਂ ਨੂੰ ਕਾਉਂਸਲ ਸਿਟੀ ਦੇ ਟੈਕਸ ਪੇ ਦਾ ਜਵਾਬ ਦੇ ਹਿਸਾਬ ਨਾਲ ਵਧਾਓ ਤਾਂ ਕਿ ਜਿਹੜੇ ਬੀਸੀ ਦੇ ਹੋਮ ਆਨਰਜ਼ ਆ ਨੂੰ ਇਸ ਟੈਕਸ ਦੇ ਵਿੱਚ ਕੋਈ ਧੰਨਵਾਦ ਜੀ ਲਾਈਨ ਨੰਬਰ 3 ਹਾਂਜੀ ਅਰਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਸਸੀ ਦਾ ਬਰਾੜ ਸਾਹਿਬ ਮੈਂ ਨਾ ਇਨਫੋਰਮੇਸ਼ਨ ਤੁਹਾਨੂੰ ਦੇਣੀ ਇਸ ਬਾਰੇ ਮੇਰੇ ਕੋਲ ਇਨਫੋਰਮੇਸ਼ਨ ਹਾਂਜੀ ਦੱਸੋ ਇਹ ਹੁੰਦੇ ਹੁੰਦੀ ਹੈ ਜੀ ਦੂਸਰਾ ਹੁੰਦਾ ਮਿਲ ਰੇਟ ਜੀ ਅੱਛਾ ਜੇ ਮਿਲ ਰੇਟ ਇਹਨਾਂ ਨੇ ਕੀ ਕਰਨਾ ਮਿਲ ਰੇਟ ਹੀ ਕਰਦੇ ਆ ਵੈਲਿਊ ਦੇ ਹਿਸਾਬ ਨਾਲ ਜਿੰਨਾ ਇਹਨਾਂ ਪੈਸੇ ਰੀਸ ਕਰਨੇ ਹੁੰਦੇ ਆ ਨਾ ਹਾਂਜੀ ਉਹਨੂੰ ਵਧਾਉਂਦੇ ਘਟਾਉਂਦੇ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਆਬਸਪੋਰਟ ਪਿਛਲੇ 40 ਸਾਲ ਤੋਂ ਹਾਂਜੀ 25 ਸਾਲ ਤੋਂ ਮੇਰੀ ਇੰਟਰਵਿਊ ਐਥੀ। ਅੱਛਾ ਜੀ। 33% ਕੋਈ ਸਾਡੇ ਇਨਕਰੀਜ਼ ਹੋਈ ਹੈ ਐਵਰੇਜ ਜਿਹੜੀ ਹਾਊਸ ਪ੍ਰਾਈਸ ਦਾ ਪਿਛਲੇ ਸਾਲ ਦੇ ਵਿੱਚ। ਅੱਛਾ ਜੀ। ਜੇ ਤੁਹਾਡਾ ਘਰ 33% ਵਧਿਆ ਨਾ ਤਾਂ ਤੁਹਾਡਾ ਜਿਹੜਾ ਵਧਣਾ ਹੈਗਾ ਜਿਹੜਾ ਕੀ ਇਹਨਾਂ ਨੇ ਇਨਕਰੀਜ਼ ਕਰਿਆ ਇਸ ਸਾਲ ਵਾਸਤੇ। ਹੂੰ ਸਪੋਜ਼ ਤੁਸੀਂ 10000 ਡਾਲਰ ਪਿਛਲੇ ਸਾਲ ਟੈਕਸ ਦਿੱਤਾ ਹੈਗਾ। ਹੂੰ ਉਹਦਾ 2.3% ਤੁਸੀਂ ਕਰਕੇ ਵੇਖੋ ਵੀ ਤਕਰੀਬਨ 70 ਕ ਡਾਲਰ ਤੁਹਾਡਾ ਜਿਹੜਾ ਟੈਕਸ ਵਧਣਾ ਹੈਗਾ। ਠੀਕ ਹੈ ਜੀ ਜੇ ਤੁਹਾਡਾ ਘਰ ਫਰਜ ਕਰੋ 50% ਇਨਕਰੀਜ਼ ਹੋ ਗਿਆ 33% ਭਿਜਾਈ ਹੂੰ ਤਾਂ ਤੁਹਾਨੂੰ ਕੋਈ 550 ਡਾਲਰ ਹੋਰ ਐਕਸਟਰਾ ਟੈਕਸ ਦੇਣੇ ਪੈਣੇ ਜਿਹੜੀ ਤੁਸੀਂ ਗੱਲ ਕਰਦੇ ਨਾ ਮਿਲ ਰੇਟ ਜਿਹੜਾ ਹੁੰਦਾ ਨਾ ਇਹ ਆਪਣਾ ਉਹ ਅਸੈਸ ਵੈਲਿਊ ਤੇ ਨਹੀਂ ਹੁੰਦਾ ਉਹ ਟੈਕਸ ਜਿਹੜਾ ਇਨਕਰੀਜ਼ ਹੈ ਨਾ ਟੈਕਸ ਅਮਾਉਂਟ ਤੇ ਹੁੰਦਾ ਨਾ ਕਿ ਅਸੈਸ ਵੈਲਿਊ ਤੇ ਠੀਕ ਹੈ ਜਿਹੜਾ 2.3% ਵਧਣਾ ਨਾ ਉਹ ਜੇ ਮੇਰਾ ਘਰ ਚਾਰ ਤੋਂ 6 ਲੱਖ ਦਾ ਹੋ ਗਿਆ ਉਹ 6 ਲੱਖ ਤੇ ਨਹੀਂ ਵਧਣਾ ਉਹ 3000 ਤੇ ਵਧਣਾ ਹੈਗਾ ਟੈਕਸ ਹੈ ਜਿਹੜਾ ਤੁਸੀਂ ਫਾਲੋ ਕਰਕੇ ਜੇ ਤੁਹਾਡੇ ਕੋਲ ਕੁਐਸਚਨ ਮੈਂ ਸਮਝ ਗਿਆ ਦੇ ਪਿੱਛੇ ਲੋਕ ਦੁਖੀ ਨੇ ਜਿਹੜੇ ਅਸੈਸਮੈਂਟ ਕਰਕੇ ਲੋਕ ਦੁਖੀ ਨੇ ਮੰਨ ਲਓ ਮੇਰਾ 5 ਲੱਖ ਦਾ ਘਰ ਸੀ ਉਹਦਾ ਮੈਂ ਰਿਸਪੋਰਟ ਲਾ ਲੀਏ ਉਹਦਾ 2000 ਮੇਰਾ ਪਿਛਲੇ ਸਾਲ ਦਾ ਟੈਕਸ ਸੀ ਹੁਣ ਉਹ ਮੇਰਾ 5 ਲੱਖ ਦਾ ਘਰ 8 ਲੱਖ ਦੀ ਅਸੈਸਮੈਂਟ ਆ ਗਈ 2000 ਤੋਂ ਜਿਹੜਾ ਟੰਬੇ ਦਾ 3 ਲੱਖ ਵਧਿਆ ਉਹਦੇ ਉਹਦੇ ਤੇ ਕੋਈ ਫਰਕ ਨਹੀਂ ਪੈਣਾ ਜਿਹੜਾ ਪਹਿਲਾ 2000 ਆ ਉਹਦੇ ਤੇ ਜਿੰਨੇ ਪਰਸੈਂਟ ਇਨਕਰੀਜ਼ ਸਿਟੀ ਨੇ ਕਿਹਾ ਉਹਨਾਂ ਵਧਣਾ ਨਹੀਂ ਜੀ ਨਹੀਂ ਇਹ ਜੇ ਤੁਹਾਡਾ ਘਰ ਸਰਕਾਰ ਕੋਲ ਐਵਰੇਜ 33% ਵਧਿਆ ਕਿੰਨੇ ਦਾ ਮਰਜੀ ਘਰ ਆ ਤੁਹਾਡਾ ਠੀਕ ਹੈ ਆਪਸਪੋਟ ਦੀ ਗੱਲ ਕਰਦਾ ਮੈਨੂੰ ਸਾਰੀ ਬਾਰੇ ਨਹੀਂ ਪਤਾ ਠੀਕ ਹੈ ਤੇ 33 ਜੇ 33% ਵਧਿਆ ਸਿਰਫ ਤੁਹਾਡਾ ਤਾਂ ਤੁਹਾਨੂੰ ਸਿਰਫ 2.2.13% ਟੈਕਸ ਦੇ ਉੱਤੇ ਇਨਕਰੀਜ਼ ਹੋਣਾ ਕੱਲੇ ਟੈਕਸ ਅਮਾਉਂਟ ਤੇ ਸੋ 33 ਤਾਂ ਸਾਰਿਆਂ ਦਾ ਵਧੇ ਗਿਆ ਜੀ 33 ਤਾਂ ਹੋ ਗਿਆ ਨਾ 33 ਦੇ ਉੱਤੇ 2.3% ਮਤਲਬ ਤੁਸੀਂ ਸਾਰੇ ਬਰਾਬਰ ਇੱਕ ਤਕੜੀ ਚਾ ਤੁਸੀਂ ਵਧੇ ਹੈਗੇ ਜੇ ਥੋੜਾ فرض ਕਰੋ 50% ਵਧ ਗਿਆ فرض ਕਰੋ ਸਾਡੇ ਆਰਸਪੋਰਟ ਦੇ ਵਿੱਚ ਠੀਕ ਜੀ ਉਹ ਗਈ ਤੁਹਾਡੀ ਪ੍ਰਾਈਸ ਆ ਜਿਹੜੀ ਸਾਫ ਦੇ ਵਿੱਚ ਹਮ ਤਾਂ ਤੁਹਾਡੇ 550 ਡਾਲਰ ਹੋਰ ਟੈਕਸ ਲੱਗਣਾ ਤੁਹਾਨੂੰ 550 ਡਾਲਰ ਸੋ ਜੇ ਜੇ ਮਤਲਬ ਜਿਹੜਾ 2.3% ਆ ਫਿਰ ਜਿਹੜਾ 2000 ਪਿਛਲੇ ਸਾਲ ਟੈਕਸ ਆ ਉਹਨੂੰ ਤਾਂ ਫਿਰ 40-50 ਡਾਲਰ ਜੇ 33% ਉਸ ਆਮਾਉਂਟ ਤੇ ਵਧਣਾ ਜੀ ਇਹ ਕਨਫਿਊਜ਼ਨ ਹੈ ਇਹ ਗਲਤੀ ਆ ਉਸ ਅਸੈਸਮੈਂਟ ਵੈਲਿਊ ਤੇ ਨਹੀਂ ਹੁੰਦਾ ਉਹ ਟੈਕਸ ਦੇ ਮੈਂ ਸਮਝ ਗਿਆ ਜੀ ਟੈਕਸ ਸਾਲ ਟੈਕਸ ਦੇ ਵਿੱਚ ਉਹਦੇ ਪਰਸੈਂਟੇਜ ਤੇ ਵਧਣਾ 5.2.13 ਇਹਨਾਂ ਨੇ ਇਨਕਰੀਜ਼ ਪ੍ਰਪੋਜ਼ ਕਰਿਆ ਹੋਇਆ ਜਦੋਂ ਤੇ ਜਿਹੜੀ ਸਾਰੀ ਟੋਲ ਹੈ ਨੀ ਜਿਹੜੀ 50% ਵਧ ਰਹੀ ਹੈ ਜੀ ਉਹਦਾ ਕਿੰਨਾ ਪਰਸੈਂਟ ਵਧਣਾ ਪਹਿਲੇ ਟੈਕਸ ਤੇ ਪਲੱਸ ਕਿੰਨੇ ਪਰਸੈਂਟ ਹੋਣਾ ਆਪਸਪੋਰਟ ਦੇ ਵਿੱਚ ਕੋਈ ਸੋ ਜੇ 4 ਲੱਖ ਵਾਲਾ ਘਰ 6 ਦਾ ਹੋ ਜੇ 4 ਵਾਲਾ ਘਰ 6 ਦਾ ਹੋ ਗਿਆ ਉਹ 50% ਵਧ ਗਿਆ 50% ਵਧ ਗਿਆ ਜੀ ਉਹਦੇ ਉਹਨੂੰ 550 ਵਧਣਾ ਆਈ ਸੋਪੀ ਡਾਟ ਆਲ ਇਨ ਟੈਕਸ ਵਧਣਾ ਹੈਗਾ ਸਾਡੀ ਐਪਸ ਵਰਡ ਦੇ ਵਿੱਚ ਜੇ ਫਰਕ ਅਕੇ ਤੁਸੀਂ ਤੁਸੀਂ ਇਸੇ ਨੂੰ ਠੀਕ ਸੁਣ ਰਹੇ ਦੂਸਰਾ ਹੈਗਾ ਜੇ ਫਰਕ ਜੀ ਨੇ 30% ਇੱਕ ਮੈਂ ਮੈਨੂੰ ਕਲੀਅਰ ਕਰ ਤੁਹਾਡਾ ਨਹੀਂ ਵਧਿਆ 20% ਵਧਿਆ ਤੁਹਾਡਾ ਟੈਕਸ ਜਿਹੜਾ ਉਹ ਘਟਣਾ ਹੈਗਾ ਪਿਛਲੇ ਸਾਲ ਨਾਲ ਓਕੇ ਦੂਸਰਾ ਪਨੂੰਗੜੀ ਦੀ ਬਿਲਡਿੰਗ ਤੇ ਕੁਐਸਚਨ ਕਰਿਆ ਸੀ ਅਸ ਤੋਂ ਪਹਿਲਾਂ ਵੀ ਬਿਲਡਿੰਗ ਤਾਂ ਹੁਣ ਤੁਸੀਂ ਮੇਰਾ ਘਰ ਹੈ 26 ਸਾਲ 28 ਸਾਲ ਪੁਰਾਣਾ ਅੱਜ ਕਿੰਨੇ ਚ ਬਣਦਾ ਨਵਾਂ ਘਰ ਜਿਹੜਾ ਕਿੰਨੇ ਚ ਤੇ ਇਹ ਡਿਪ੍ਰੀਸੀਏਸ਼ਨ ਆਉਂਦੀ ਹੈ ਪਰਸੈਂਟੇਜ ਹਰ ਸਾਲ ਦੀ ਫਰਜ਼ ਕਰੋ ਜਿਹੜੀ لوکاں دا ترکہ یہ ہے میں سمجھ گیا گا لوکاں دا ترکہ یہ ہے کہ جینے میں ہوں ਤੁਸੀਂ ہو ایک گھر تے 25 سالوں 3 سال پہلا کسے نے گھر لیا او نے 20 سال 25 سال رہنا نہیں اودی اسیسمنٹ بڑھ کے او دا ٹیکس جڑا بڑھ رہا ہے لوگ اس گل تو دکھی نہیں او وکھری گل ہے جڑی میں تاں تو صرف ریڈیفائی کر رہا ہے جڑی ਤੁਸੀਂ کلری کل اس نو ٹھیک کیتا ہاں وہ جڑی گل ہے اپا تا کر رہے ہیں اپنا پچھلے سال تے نہ ٹیکس ਨੇ ਸਰੀ ਦੇ ਵਿੱਚ ਜਿਹੜੀ ਗੱਲ ਹੈ ਜੀ ਸੜੀ ਸਿਟੀ ਨੇ ਵੀ ਇਸ ਨੂੰ ਦੱਸਣਾ ਪਰ ਤੁਸੀਂ ਐਡਰੈਸਲੀ ਕੈਲਕੂਲੇਟ ਕਿਵੇਂ ਹੁੰਦਾ ਤੁਹਾਡੇ ਸ਼ਹਿਰ ਚ ਕਿਵੇਂ ਹੋਇਆ ਤੁਸੀਂ ਦੱਸਿਆ ਬਰਾੜ ਸਾਹਿਬ ਥੈਂਕ ਯੂ ਇਹ ਸਾਰੀਆਂ ਮਿਊਂਸਪਲੈਂਟ ਜਨ ਇਸ ਤਰ੍ਹਾਂ ਹੀ ਹੁੰਦਾ ਸਿਰਫ ਇਹ ਜਿਹੜਾ ਮਿਲ ਰੇਟ ਆ ਨਾ ਜੇ 5 ਕਰੋੜ ਤੋਂ ਟੋਟਲ ਵੈਲਿਊ ਜਿਹੜੀ ਪ੍ਰਾਪਰਟੀ ਦੀ ਬਹੁਤੀ ਵਧ ਗਈ ਹੈ ਸਿਟੀ ਦੇ ਵਿੱਚ ਉਹਨਾਂ ਨੇ ਮਿਲ ਰੇਟ ਕਟਾ ਦੇਣਾ ਹੈ ਠੀਕ ਹੈ ਜੀ ਜਿਹੜਾ ਬਜਟ ਹੈ ਨਾ ਕੋਈ ਤੁਸੀਂ ਮੈਨੂੰ ਐਗਜ਼ਾਮਪਲ ਦੇਣਾ ਉਹਨਾਂ ਨੂੰ 10 ਮਿਲੀਅਨ ਚਾਹੀਦਾ ਸੀ ਪਿਛਲੇ ਸਾਲ ਵਾਰਜ ਕਰੋ ਸਾਡੀ ਮਿਊਂਸਪੈਲਟੀ ਨੂੰ ਮੈਂ ਐਵੇਂ ਰਾਉਂਡ ਚੇਕ ਕਰ ਐਵੇਂ ਕੱਲ ਕਰਦਾ ਤੁਹਾਡੇ ਕੋਲੇ ਸਹੀ ਹੈ ਤੇ ਲੈਣਾ ਅੱਛਾ ਜੇ ਜੇ ਬਰਾੜ ਸਾਹਿਬ ਜੇ ਮਿਊਂਸਪੈਲਟੀ ਕਹੇ ਕਿ ਮੈਨੂੰ ਪਿਛਲੇ ਸਾਲ 10 ਚਾਹੀਦਾ ਕਿ 15 ਚਾਹੀਦਾ ਫੇਰ ਤਾਂ ਵਧੂਗਾ ਹੀ ਹਾਂਜੀ ਉਹ ਤੁਹਾਨੂੰ ਦੱਸ ਦਿੰਦੇ ਜਿਵੇਂ ਸਾਡੇ ਕਹਿੰਦੇ ਹੈਗੇ ਵੀ ਸਾਨੂੰ 2.3% 2.13% 2% ਸਾਨੂੰ ਹੋਰ ਚਾਹੀਦਾ ਬਜਟ ਆ ਗਿਆ ਪਿਛਲੇ ਸਾਲ ਨਾਲੋਂ ਹੂੰ ਉਹ ਸਿਟੀ ਹਰ ਕੰਸਲਟੀ ਦਾਖਲੀ ਆ ਤੁਹਾਨੂੰ ਹੋ ਸਕਦਾ ਸਾਰੀ ਚ 3% ਹੋਵੇ ਹੋ ਸਕਦਾ 4% ਹੋਵੇ ਉਹਨੇ ਹਰ ਸਿਟੀ ਦੱਸਿਆ ਹੁੰਦਾ ਵੀ ਸਾਡੇ ਕੋਲੇ ਪਿਛਲੇ ਸਾਲ ਦਾ ਬਜਟ ਇੰਨਾ ਸੀ ਇਸ ਲਈ ਸਾਨੂੰ ਇੰਨਾ ਚਾਹੀਦਾ ਹੈ ਠੀਕ ਆ ਸਰਾਬ ਥੈਂਕ ਯੂ ਉਸ ਹਸਾਬ ਨਾਲ ਮਿਲ ਰੇਟ ਆ ਜਿਹਦਾ ਅਡਜਸਟ ਕਰਦੇ ਵੀ ਤੁਹਾਡੀ ਦਾ ਹੋ ਗਿਆ 10 ਬਿਲੀਅਨ ਦੀ ਬਜਾਏ ਵੀ ਤੁਹਾਨੂੰ ਸੁਣ ਰਿਹਾ ਸੀ ਮੈਨੂੰ ਲੱਗਿਆ ਵੀ ਇਨਫਾਰਮੇਸ਼ਨ ਹੈ ਜਿਹਦੀ ਰਾਈਟ ਨਹੀਂ ਆ ਰਹੀ ਤਾਂ ਮੈਂ ਤੁਹਾਨੂੰ ਕਾਲ ਕੀਤਾ ਹੈ ਥੈਂਕ ਯੂ ਜੀ ਥੈਂਕ ਯੂ ਸੋ ਮਚ ਅੱਜ ਮੈਂ ਸ਼ੁਰੂ ਦੇ ਵਿੱਚ ਅੱਜ ਮੈਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਯਾਦ ਆ ਮੈਂ ਦੱਸਿਆ ਹੋਣਾ ਸਿਟੀ ਮੈਨੂੰ ਇਹ ਪਤਾ ਲੱਗਿਆ ਟੋਟਲ ਅਸੈਸਟ ਅਸੀਂ ਮਲਟੀ ਆਪਣੇ ਐਡ ਕਰਕੇ ਫਿਰ ਉਸ ਦੀ ਉਹਦਾ ਪਰਸੈਂਟੇਜ ਉਹਦੇ ਤੇ ਸੈੱਟ ਕਰ ਲੈਣੀ ਆ ਵੀ ਸਾਨੂੰ ਹੁਣ ਟੈਕਸ ਇੰਨਾ ਇਹ ਜਿਹੇ ਆ ਰਹੇ ਲੱਖ ਹੋਜੂ 6 ਲੱਖ ਹੋ 5000 ਹੋਜੂ 6000 ਹੋਜੂ 7000 ਹੋਜੂ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸੀ ਇਹ ਗੱਲ ਠੀਕ ਹੈ ਤੁਹਾਡੀ ਪਰ ਸਿਟੀ ਆਫ ਸਰੀ ਦੇ ਵਿੱਚ ਕਿੰਨੇ ਪਰਸੈਂਟ ਵਧੇ ਪਿਛਲੇ ਸਾਲ ਦੇ ਟੈਕਸ ਤੇ ਉੱਪਰ ਵੈਲਿਊ ਤਾਂ ਅਬਾਊਟ 33 ਤੱਕ ਬਹੁਤ ਘਟਾ ਹੈ 50% ਤੱਕ ਵਧੀਆਂ ਹੋਈਆਂ ਤੁਹਾਡੇ ਵੀ 50% ਤੱਕ ਬਹੁਤ ਕੱਲ ਲੋਕਾਂ ਨੇ ਦੱਸਿਆ ਸੋ 5 550 ਐਵਰੇਜ ਜਿਹੜੇ ਡਾਲਰ ਨੇ ਉਹ ਇੱਕ ਘਰ ਦੇ ਵੱਧ ਰਹੇ ਨੇ ਪਰ ਲੋਕਾਂ ਦਾ ਤਰਕ ਇਹ ਸੀ ਕਿ ਹੁਣ ਜੇ ਅਸੀਂ ਵੇਚਣਾ ਹੀ ਨਹੀਂ 25 ਸਾਲ ਅਸੀਂ ਕਾਦੇ ਲਈ ਹਰ ਸਾਲ ਅਗਲੇ ਸਾਲ ਹੋਰ ਉਹ ਸਿਟੀ ਇਹ ਕਹਿੰਦੀ ਆ ਵੀ ਸਾਨੂੰ ਬਜਟ ਚਾਹੀਦਾ ਤੁਹਾਡੇ ਉੱਪਰ ਪੈਸੇ ਖਰਚ ਔਰ ਸੋਝੇ ਤੋਂ ਹੀ ਲੈਣਾ ਵਪਾਰਕ ਸੁਨੇਸ਼ ਨਾਲਜੋਤ ਨਾਲਜੋਤ ਸਿੰਘ ਜੀ ਤੁਸੀਂ ਇਰਤੇ ਹੋ ਹਾਂਜੀ ਭਾਈ ਹਾਂਜੀ ਭਾਈ ਰਜੀਤ ਮਰਜੀ ਗੱਲ ਕਰ ਸਕਦੇ ਕੋਈ ਵੀ ਇੱਕ ਦਿਨ ਆਪ ਜੀ ਦੇ 2-4 ਦਿਨ ਪਿੱਛੇ ਚੱਲ ਰਿਹਾ ਸੀਗਾ ਕਿ ਆਪ ਜੀ ਨੇ ਮੈਂਸ਼ਨ ਕੀਤਾ ਸੀ ਕਿ ਹੁਣ ਪਟਨਾ ਸਾਹਿਬ ਦਾ ਵੀ ਨਾਂ ਹਰਮੰਦਰ ਸਾਹਿਬ ਰਾਜਾ ਜਾਂ ਹਰਮੰਦਰ ਪਟਨਾ ਸਾਹਿਬ ਜਾਂ ਇਸ ਤਰ੍ਹਾਂ ਜੋੜ ਦਿੱਤਾ ਕਿ ਮੈਂ ਉਹਦੇ ਤੇ ਦੇ ਜੇ ਆ ਵੀ ਆ ਗਿਆ ਹੋਵੇ ਗੱਲਬਾਤ ਕਿਉਂਕਿ ਜਿਹੜੀ ਵਿੱਚ ਭਾਈ ਆ ਰਿਹਾ ਕਹਿੰਦਾ ਅਰ ਦੇ ਜਿਹੜੇ ਆ ਉਹ ਅੰਬਰਸਾ ਛੱਗਾ ਦਾ ਘਰ ਕੋਈ ਏਦਾਂ ਦਾ ਕਰਕੇ ਉਹਨੂੰ YouTube ਤੇ ਪਾਇਆ ਕਿ ਇਹਦੇ ਵਿੱਚ ਜਿਹਦਾ ਲਾਹੌਰ ਸਹਿਰ ਅੰਮ੍ਰਿਤਸਰ ਸਫਦੀ ਦਾ ਘਰ ਇਹਨੂੰ ਅਸੀਂ ਲੈ ਲਿਆ ਅੰਮ੍ਰਿਤਸਰ ਸ਼ਹਿਰ ਦੇ ਨਾਲ ਲਾਤਾ ਵੀ ਉੱਥੇ ਲਿਖਿਆ ਵੀ ਮੇਰਦਾ ਵੀ ਅੰਮ੍ਰਿਤਸਰ ਸੈਕਟੇ ਦੇ ਘਰ ਇਹ ਇਹਦੇ ਵਿੱਚ ਅੰਮ੍ਰਿਤਸਰ ਦਾ ਸ਼ਹਿਰ ਦਾ ਨਾਮ ਕੋਈ ਨਹੀਂ ਜਿੱਥੇ ਕਹਿੰਦੇ ਅੰਮ੍ਰਿਤ ਨਾਮ ਰੂਪੀ ਦਾ ਉਹ ਸ਼ਹਿਰ ਬਣ ਜਾਂਦਾ ਕਿ ਲਾਹੌਰ ਸ਼ਹਿਰ ਇੱਕ ਇੱਕ ਗੁਰਨਾਨ ਸਿੰਘ ਦੀ ਪੰਥੀ ਹੈ ਵੀ ਲਾਹੌਰ ਸ਼ਹਿਰ ਜਹਿਰ ਕਹਿਰ ਸਵਾ ਪਹਿਰ ਸਵਾ ਪਹਿਰ ਰਹਿੰਦੇ ਆ ਲਾਹੌਰ ਦੇ ਵਿੱਚ ਬੜੇ ਹੀ ਕਾਰਮ ਹੁੰਦੇ ਹੁੰਦੇ ਸੀ ਤੇ ਉਹ ਜਦੋਂ ਆਪਣੇ ਗੁਰੂ ਰਾਮਦਾਸ ਜੀ ਦਾ ਉੱਥੇ ਪਰਬ ਹੋਇਆ ਜਨਮ ਹੋਇਆ ਪ੍ਰਕਾਸ਼ ਹੋਇਆ ਤਾਂ ਉਦੋਂ ਕਹਿੰਦੇ ਵੀ ਉਹ ਹੀ ਜਿਹੜਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਖਤੀ ਦਾ ਘਰ ਉਹ ਲਾਹੌਰ ਸ਼ਹਿਰ ਸਿਖਤੀ ਦਾ ਘਰ ਬਣ ਗਿਆ ਕਿਉਂਕਿ ਗੁਰੂ ਦਾ ਪ੍ਰਕਾਸ਼ ਹੋ ਗਿਆ ਗੁਰੂ ਦੇ ਚਰਨ ਪੈ ਗਿਆ ਤੇ ਪੰਜਵੇਂ ਪਾਤਸ਼ਾਹ ਹੁਣ ਹੋਰ ਵੀ ਬੇਗੰਪੂਰਾ ਜਾਂ ਜਿਹੜੀਆਂ ਹੋਰ ਹਰ ਹਰ ਮੰਦਰ ਹਰ ਇਹ ਜਿਹੜੀਆਂ ਪੰਗਤੀਆਂ ਨੇ ਹਰ ਸਾਹਿਬ ਨੂੰ ਮੁਕਰਾ ਕੇ ਨਹੀਂ ਇਹ ਇਹ ਹੈਗੀਆਂ ਵਾ ਤੋ ਜਿਹੜੀਆਂ ਗੁਰਬਾਣੀ ਦੇ ਆਧਾਰ ਦੇ ਉੱਤੇ ਵੀ ਜਿਸ ਉਹ ਹਰ ਮੰਦਰ ਵਾ ਜਿੱਥੇ ਪ੍ਰਮਾਤਮਾ ਦਾ ਨਾਮ ਜਿੱਥੇ ਪ੍ਰਮਾਤਮਾ ਦੀ ਬੰਦਗੀ ਜਿੱਥੇ ਪ੍ਰਮਾਤਮਾ ਦੀ ਭਗਤੀ ਹੁੰਦੀ ਜਿੱਥੇ ਨਾਮ ਲਿਆ ਜਾਂਦਾ ਉਹੋ ਹੀ ਵਾ ਉਹ ਸਾਡਾ ਸਰੀਰ ਵੀ ਬਣ ਸਕਦਾ ਜਿਸ ਸਾਧਾਰਨ ਤੋਂ ਪਈ ਹਰਿਆਵਲੀ ਜਿੱਥੇ ਤੁਸੀਂ ਬਹਿ ਕੇ ਕਰਦੇ ਉਹ ਵੀ ਹੋ ਸਕਦਾ ਇਹ ਨਹੀਂ ਕਿ ਕਿਸੇ ਇੱਕ ਹਸਤਾਨ ਨੂੰ ਕਿਰੇਂਦਰ ਕਹੋ ਨਾਨਕ ਸਰ ਭਗਤੀ ਦਾ ਘਰ ਨਾਨਕ ਸਰ ਇੱਟਾਂ ਦਾ ਬਣਿਆ ਉਹ ਭਗਤੀ ਦਾ ਘਰ ਥੋੜੋ ਆ ਨਾ ਜਿੱਥੇ ਗੁਰਨਾਨਕ ਦਾ ਜਪਨਾ ਅਰਾਧਨਾ ਹੋਊਗੀ ਕਿਤੇ ਕੋਈ ਭਗਤੀ ਦਾ ਕਰ ਅਸੀਂ ਅਸਥਾਨਾਂ ਨੂੰ ਲੋਕਾਂ ਨੂੰ ਗਮਰਾਹ ਕਰਨ ਵਾਸਤੇ ਸੰਗਤ ਨੂੰ ਉਸ ਸਥਾਨ ਦੇ ਨਾਲ ਜੋੜ ਦਿੱਤਾ ਨਾ ਕਿ ਗੁਰਬਾਣੀ ਨਾਲ ਜੋੜਿਆ ਇਸ ਕਰਕੇ ਗੁਰਬਾਣੀ ਨੇ ਇਹ ਵੀ ਦੇਗੰਪੁਰਾ ਦੁਨਿਆਵੀ ਸ਼ਹਿਰ ਦਾ ਤਿਹੇ ਦਾ ਨਾਂ ਨਹੀਂ ਲਿਆ ਇੱਕੋ ਇੱਕ ਪ੍ਰਮਾਤਮਾ ਦੀ ਅਕਾਲ ਪੁਰਖ ਦੀ ਜੋਤ ਦਾ ਨਾਂ ਲਿਆ ਧੰਨਵਾਦ ਜੀ ਸਮਾਂ ਦੇਣ ਦਾ ਧੰਨਵਾਦ ਜੀ ਸਨੀ ਸਿੰਘ ਜੀ ਲਾਈਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਹਾਣੀ ਬਹੁਤ ਵਧੀਆ ਸੀ ਤੇ ਜਦੋਂ ਸਕੂਲੇ ਪੜਦੇ ਹੁੰਦੇ ਕਹਾਣੀ ਤੋਂ ਬਾਅਦ ਹਨਾ ਵੀ ਉਹਦਾ ਮੋਰਲ ਜਾਂ ਸਿੱਟਾ ਕਰਦੇ ਹੁੰਦੇ ਸੀ ਹਨਾ ਪੂਰੀ ਕਹਾਣੀ ਤੁਸੀਂ ਹਾਂਜੀ ਡਾਲ ਤਾਂ ਹੋਇਆ ਤੁਸੀਂ ਠੀਕ ਕਰਦੇ ਹੋ ਕਿਤੇ ਹਨਾ ਆ ਜਿਹੜਾ ਅੱਜ ਚੱਲ ਰਿਹਾ ਉਹਦੇ ਵਾਰਈ ਹੈ ਪਿੰਡ ਦਾ ਸਰਪੰਚ ਸੀਆ ਉਹ ਪੰਜਾਬ ਦਾ ਫਸਰੇ ਕੌਮ ਆ ਇਹ ਉਹੀ ਸਰਪੰਚ ਆ ਜਿਹੜਾ ਦਰਸ਼ਨੀ ਦਿਉੜੀ ਤੇ ਬਾਵਾ ਖੜੀਆਂ ਕਰਕੇ ਬਾਹਰ ਆ ਗਿਆ ਸੀ ਹਨ 83 ਵੇਲੇ ਇਹ ਉਹੀ ਸਰਪੰਚ ਆ ਜਿਹਦੇ ਰਾਤ ਦੇ ਪਿੰਡ 'ਚ ਗੁਰੂ ਸਾਹਿਬ ਦੀ ਬੇਅਦਬੀ ਹੋਈ ਤੇ ਲੋਕਾਂ ਨੇ ਗੋਲੀਆਂ ਚਲਾਈਆਂ ਹਨ ਧੰਨਵਾਦ ਛੋਟੇ ਸਮਾ ਸਮਾ ਮੁੱਕ ਗਿਆ ਸਮਾ ਮੁੱਕ ਦਰਸ਼ਨੀ ਡਿਉੜੀ ਦੇ ਵਿੱਚ ਨਹੀਂ ਸਨ ਬਾਲ ਸਾਹਿਬ ਉਸ ਸਮੇ ਤੇ ਕੱਲ ਨੂੰ 11 ਵਜੇ ਫੇਰ ਮਿਲਦੇ ਰੱਬ ਰੱਖੇ